ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਅਗਿਆਵੇਂ ਚਲਦਾ ਹੈ ਦਿੱਲੀ ਕੇ ਦਿਲਵਾਲੀ ਤੇਰੀ ਅਗਿਆਵੇਂ ਚਲਦਾ ਹੈ ਜਿਹੜੇ ਦਿੱਲੀ ਦੇ ਦਿਲਵਾਲੇ ਨੇ ਨਾ ਉਹ ਅਗਿਆ ਚਲਦੇ ਉਹ ਕੋਣੂ ਪਾਣਾ ਹਵਣ ਮੈਂ ਉਹ ਤਾਂ ਫਰੰਗ ਦੇ ਬਗਲੀ ਵੀ ਨੇ ਫਰੰਗ ਦੇ ਫਰੰਗਾ ਵਾਲੀ ਫਰਗਾ ਵਾਲੀ ਵੀ ਨੇ ਫਰੱਗੀ ਵੀ ਨੇ ਫਰੱਗੀ ਯੂਰਪੀਅਨ ਲੋਕ ਨੇ ਯੂਰਪੀ ਦੇ ਲੋਕਾਂ ਨੂੰ ਫਰੰਗੀ ਕਹਿੰਦੇ ਨੇ ਫਰਾਂਸੀਸੀ ਜਿਹੜੇ ਆਏ ਪਹਿਲਾਂ ਪੁਰਤਗਾਲ ਦੇ ਆਏ ਸੀ ਸਭ ਤੋਂ ਪਹਿਲਾਂ ਫਿਰ ਫ੍ਰਾਂਸੀਸੀ ਆਏ ਫਿਰ ਰੇਜਾਇ ਇਹਨਾਂ ਨੂੰ ਦਿੱਲੀ ਦੇ ਜਿਹੜੇ ਉਹ ਕਿਉਂ ਚਲਦੇ ਸੀ ਸਵਾਲ ਇਹ ਤਸਮ ਬਾਸ਼ਾ ਲਿਖ ਰਹੇ ਇਹਨਾਂ ਨਾਲ ਨੌਵੇਂ ਪਾਸ਼ਾ ਦੀ ਸ਼ੇਰਤੀ ਦਾ ਪ੍ਰਭਾਵ ਹੱਥ ਦਿੱਲੀ 'ਚ ਨੌਵੇਂ ਪਾਸ਼ਾ ਦੀ ਸ਼ੇਰਤੀ ਦਾ ਪ੍ਰਭਾਵ ਹੈ ਸਿੱਖੀ ਦਾ ਪ੍ਰਭਾਵ ਹੈ ਗਿਆ ਦਿੱਲੀ ਰਾਜ ਤੋਂ ਤਾਂ ਹੈਦੂ ਸੀ ਬੋਗਲਾ ਦਾ ਬੋਗਲਾ ਦਾ ਹੈਡਕੁਆਟਰ ਦਿੱਲੀ ਨਹੀਂ ਸੀਗਾ ਉਦੋਂ ਬੋਗਲਾ ਦਾ ਹੈਡਕੁਆਟਰ ਆਗਰਾ ਸੀ ਉਸ ਵੇਲੇ ਹੈਡਕੁਆਟਰ ਨਹੀਂ ਸੀ ਦਿੱਲੀ ਦਿੱਲੀ ਵੇਲੇ ਹੈਡਕੁਆਟਰ ਜੇ ਸੀਗਾ ਤਾਂ ਦਿੱਲੀ ਵਾਲਾ ਜਿਹੜਾ ਔਰੰਗਜ਼ੇ ਬੈਠਾ ਸੀ ਉਹ ਉੱਤੇ ਦੱਖਣ ਦੇ ਬੈਠਾ ਸੀ ਗਿਆ ਹੈ ਆਪ ਦੱਖਣ ਦੇ ਵਿੱਚ ਅਮਰਟਿਆਂ ਵਾਲੇ ਲੜਾਈ ਸੀ ਰਬਗਵਾਦ ਤੇ ਦੇ ਜੂਰ ਸਾਹਿਬ ਦੇ ਰੇੜੀ ਗਏ ਉੱਥੇ ਸੀ ਦਿੱਲੀ ਕੇ ਦਲਵਾਲੀ ਤੇਰੀ ਆਗਿਆ ਮੈਂ ਚਲਦਾ ਤੇਰੀ ਆਗਿਆ ਮੈਂ ਚਲਦਾ ਉਹ ਵੀ ਤੇਰੇ ਪਾੜੇ ਨੂੰ ਬਰਨਦੇ ਨੇ ਸਾਰਿਆਂ ਨੂੰ ਯਾਨੀ ਉਹ ਪਾੜੇ ਨੂੰ ਕਹਿੰਦੇ ਸੀ ਵੀ ਪਾੜਾ ਕਿਹੜਾ ਹੈਗਾ ਪਾੜੇ ਬਰਨ ਗੁਰੂ ਸਾਹਿਬ ਦਾ ਸਿਕੰਦਰ ਦੇ ਵਿੱਚ ਪ੍ਰਚਾਰ ਪਾੜਨੇ ਦਾ ਹੀ ਸੀ ਬਸ ਹੋਰ ਨਹੀਂ ਕੁਝ ਨਪੜ ਤੇ ਨਪੜ ਵਿੱਚ ਕਾਨੂੰਨ ਬੋ ਜੋਗਾ ਪਾਣੇ ਵਰਤ ਕੇ ਇਦਰਾਜ ਕੇ ਕੋਈ ਰੋ ਕੇ ਰਹਿਲੇ ਮਾਘ ਦੇਸ ਕੇ ਮਘੇਲੇ ਅਧ ਰੋ ਕੇ ਰਹਿਲੇ ਔਰ ਰਹਿਲੇ ਜਿਹੜੇ ਰੋਹਿਲ ਖੰਡਾ ਇਹ ਗੁੱਸੇ ਵਾਲੇ ਗੁੱਸਾ ਦੇ ਲੋਮਪੇ ਰੋ ਕੇ ਰਹਿਲੇ ਜਿਹੜਾ ਚੰਜੀ ਵਾਲੀ ਰਾਣੀ ਇਹਨੂੰ ਉਹ ਏਰੀਆ ਜਿਹੜਾ ਉਹ ਰਹਿਲਿਆਂ ਦਾ ਰਹਿਲਿਆਂ ਕੋਲ ਖਬਨੇ ਸੁਣੀ ਕਹਾਣੀ ਸੀ ਖੂਬ ਲੜੀ ਮਰਦਾਨੀ ਵਾ ਤਾਂ ਚੰਜੀ ਵਾਲੀ ਰਾਣੀ ਸੀ ਉਹ ਰਹਿਲੇ ਨੇ ਰੇਲ ਖੰਡ ਗਾਦੇ ਨੇ ਇਹ ਲੱਗਦਾ ਇੱਥੇ ਹੀ ਉਹ ਪੈਂਦੀ ਹੈ ਡਾਕੂ ਦਾ ਊੜੀ ਘਾਟੀਆ ਚ ਬੁਲਦੀ ਇਹ ਲੋਕ ਸਹਰੇ ਤੂੰ ਜਿਵੇਂ ਕੱਢੀਆ ਤੱਕੂ ਵੱਡ ਜਾਣਾ ਫਿਰ ਪੇਸ਼ੇ ਨਹੀਂ ਹੁਣ ਬਾਹਰ ਘਾਟ ਵਾਲੇ ਲੋਕ ਪਹਿਲਾਂ ਰੋਕੇ ਰਹਿਲੇ ਸੁਭਾ ਹੁੰਦੇ ਰਿਆ ਅਡਾਡੇ ਲਾਕੇ ਹੁੰਦੇ ਦੇਸ਼ ਨਾਲ ਉਹਨਾਂ ਦੇ ਅਡਾਡ ਸੁਭਾ ਦੇ ਅਡਾਡ ਖੂਦ ਉਹਦੇ ਵਿੱਚ ਮਾਗ ਦੇਸ ਕੇ ਮਘੇਲੇ ਮਘਦਾ ਅੱਗੇ ਭਗਦਾ ਮਘਦਾ ਕਹਿਣ ਜਿੱਥੇ ਆਪਣਾ ਬਨਾਰਸ ਉਰੇ ਉਰੇ आगरा तेरे इंदेले ਪਾਸੇ ਅਬਦ ਯੁੱਧਿਆਵਲ ਦੇ ਪਾਸੇ ਆਗਰਾ ਵਿਚਾਜਨ ਦਲ ਦੇ ਅਬਦ ਤੇ ਉਹਨੂੰ ਵਕਤ ਕਹਿੰਦੇ ਨੇ ਜਿੱਥੇ ਹੈ ਬਨਾਰਸ ਤੇ ਉੱਲਾਹ ਹੈ ਇਹ ਵਗਦ ਇਹ ਪੁਰਾਣੇ ਨਾਮ ਨੇ ਦਿੰਦੇ ਮਾਗਦੇਸ਼ ਨੇ ਮਗੇਲੇ ਪੁਰਾਣੇ ਨਾਮ ਵੀਰ ਬੰਗਸੀ ਬਧੇਲੇ ਵੀਰ ਬੰਗਸੀ ਬਗਾਲੀ ਬਾਦਰ ਬੁੰਦੇਲੇ ਬੁੰਦੇਲੇ ਹਾਂ ਪਾਪ ਪੁੰਜ ਕੋ ਮਲਤ ਹੈ ਉਹ ਪਾਪ ਨੂੰ ਨਹੀਂ ਬੰਦੇ ਬਗਾਲੀ ਪਾਪ ਪੁੰਜ ਕੋ ਮਲਤ ਹੈ ਹਾਂ ਜਦੋਂ ਬਿਹਾਰ ਡਾਇਰੈਕਟਰ ਹੁੰਿਆ ਸੀ ਉੱਥੇ ਇੱਕ ਕਰਮਨਾਸਾ ਨਦੀ ਆਉਂਦੀ ਜਦੋਂ ਬਿਹਾਰ ਡਾਇਰੈਕਟਰ ਹੁੰਦਾ ਨਾ ਬਾਰਡਰ ਹੈ ਬਿਹਾਰ ਦਾ ਯੂਪੀ ਦਾ ਉਹਦਾ ਨਾਮ ਹੀ ਕਰਮਨਾਸਾ ਪਰਲੇ ਪਾਸੇ ਕਰਮ ਨਹੀਂ ਹੈ ਦਾ ਮਤਲਬ ਪਰਲੇ ਪਾਸੇ ਨਾਲ ਇਹਨਾਂ ਰੂਲਡੀ ਬੁਲਦੇ ਉਹਲੇ ਪਾਸੇ ਵਾਲੇ ਬਾਪੂ ਨੂੰ ਬੰਦਦੇ ਨੇ ਪਰਲੇ ਪਾਸੇ ਵਾਲੇ ਨੂੰ ਬੁਲਦੇ ਉਹਦਾ ਨਾਮ ਹੀ ਕਰਮਨਾਸਾ ਦਜੀਦਾ ਉਹ ਬਾਰਡਰ ਹੈ ਉਹ ਚੰਡੀ ਦੀ ਪੂਜਾ ਕਰਦੇ ਨੇ ਇਹ ਜਿਹੜੇ ਅਦੁਰਗਾ ਦੀ ਪੂਜਾ ਕਰਦੇ ਨੇ ਬਲੀਦਾਨ ਦੇ ਸ਼ਰਾਬ ਚੜਾਉਂਦੇ ਨੇ ਇਹ ਜਿਹੜੇ ਹੁਰਲੇ ਪਾਸੇ ਵਾਲੇ ਨੇ ਪੱਟੜ ਅਸੀਂ ਇਹ ਸ਼ਰਾਬ ਦੇ ਮਾਸਤੇ ਖਰਾਬ ਇਹਨਾਂ ਦਾ ਉਲਟ ਪ੍ਰਚਾਰ ਹਰੋਂ ਹੁਣ ਉੱਥੇ ਹੀ ਪੈਦਾ ਹੋਇਆ ਸੀ ਬੁੱਧ ਧਰਮ ਪੱਲੇ ਪਸੇ ਗਿਆ ਪੱਲੇ ਪਸੇ ਹਲੋਤ ਉਹ ਬਨੂ ਬਾਬ ਨੂੰ ਨਹੀਂ ਬੰਦੇ ਹੁਣ ਇਹਨਾਂ ਨਾਲ ਉਹਨਾਂ ਦੇ ਫਿੱਟ ਨਹੀਂ ਵੈਧੀ ਗੱਲ ਧਾਰਮਿਕ ਤੌਰ ਤੇ ਉਹ ਹੋਰ ਹੈ ਇਹਨਾਂ ਦਾ ਹੋਰ ਮੜ ਟੈਨ ਵੀ ਨਹੀਂ ਵੈਧੀ ਇਹਨਾਂ ਨੂੰ ਯੂਪੀ ਯੂਪੀ ਵਾਲੇ ਨੂੰ ਯੂਪੀ ਦਾ ਵਿੱਚ ਸਾਰਾ ਜੱਨਾ ਵੀ ਆਹਨ ਧਰਬਦਾ ਸੈਂਟਰ ਯੂਪੀ ਰਹਿ ਇੱਥੇ ਹੀ ਸਾਰਾ ਧਰਬਦਾ ਦਾ ਨਾਮ ਹੂਲਦੇ ਸੈਂਟਰ ਇੱਥੇ ਬੜੇ ਬੜੇ ਸਮਝੋ ਤੀਰਥ ਗੁੰਗਾ ਦੇ ਉੱਤੇ ਅਲਾਹਾਬਾਦ ਤੋਂ ਜਾ ਕੇ ਕੋਈ ਤੀਰਥ ਨਹੀਂ ਫਿਰ ਕੇ ਨਾ ਆਏ ਦੋ ਆਪਣੇ ਬਨਾਰਸ ਤੋਂ ਫਿਰ ਕੋਈ ਗੁੰਗਾ ਦੇ ਤੀਰਥ ਨਹੀਂ ਕੋਈ ਤੀਰਥ ਨਹੀਂ ਗੁੰਗਾ ਤੇ ਹੋਰੇ ਕਿਥੇ ਤੱਕ ਦੇ ਤੀਰਥ ਫਿਰ ਉਹ ਗਵਾਲ ਆ ਜਾਂਦਾ ਥੋੜਾ ਜਿਹਾ ਦੂਰ ਜਾ ਕੇ ਇਹ ਤੀਰਥਾਂ ਦੇ ਉੱਤੇ ਹੀ ਸਾਰਾ ਹਦਦਾਰ ਹੋਇਆ ਇੱਥੇ ਹੀ ਸਾਰਾ ਕੁਝ ਹੈ ਪਾਪਨ ਦਾ ਪਾਪਨ ਦਾ ਰਾਮ ਔਰ ਜਿਹੜਾ ਕ੍ਰਿਸ਼ਨ ਇੱਥੇ ਦੇ ਉਤਾਰ ਹੋਏ ਨੇ ਰਮਾਇਣ ਦੀ ਕਥਾ ਅਰਮਹਾ ਭਾਰਤੀ ਕਥਾ ਇੱਥੇ ਨਾਲ ਸੰਬੰਧਿਤ ਹੈ ਸਾਰੀ ਇਹ ਇਹ ਸਾਸਤਰ ਨੇ ਉਹ ਪਾਪ ਨੂੰ ਦੀ ਵਿਚਾਰ ਹੈ ਸਿਮਰ ਸਿਆਸਤ ਪੁਰ ਪਾਪ ਵਿਚਾਰਦੇ ਇੱਥੇ ਹੀ ਜਾਦਾ ਬੰਗਸੀ ਬੰਦੇਲੇ ਪਾਪ ਪੁੰਜ ਕਿਉਂ ਕੇ ਮਲਤਾਂ ਕੋ ਪਾਪ ਨੂੰ ਦੀ ਬੰਦੇ ਨੂੰ ਸਾਰੇ ਤਾਂ ਮੱਛੀ ਖਾਧੇ ਤੇ ਬਗਾਲ ਨਹੀਂ ਉਹ ਪਾਪ ਨੂੰ ਇੱਥੇ ਮੰਨਦੇ ਨੇ ਉਹ ਤਾਂ ਮਰ ਜਾਣ ਭੁੱਖੇ ਜੇ ਨਾਲ ਨਹੀਂ ਬਗਲ ਲੱਗਣ ਵੀਰ ਬੰਗਸੀ ਬੰਦੇਲੇ ਪਾਪ ਪੁੰਜ ਕੋ ਮਲਤਾਂ ਹੈ ਗੋਖਾ ਗੁੰਗਾਵੈ ਚੀਨ ਮਚੀਨ ਕੇ ਸੀਸ ਨਿਆਵੇਂ ਚੀਨ ਗੋਰਖੇ ਨੇ ਜਿਹੜੇ ਉਹ ਵੀ ਗੁਣਗਾਨ ਕਰਦੇ ਨੇ ਯਾਨੀ ਨਰਾਕਾਰ ਨੂੰ ਸਾਰੇ ਹੀ ਬੰਦੇ ਪਾਵੇਂ ਉਹਨਾਂ ਦੇ ਆਪਣੇ ਆਟਾੜ ਦੇਵੀ ਦੇਵਤੇ ਹੈਗੇ ਨੇ ਵੱਖਰੇ ਵੱਖਰੇ ਪਰ ਸੁਪਰੀਮ ਨਰਾਕਾਰ ਨੂੰ ਬੰਦੇ ਛੋਟਾ ਜਾ ਉਹ ਮੁਲਕ ਹੋਊਗਾ ਬਚੀਨ ਕਹਿੰਦੇ ਸੀ ਉਹਨੂੰ ਹੁਣ ਤਾਂ ਇਕੱਠਾ ਹੀ ਆ ਸਾਰੇ ਟੁੱਟਾ ਹੈ ਜੀ ਉਦੋਂ ਕਹਿੰਦੇ ਹੁਣ ਪਹਿਲਾ ਤਿਬਤੀ ਤੇ ਆਏ 300 ਸਾਲ ਪਹਿਲਾਂ ਕਹਦੇ ਹੁਣੇ ਤੇ ਤਿਬਤੀ ਤੇ ਆਏ ਦੁਖ ਦੇ ਕੋ ਦਲਤ ਹਨ ਤਿਬਤੀ ਵੀ ਤੇਰਾ ਧਿਆਨ ਧਾਰਦੇ ਨੇ ਦੁਖ ਦੇ ਕੋ ਦਲਤ ਹਨ ਜਿਹੜੇ ਦੇ ਤੇ ਦੁਖ ਦੇ ਦੁਖ ਦੇ ਕੋ ਦਲਤ ਹਨ ਦੇ ਜਿਹੜੇ ਦੋਖ ਨੇ ਉਹ ਤੇਰੇ ਜਿਹੜੇ ਵਕਾਰ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਵੀ ਤੇਰਾ ਧਿਆਨ ਧਾਰਦੇ ਨੇ ਹਿਰਦੇ ਦੇ ਦੋ ਤੇ ਉਹਨੇ ਹਿਰਦਾ ਹੁੰਦੇ ਦੇ શરીਰ ਹੈ ਬਾਹਰਲੇ ਸ਼ੀਰ ਤੇ ਹੁੰਦਾ ਕਬਾਲੇ ਸ਼ੀਰ ਤੇ ਦੋਖ ਨਹੀਂ ਹੁੰਦੇ ਬਿਮਾਰੀਆਂ ਹੁੰਦੀਆਂ ਦੋ ਘੰਟੇ ਨੇ ਹਿਰਦੇ ਨਸਬੁੰਦਾ ਬੋ ਨਸਬੁੰਦਾ ਨੂੰ ਜਿਨੇ ਤੋਹੇ ਤੇ ਤੇਰਾ ਤੇਰਾ ਧਿਆਨ ਤਰਿਆ ਤਿਨੇ ਪੂਰਨ ਪ੍ਰਤਾਪ ਪਾਇਓ ਉਹਨੂੰ ਪੂਰੀ ਜੋਤ ਜਗ ਗਈ ਘਟ ਚ ਉਹਦੇ ਮੈਂ ਖਾਲਸਾ ਤਾਈ ਲਖਾਲਜ ਪੂਰਨ ਪ੍ਰਤਾਪ ਹੋ ਗਿਆ ਪੂਰੀ ਜੋਤ ਹੋ ਗਈ ਉਹਦੀ ਪੂਰਾ ਗਿਆਨ ਹੋ ਗਿਆ ਉਹਦਾ ਪ੍ਰਚੰਡ ਗਿਆਨ ਦੀ ਅਵਸਥਾ ਚਲਾ ਗਿਆ ਸਰਬਤਨ ਧਾਮ ਫਲ ਫੂਲ ਸੋ ਫਲਤ ਹੈ ਸਰਬਤਨ ਸਾਰੇ ਦਾ ਗਿਆਨ ਉਹਨੂੰ ਮਿਲ ਗਿਆ ਤਨ ਗਿਆਨ ਹੈ ਧਾਮ ਫਲ ਫੂਲ ਸੋ ਫਲਤ ਹੈ ਹਾਂ ਸਰਬਤਨ ਦਾ ਹੀ ਧਾਮ ਹੋ ਗਿਆ ਉਹਦਾ ਹਿਰਦਾ ਸਾਰਾ ਹੀ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਤੇ ਲੋਕ ਦਾ ਗਿਆਨ ਉਹਨੂੰ ਹਿਰਦੇ ਚ ਪ੍ਰਾਪਤ ਹੋ ਗਿਆ ਆਤਮ ਗਿਆਨ ਪਲੱਸ ਲੋਕ ਦਾ ਗਿਆਨ ਕਿ ਲੋਕ ਦੇ ਗਿਆਨ ਦੇ ਆਤਮ ਗਿਆਨ ਆਤਮਾ ਤਨ ਲੋਕ ਦੇ ਵਿੱਚ ਹੀ ਹੈ ਨਾ ਜਿਹਨ ਲੋਕ ਦੇ ਵਿੱਚ ਆਤਮਾ ਸੱਚਖੰਡ ਵਾਲੀ ਜਿਹੜੀ ਆਤਮਾ ਆਤਮਾ ਦੀ ਉੱਤੇ ਪ੍ਰਾਤਮਿਕ ਪ੍ਰਾਤਮਿਕ ਨਹੀਂ ਬਲਕੇ ਉੱਤੇ ਪਰਮਾਤਮਾ ਪ੍ਰਾਤਮਾ ਰਾਤਮਾ ਇੱਥੇ ਹੈ ਉੱਤੇ ਨਹੀਂ ਆਤਮਾ ਹੁੰਦੀ ਆਤਮਾ ਦਾ ਦਾੜ ਪ੍ਰਾਤਮਾ ਵੀ ਹੱਦਾ ਹੈ ਜੇ ਦੋਹਾਂ ਨੂੰ ਇੱਕ ਕਰ ਲਈਏ ਤਾਂ ਵੀ ਨਹੀਂ ਜਾ ਸਕਦਾ ਸੱਚਖੰਡ ਤੇ ਪੇੜ ਹੋ ਕੇ ਜਾਊਗਾ ਇਹ ਤਾਂ ਉਗਵੇ ਵੀ ਨਹੀਂ ਆ ਸਕਦਾ ਉੱਥੇ ਬੀਜੋ ਸੋਚੀ ਕੋਲ ਨਹੀਂ ਬੀਜ ਨੂੰ ਸੋਚੀ ਨਹੀਂ ਹੁੰਦੀ ਉੱਥੇ ਸਾਰੇ ਸੋਚੀ ਵਾਲੇ ਸੁੱਤੇ ਰਹੋ ਤੇ ਕਿ ਸੁਜੀ ਦੇ ਬਿਨ ਸੁੱਤਾ ਇਹ ਸੁਪਨੇ ਵਾਲਾ ਹੈ ਉੱਥੇ ਨਾ ਸੁਪਨੇ ਵਾਲਾ ਹੈ ਨਾ ਸੁੱਤਾ ਸਭ ਬਗੈਰ ਸੁਜੀ ਵਾਲਾ ਸਾਰੇ ਜਾਗ ਰਹੇ ਨੇ ਜਿਹੜਾ ਜਾਗੂ ਉੱਥੇ ਜਾਊਗਾ ਜਿਹੜੇ ਸੁੱਤੇ ਪਏ ਨੇ ਜੇ ਸੁਪਨਾ ਦੇਖਦੇ ਨੂੰ ਇੱਥੇ ਰਹਿਣਗੇ ਉੱਥੇ ਨਹੀਂ ਜਾ ਸਕਦਾ ਇਸ ਕਰਕੇ ਆਤਮਾ ਨਹੀਂ ਉੱਥੇ ਹੁੰਦੀ ਨਾ ਪ੍ਰਾਤਮਾ ਹੁੰਦੀ ਉੱਥੇ ਉੱਥੇ ਪਰਮਾਤਮਾ ਹੁੰਦੀ ਜੇ ਆਤਮ ਜਾਣਿਆ ਪਰਮਾਤਮਾ ਸੋਈ ਫਰਮ ਆਤਮਿਕ ਬਚਲ ਜਿਹੜਾ ਉੱਗਿਆ ਆ ਪਰਮ ਆਤਮ ਸਰਬ ਸੇ ਸਾਰੋਂ ਪਰਮ ਆਤਮ ਆਤਮ ਦੇ ਅੰਦਰ ਕੋਈ ਫਰਮ ਨਹੀਂ ਅੱਛਾ ਉਹ ਜਿਹੜਾ ਸੱਚ ਖੰਡਣਾ ਉਹਦੇ ਸਾਰੇ ਹੀ ਪਰਮ ਆਤਮਾਂ ਹਨ ਉਹ ਪਰਮ ਆਤਮਾਂ ਦਾ ਖਜਲ ਇਸ ਕਰਕੇ ਉਹਨੂੰ ਕੀ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਉਹਨੂੰ ਇਹ ਕਹਿੰਦੇ ਨੇ ਅਨਾਤਮ ਤਾਂ ਘਰ ਨੇ ਆਤਮਾ ਤੇ ਹੁੰਦੀ ਰੋ ਖਜਾਲੇ ਨੂੰ ਕਹਿੰਦੇ ਨੇ ਉਹਦਾ ਵਿਰਾਟ ਰੂਪ ਜਿਵੇਂ ਧਰਤੀ ਦਾ ਧੂੜ ਉੱਡ ਰੂਦੀ ਹੈ ਧਰਤੀ ਤੇ ਮਿੱਟੀ ਉੱਡਦੀ ਹੈ ਬਹੁਤ ਹੁੰਦੇ ਇਸ ਕਰਕੇ ਜਿਹੜਾ ਖਜਾਲਾ ਉਹਦਾ ਨਾ ਵਿਰਾਟ ਰੂਪ ਹੈ ਉਹ ਵਿਰਾਟ ਰੂਪ ਹੈ ਦੇਵ ਦੇਵਤਾਨ ਕੋ ਸਰੇਸ਼ ਧਾਨਵਾਨ ਕੋ ਮਹੇਸ਼ ਗੰਗਤਾਨ ਕੋ ਅਪੇਸ਼ ਸੀਗਾ ਜਿਨੇ ਤੇ ਆਇਓ ਤਨੇ ਪੂਰਨ ਪ੍ਰਤਾਪ ਪਾਇਓ ਉਹ ਇੱਕ ਨੰਬਰ ਜਿਹੜਾ ਸਬਈਆ ਸੀ ਉਹ ਹੈ ਪਰਮੇਸ਼ਰ ਦੇ ਪਰਥਾਏ ਪਹਿਲਾ ਇੱਕ ਨੰਬਰ ਆਇਆ ਜਿਹੜਾ ਸਬਈਆ ਉਹ ਆਇਆ ਪਬਲਿਕ ਦੇ ਪਰਥਾਏ ਜਿਹੜੇ ਵਸਦੇ ਨੇ ਲੋਕ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਲੋਵੇ ਲੋਣੇ ਉਹ ਉਹ ਬਦਿਆ ਉਹ ਗੌਂਦੇ ਨੇ ਤੈਨੂੰ ਜਿਹਨੂੰ ਗੌਂਦੇ ਨੇ ਪਹਿਲਾ ਸਬਈਆ ਉਹਦੇ ਵਾਸਤੇ ਦੂਜਾ ਸਭੀਆ ਗੌਣ ਵਾਲਿਆਂ ਦਾ ਨੌ ਬਣਾਏ ਨੇ ਤੀਜੇ ਦੇ ਵਿੱਚ ਦੇਵ ਦੇਵਦਾਨ ਕੋ ਸਰੇਸ਼ ਤੀਜੇ ਦੇ ਵਿੱਚ ਵੀ ਅਲੇ ਦਾ ਇਹ ਬਗਾਲੀ ਫਰੰਗੀ ਉਹੀ ਰੋਹਿਲੇ ਉਹੀ ਗਣੇ ਨੇ ਤੀਜੇ ਸਭੀਆ ਦੇ ਵਿੱਚ ਵੀ ਉਹੀ ਗਣੇ ਨੇ ਜਿਹੜੇ ਤੈਨੂੰ ਘਾਰ ਰਹੇ ਨੇ ਔਰ ਫਿਰ ਪਾਕ ਹੀ ਰਹੇ ਨੇ ਆਖਰਲੀ ਲਾਈਨ ਦੇ ਵਿੱਚ ਆ ਜਿਨੇ ਤੋਹੇ ਤੇ ਆਇਓ ਜਿਨੇ ਤੋਹੇ ਤੇ ਆਇਓ ਤੇਨੇ ਪੂਰਨ ਪ੍ਰਤਾਪ ਤੇਰਾ ਬੋਲੂ ਪ੍ਰਤਾਪ ਆਇਓ ਇਹ ਦੋ ਸਬਈਆਂ ਤੇ ਜੇ ਇੱਕ ਮੰਨ ਕੇ ਹੁਣ ਸ਼ੁਰੂ ਹੋਇਆ ਇੱਥੇ ਇੱਥੇ ਕੁਝ ਹੋਰ ਸ਼ੁਰੂ ਹੋਇਆ ਚੌਥਾ ਕਵਿਤਾ ਜਿਹੜਾ ਫੇਰ ਪਹਿਲਾਂ ਇਹਦੇ ਚ ਦੋ ਆਉਣਗੇ ਇਹਦੇ ਦੋ ਆਉਣਗੇ ਇੱਕ ਤਾਂ ਖੜਗ ਆਉਗੀ ਖੜਗ ਧਾਰੀ ਆਊਗਾ ਖੜਗ ਧਾਰੀ ਤਾਂ ਉਹ ਆਪ ਹੈ ਜਿਹੜਾ ਗੁਰਮੁਖ ਹੁੰਦਾ ਖੜਗ ਹੁੰਦੀ ਆ ਉਹ ਖੜਗ ਧਾਰੀ ਨਹੀਂ ਹੁੰਦਾ ਗੁਰਮੁਖ ਵਰਤਦਾ ਉਹ ਨੂੰ ਪਰਮੇਸ਼ਰ ਜਿਹੜੀ ਤਲਵਾਰ ਹੈਗੀ ਆ ਵਰਤਦਾ ਆத்ਵੀਰ ਗੁਰਮੁਖ ਤਲਵਾਰ ਜ਼ਰੂਰ ਹੈ ਪਰ ਵਰਤ ਜਲਦੀ ਨਹੀਂ ਹੱਬ ਚਲ ਚਲਦੀ ਚਲਾਏ ਤੇ ਜੇ ਤੂੰ ਚਲਾਣੇ ਤੇ ਮੈਂ ਚੱਲਣਾ ਸੁਆਮੀ ਚਲਾਏ ਤੇ ਜਲਦੀ ਹੈ ਨਾ ਤਲਵਾਰ ਤਾਂ ਤਲਵਾਰ ਹੈ ਲੌਦਾ ਕੌਣ ਜਿਹਦੇ ਜਿਹਦੇ ਹੱਥ ਚਾਹੀਏ ਦੇ ਹੁਕਮ ਚੱਲ ਤਲਵਾਰ ਹੈ ਜਲਦੀ ਨਹੀਂ ਹੈ ਚੱਲ ਤਲਵਾਰ ਨਹੀਂ ਜਲਦੀ ਹੁੰਦੀ ਤਲਵਾਰ ਚਲਾਏ ਤੇ ਜਲਦੀ ਹੁੰਦੀ ਜੇ ਤੂੰ ਚਲਾਏ ਨਹੀਂ ਆਇਆ ਚਲਾਏ ਦੇ ਕਿਲਾ ਤਲਵਾਰ ਚਲਾਏ ਤੇ ਚੱਲੋ ਧੀਰੇ ਚਲਾਏ ਤੇ ਚਲਦਾ ਹੈ ਬਰਸ਼ਾ ਚਲਾਏ ਤੇ ਚਲਦਾ ਹੈ ਚੱਕਰ ਹੈ ਚਲਾਏ ਤੇ ਚਲਦਾ ਹੈ ਚਲਾਏ ਤੇ ਹਥਿਆਰ ਚਲਾਏ ਤੇ ਚਲਦੇ ਲੋ ਹਥਿਆਰ ਹੈ ਚਲਾਉਣ ਵਾਲਾ ਦੋਰ ਚਲਾਉਣ ਵਾਲਾ ਤਾਂ ਪਹਿਲੇ ਸਵਈਏ ਚ ਜਵਨ ਚਲਾਉਣਾ ਉਹ ਨਾਲ ਅਟੈਚ ਹੈ ਗੁਰਬੁਖ ਤੇ ਦੋਰ ਦੇਵ ਦੇਵਤਾਨ ਕੋ ਸਰੇਸ਼ ਦੇਵ ਦੇਵਤਾਨ ਕੋ ਸਰੇਸ਼ ਦਾਨਵਾਨ ਕੋ ਬਿਹਸ ਗੰਗ ਧਾਨ ਕੋ ਆਪੇਸ ਕਹੀ ਤਾ ਦੇਵਤਾਨ ਜਿਹੜੇ ਦੇਵਤਾਨ ਬਹੁ ਬਚਰ ਦੇਵਤਾ ਦੇਵਤੇ ਦੇਵਤੇ ਕਿਹਦੇ ਜਿਹੜੇ ਵਾਸਤੇ ਦੇਵਤੇ ਕੀ ਹੈ ਦੇਵ ਦੇ ਸਾਰੇ ਸਿੱਖ ਦੇਵਤੇ ਹੀ ਨੇ ਜਿਹੜਾ ਗੁਰੂ ਦੀ ਸਿੱਖਿਆ ਲੈ ਰਿਹਾ ਮਨ ਨੂੰ ਬਦਲ ਰਿਹਾ ਵਰਤਨ ਅਨੁਸਾਰ ਮਨ ਨੂੰ ਢਾਲ ਰਿਹਾ ਉਹ ਦੇਵਤਾ ਪਰਮਤਮ ਸਾਰ ਚੱਲ ਰਿਹਾ ਜਿਹਦੀ ਸੁਣਦਾ ਉਹ ਦੇਵਤਾ ਦੇਵ ਦੇਵਤਾਨ ਕੋ ਦੇਵ ਜਿਹੜੇ ਦੇਵਤੇ ਨੇ ਉਹਨਾਂ ਦਾ ਦੇਵ ਮਿਲ ਤੂੰ ਦੇਵ ਦੇਵਤਾਨ ਕੋ ਕੁਝ ਉਹਨਾਂ ਨੂੰ ਦੇ ਰਿਹਾ ਨਕਲ ਜਿਹੜੇ ਦੇਵਤੇ ਨੇ ਉਹਨਾਂ ਦਾ ਦੇਵ ਹੈ ਉਹ ਮੁਖਾ ਨਹੀਂ ਹੈਗਾ ਉਹ ਤਾਂ ਬੰਦੇ ਨਹੀਂ ਮੈਨੂੰ ਕੋਲ ਉਦੋਂ ਉੱਪਰ ਇੱਕ ਕੈਟਗਰੀ दानवान ਨੇ ਸ੍ਰੀਸ਼ਾਹ ਦਾਨਵਾਨ ਕੋ ਦਾਨਵਾਨ ਕੋ ਦਾਨਵਾਨ ਕੋਲ ਦਾਨ ਪੈਸਾ ਪੁੱਛੇ ਦਾਨ ਕਰਦੀ ਗੱਲ ਲਈ ਰਿਹਾ ਬਿਲਕੁਲ ਚਲੋ ਭਾਈ ਮੰਨ ਲਓ ਸ੍ਰੀਸ਼ਾਹ ਕੋ ਦਾਨਵਾਨ ਕੋਲ ਇਕੋ ਨਾ ਧਾਨੀ ਇਕੋ ਨਾ ਦਾਨਵਾਲ ਇਕੋ ਨਾ ਇਕੋ ਨਾ ਦਾਤਾ ਇਕੋ ਨਾ ਦਾਨਵਾਲ ਆਦਮੀ ਦਾਨਵਾਨ ਹੋ ਸਕਦਾ ਹੈ ਦਾਤਾ ਨਹੀਂ ਹੋ ਸਕਦਾ ਦਾਨਵਾਨ ਹੋਏ ਜਿਹਦੇ ਥਰੂ ਦਾਨ ਕਰਾਉਂਦਾ ਹੈ ਦਾਤਾ ਹੋਏ ਜਿਹਦਾ ਮਾਲ ਹੈ ਸੁਰੇਸ਼ ਦਾਨਵਾਨ ਕੋ ਜਿਹਦੇ ਦਾਨ ਦੁਆ ਰਹੇ ਨੇ ਉਹਦਾ ਕਹਾਂ ਰਾਜਾ ਜੂ ਸੁਰੇਸ਼ ਖਜ਼ਾਨਾ ਤੇਰਾ ਹੈ ਦੋਦੇ ਹੋ ਰਹੇ ਹੈ ਯਾਰ ਨਾ ਕਿਸੇ ਹੋਰ ਦਾ ਨਾਂਕ ਦੇ ਹੱਥ ਜਿਹੜਾ ਦਿੱਤਾ ਹੈ ਲੇਖਾਂ ਬੋਲਣਾ ਸਮਝਾ ਜੇ ਨਹੀਂ ਬਾਣੀ ਜਾਈਆ ਤੁਰਕੀ ਉਹ ਤਾਂ ਖਜ਼ਾਨੇ ਜੋ ਆਈਆ ਫਿਰ ਸਪਲਾਈ ਕੀਤੀ ਹੈ ਨਾਂਕ ਨੇ ਇਹ ਪਖਤਾਨੇ ਕਿਸੇ ਨੇ ਵੀ ਕੀਤੀ ਹੈ ਜਾਂ ਉਹ ਜਿਹੜਾ ਸਪਲਾਈ ਦੱਸਣ ਵਾਲਾ ਕਰਨ ਵਾਲਾ ਉਹ ਦਾਨਵਾਨ ਹੈ ਦਾਦਾ ਦੀ ਹੈ ਦਾਦਾ ਪੁੱਛੇ ਵਾਲਾ ਦੱਦਾ ਦਾਤਾ ਇਹ ਇੱਕੋ ਹੀ ਕੋਈ ਰਹੂਗਾ ਦਾਤਾ ਦਾਨਵਾਨ ਕਈ ਹੋ ਸਕਦੇ ਨੇ ਦਾਤਾ ਇੱਕੋ ਹੀ ਰਹੂਗਾ ਦਾਨਵਾਨ ਅਸ ਦਾਤਾ ਦਾ ਫਰਕ ਦੱਸਿਆ ਆਦਮੀ ਦਾਨਵਾਨ ਤਾਂ ਹੋ ਸਕਦਾ ਦਾਨਵਾਨ ਹੱਥ ਨਾਲ ਦੇ ਰਿਹਾ ਉਹ ਮਾਲ ਖਰੀਦਿਆ ਉਹਦਾ ਜੋ ਦੇ ਰਿਹਾ ਦਾਤਾ ਗਣਾ ਹੋਰਗਲ ਦਾਨਵਾਨ ਕਣ ਹੋਰਗਲ ਦਾਨਵਾਨ ਤਾਂ ਨੌਕਰ ਵੀ ਹੋ ਸਕਦਾ ਸਰੇ ਸਦਾਨਵਾਨ ਕੋ ਜਿਹੜੇ ਦਾਨਵਾਨ ਨੇ ਜਿਹੜੇ ਗਿਆਨ ਕਰਾ ਰਹੇ ਨੇ ਉਹਨਾਂ ਦਾ ਰਾਜਾ ਤੂੰ ਵਾਹ ਲੋ ਨਾ ਦਾ ਵਾਹ ਰਾਜੇ ਦਾ ਦੇ ਰਹੇ ਨੇ ਉਹ ਉਹ ਦਾਨਵਾਨ ਨੇ ਦੇਤੇ ਨਹੀਂ ਉਹ ਇਹ ਗੱਲ ਦਾ ਆਦਿ ਵਿੱਚ ਨਹੀਂ ਕਿਤੇ ਵੀ ਜ਼ਿਕਰ ਹੈਗਾ ਇਹ ਪੋਰਡ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਆਦਿ ਵਿੱਚ ਪਤਾ ਹੀ ਨਹੀਂ ਜਗਾ ਇੱਥੇ ਐਸੀਆਂ ਬਰੀਕੀਆਂ ਖੋਲੀਆਂ ਨੇ ਇਹਨਾਂ ਲੋਕਾਂ ਨੂੰ ਕੀ ਪਤਾ ਪਾਗਲਾ ਨੂੰ ਵੀ ਕੀ ਗੱਲ ਹੈ ਉਹਨਾਂ ਦਾ ਧਰਮ ਦਾ ਇਹ ਨਿਬਧਾ ਵੀ ਤਾਂ ਰੁਕੀ ਹੁੰਦਾ ਸੁਰੇਸ਼ ਦਾਨਵਾਨ ਕੋ ਤੀਜਾ ਕੀ ਹੈ ਮਹੇਸ਼ ਗੰਗਧਾਨ ਮਹੇਸ਼ ਕੋ ਬਹਿਸ਼ ਕਿਦੇ ਵਾਸਤੇ ਜਿਹਦੇ ਹਿਰਦੇ ਚ ਬਾਣੀ ਉਤਰਦੀ ਹੈ ਗੰਦਾ ਉਤਰਦੀ ਹੈ ਗਾਂਧੀ ਗੰਧਾਨ ਬਾਣੀ ਉਤਰਦੀ ਹੈ ਐਸੇ ਨੂੰ ਕਹਿੰਦਾ ਹੈ ਉਹ ਹਿਰਦੇ ਵਾਸਤੇ ਤੂੰ ਬਹਿਸ਼ ਬੈਠਾ ਵਿਹੇਸ਼ ਜੱਟ ਮਹੇਸ਼ ਬੈਠਾ ਮਹੇਸ਼ ਗੰਗਧਾਨ ਨੂੰ ਹਾਂ ਉੱਥੇ ਉਹ ਜੱਟ ਉਹਦਾ ਚੁੱਤੜੀ ਆ ਕੇ ਵਿਹੇਸ਼ ਗੰਗਧਾਨ ਨੂੰ ਜੇ ਗੰਗਧਾਨ ਉਤਰਦੀ ਆ ਫਿਰ ਵਿਹੇਸ਼ ਬਾਹਰ ਕਿਤੇ ਨਹੀਂ ਜਾਂਦਾ ਉਤਰਦੀ ਚ ਉਤਰਦੀ ਹੁੰਦੀ ਹੈ ਵਿਹੇਸ਼ ਗੰਗਧਾਨ ਨੂੰ ਆਪੇ ਇਸ ਕਹੀ ਫਿਰ ਵੀ ਦਨੋ ਵੇਸ ਕਰਦੇ ਨੇ ਫਿਰ ਵੀ ਜੜੀ ਜੇ ਸੰਸਾਰ ਦੇ ਵਿੱਚ ਉਤੋਂ ਆ ਰਹੇ sab jo gyan aa rahe hai sach khand to sidha message aa rahe hai koi tera farman koi aa rahe hukam aa rahe wo bhi kisi aadmi de through aa rahe je tu daan dwariyan da ta tu eta bhi kisi aadmi de through aa rahe kyun dhanwan vaaste kiye tu suraj dhanwan ko suraj san ਗੰਗਾਤਾਂ ਵਾਸਤੇ ਜਿਹਦੇ ਅੰਦਰ ਗੰਗਾ ਆ ਰਿਹਾ ਉਹਦੇ ਵਾਸਤੇ ਕੀ ਹੈ ਤੂੰ ਸ਼ਿਵ ਰੂਪ ਸ਼ਿਵ ਸ਼ਕਤੀ ਆਪੋ ਪਾਇ ਕੇ ਕਰਤਾ ਆਪਣੇ ਕੋ ਬਲਤਾ ਸ਼ਕਤੀ ਸ਼ਿਵ ਦੀ ਹੈ ਉਹਦੇ ਕੋਲ ਤੇਰੇ ਕੋ 아이 ਸ਼ਿਵ ਉਹਦੇ ਵਾਸਤੇ ਕੀ ਹੈ ਤੂੰ ਉਹਦੇ ਵਾਸਤੇ ਸ਼ਿਵ ਹੈ ਉਹ ਤੈਨੂੰ ਸ਼ਿਵ ਕਹੂਗਾ ਜਿਹਨੂੰ ਬਾਣੀ ਦਿੱਤੀ ਹੈ ਤਾਂ ਗੰਗਾ ਜੀ ਦੇ ਹਿਰਦੇ ਚ ਵਹਾਈ ਹੈ ਉਹ ਤੈਨੂੰ ਸ਼ਿਵ ਕਹੂਗਾ ਸ਼ਿਵ ਸ਼ਕਤੀ ਆਪੋ ਪਾਇ ਕੇ ਕਰਤਾ ਆਪਣੇ ਕੋ ਬਲਤਾ ਉਹਦੇ ਵਾਸਤੇ ਤੂੰ ਸ਼ਿਵ ਹੈ शिव ने शक्ति पैदा की थी तेरे अंदर जो शक्ति प्रकट हुई है शिव दी है शिव ने पैदा की थी तू और भी सब कह लो बोले भाते तू शिव जेड़ा दान कर रहे है ज्ञान दे रहे है चाहे पढ़ के दे रहे है अ जो अंदर ही नहीं प्रकट हुई पढ़ के ही दे रहे है समझ गई ओ दानवा ने आप पैसे ਸਾਰਿਆਂ ਤੇ ਸਭ ਕੁਝ ਕਰਾਉਂਦਾ ਹੋਇਆ ਵੀ ਇਹ ਧਾਰੀ ਨਹੀਂ ਹੈ ਤੋ। ਆਪੇਸ ਕਹੀਏ ਤੈਨ ਸਾਰੇ ਕਹਿੰਦੇ ਨੇ ਆਪੇਸ ਤੂੰ। ਉਹ ਜੀ। ਆਪੇਸ ਕਹੀਏ ਤੈਨ। ਆਪੇਸ ਕਹੀਏ ਤੈਨ। ਫਿਰ ਵੀ ਦਿਨੋਂ ਆਪੇਸ ਬੁਲਦੇ ਸਾਰਾ ਕੁਝ ਆਪ ਕਰਦਾ ਹੈ। ਫਿਰ ਵੀ ਆਪੇਸ ਦੇਦੀ ਲੋੜੇ ਨਹੀਂ ਤੈਨੂੰ ਕੋਈ ਸ਼ਰੀਰ ਦੀ ਲੋੜੇ ਨਹੀਂ ਭਾਈ। ਹੂੰ। ਰੰਗ ਮੈਂ ਰੰਗੀਨ। ਰਾਗ ਰੂਪ ਮੈਂ ਪਰਬੀਨ। ਇਹ ਨਹੀਂ ਆਗੂ ਤੇਰਾ ਰੰਗ ਨਹੀਂ ਕੋਈ ਰੰਗ ਵੀ ਆਇਗਾ ਹਰਾਪੇ ਹੀ ਇੱਕ ਰੰਗ ਹੈ ਆਪੇ ਬੋਰੰਗੀ ਰੰਗ ਮੈਂ ਰੰਗਦੇ ਵੇਦਾ ਤੂੰ ਲੋਕਾਂ ਨੂੰ ਰੰਗ ਲਵਾਣਾ ਹੈ ਰੰਗ ਰੰਗਣ ਵਾਲਾ ਹੈ ਰੰਗਣ ਵਾਲਾ ਹੁੰਦਾ ਰਾਗ ਰੂਪ ਮੈਂ ਪ੍ਰਵੀਨ ਜੇ ਰਗਣ ਐਸਾ ਰੰਗ ਨਾ ਡੀਡ ਰੰਗਣ ਵਾਲਾ ਜੇ ਰੰਗੇ ਸਾਹਿਬ ਸਾਹਿਬ ਤਾਂ ਲਲਾਰੀ ਹੈ ਰੁਗੜ ਮਾਰਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਹੋਰ ਕੋਈ ਚੜਾਈ ਨਹੀਂ ਸਕਦਾ ਜੈਸਾ ਤੂੰ ਚੜਾ ਦਿੰਦਾ ਰੰਗ ਰੰਗ ਦੇ ਵਿੱਚ ਵੀ ਪ੍ਰਵੀਨ ਹੈ ਤੇਰੇ ਵਰਗਾ ਰੰਗ ਵਿੱਚ ਕੋਈ ਨਹੀਂ ਚੜ੍ਹ ਸਕਦਾ ਔਰ ਰਾਗ ਦੇ ਵਿੱਚ ਵੀ ਪ੍ਰਵੀਨ ਰਾਗ ਰੂਪ ਰਾਗ ਦੇ ਰੂਪ ਰਾਗ ਦੇ ਰੂਪੇ ਨੇ ਸਾਰੀ ਰਾਗਣੀ ਇਹਦੇ ਵਿੱਚ ਰਾਗ ਦੇ ਰੂਪੇ ਨੇ ਕੋਈ ਗਲਤੀ ਦਾ ਦੱਸੇ ਕਿੱਥੇ ਹੈ ਜਿਨੇ ਗੁਰਬਾਣੀ ਰਚੀ ਯਾਰ ਆਗਾ ਦੇ ਵਿੱਚ ਯਾਰ ਆਗਾ ਰਗੜੀਏ ਤੇ ਰਾਗ ਦਾ ਰੂਪ ਰਗਣੀ ਹੁੰਦੀ ਹੈ ਰਾਗ ਦੇ ਰੂਪਾਂ ਦੇ ਵਿੱਚ ਵੀ ਪ੍ਰਵੀਰ ਸਾਰੀ ਸਮਝ ਹੈ ਇਹ ਨਹੀਂ ਹੈ ਵੀ ਸਮਝ ਹੈ ਦੀ ਕੋਈ ਗਲਤੀ ਦੱਸਿਆ ਕੋਈ ਕਿੱਥੇ ਇਹ ਵੀ ਪ੍ਰਵੀਰ ਰੰਗਣ ਦਾ ਰਾਗ ਰੂਪ ਦੇ ਵਿੱਚ ਪ੍ਰਵੀਰ ਔਰ ਕਾਹੂ ਪੈਣਾ ਦੀਨ ਹੋਰ ਕਿਸੇ ਦੇ ਅੱਗੇ ਝੁਕਦਾਬਲੀ ਉਹ ਨਹੀਂ ਕਹਦੇ ਆ ਕਿ ਤੈਨੂੰ ਮਤਲਬ ਹੈ ਹੋਰ ਅੱਗੇ ਤੇ ਹੋਰ ਕਿਸੇ ਤੱਕ ਕੁਝ ਨਹੀਂ ਲੈਣਾ ਹੈਗਾ ਤੈਨੂੰ ਕਿਸੇ ਦੀ ਲੋੜ ਨਹੀਂ ਹੈ ਸਾਧ ਅਧੀਨ ਕਹੀ ਤਾ ਬਸ ਜੇ ਤੈਨੂੰ ਲੋੜ ਪੈਣੀ ਤਾਂ ਕਿਸੇ ਨਾਲ ਸਾਥ ਦੀ ਪੈਣੀ ਹੈ ਸਾਧ ਉਹਨੂੰ ਲੋੜ ਤਾਂ ਪੈਣੀ ਤਾਂ ਹੀ ਕਹਿੰਦਾ ਵੀ ਜੇ ਤੂੰ ਚਾਹਨਾ ਮੈਂ ਤੇ ਕੋ ਲੈਣ ਸਮਝ ਨਹੀਂ ਤਾਂ ਫਿਰ ਮੈਂ ਨੂੰ ਸੁਖਰਾਤਾ ਦੇਉ ਕੋਈ ਤਾਂ ਕਬਜ ਰਲਾ ਨਾ ਉਹਨੇ ਸਾਧਨਾ ਤਾਂ ਉਲਟੇ ਗੱਲ ਬੰਨੀ ਪੈਂਦੀ ਹੈ ਉਹਦੀ ਗੱਲ ਤਾਂ ਸੁਣ ਲੈਣਾ ਉਹਦੀ ਤਾਂ ਬੰਲਣ ਕੋਟੀ ਗੱਲ ਦੀ ਸੁਣਦਾ ਪਾਈਏ ਨਾ ਪਾਰ ਤੇਜ ਪੁੰਜ ਮੈਂ ਅਪਾਰ ਅਦੇ ਇੰਦਰਾਵਤਰ ਵੀ ਨੀਵੋ ਯੋਜਨਾ ਸਾਧਾ ਹੁਕਮ ਚ ਹੈ ਉਹ ਤਾਂ ਹਜ਼ਰਤਾ ਹੁਕਮ ਦੇ ਵਿੱਚ ਚੱਲਣ ਦੀ ਪਰ ਤੂੰ ਸਾਧ ਦੇ ਅਧੀਨ ਜੇ ਸਾਧ ਤੇ ਸੋਈ ਸੋਈ ਦੇਵੇ ਨਾਲਕ ਦਾਸ ਮੁਖ ਤੇ ਜੋ ਬੋਲੇ ਇਹ ਸੱਚ ਹੋਵੇ ਜਦੋਂ ਬੰਗਰਾ ਉਹ ਦਿੱਦਾ ਹੈ ਬਸ ਇਹ ਜਿਆ ਦੀ ਹੋਰ ਨਹੀਂ ਕੁਝ ਜੋ ਲੋੜ ਪੈਂਦੀ ਗਔ ਨੂੰ ਇਹ ਤੇ ਲੋੜ ਹੈ ਕਦਰ ਨਾਲ ਕੀਤੇ ਇਹੋ ਜੀ ਗੱਲ ਹੈ ਪਾਇਏ ਨਾ ਪਾਰ ਤੇਜ ਪੁੰਜ ਪਾਰ ਪਾਰ ਨਹੀਂ ਪਾਇਆ ਜਾ ਸਕਦਾ ਤੇਰਾ ਇਤਨਾ ਤੇਜ ਹੈ ਤੂੰ ਗਿਆਨ ਹੈ प्रचंड ਹੈ ਜੋ ਤੇਜ ਪੁੰਜ ਮੈਂ ਅਪਾਰ ਅਪਾਰ ਤੇਜ ਝਾਕ ਨਹੀਂ ਸਕਦਾ ਕੋਈ ਹਾਂ ਵਿਦਿਆ ਕੇ ਉਧਾਰ ਹੈ ਸਰਬ ਵਿਦਿਆ ਕੇ ਉਧਾਰ ਸਾਰੇ ਵਿਦਿਆ ਤਖ਼ਿਆਲੇ ਤੂੰ ਸਾਰੀ ਬੱਧਾ ਤੇਰੇ ਬੱਚੇ ਆ ਜੋ ਰਤਨਾਰੇ ਜੀ ਤਹਾਂ ਬਦੇਈ ਆ ਇਹਦੇ ਤਾਂ ਲੋਕ ਖੋਜ-ਖੋਜ ਕੇ ਵਿਦਵਾਨ ਹੁੰਦੇ ਜਾਂਦੇ ਨੇ ਹਾਂ ਅਪਾਰ ਕਹੀਤ ਹਨ ਕਿਸ ਕਰਕੇ ਤੈਨੂੰ ਅਪਾਰ ਕਹਿੰਦੇ ਹਾਥੀ ਦੀ ਪੁਕਾਰ ਪਲ ਪਾਛੇ ਪਹੁੰਚ ਦਤਾ ਚੀਟੀ ਦੀ ਝੰਗਾਰ ਪਹਿਲੇ ਹੀ ਸੁਣੀ ਤਹਾਂ ਦੇਖੋ ਉਹ ਗੱਲ ਦਸੀ ਹੈ ਜਿਹੜੀ ਕਹਿੰਦੇ ਨੇ ਸਾਧ ਦੇ ਅਧੀਰ ਇਹ ਗੱਲ ਕਲੀਅਰ ਕੀਤੀ ਇਹਦੇ ਵਿੱਚ ਕਿਉਂਕਿ ਸਾ ਚੀਂਟੀ ਆ ਬਣ ਕੇ ਖਾਏ ਉਧਰ ਜੇ ਸੱਖਤਾ ਸੱਖਤੇ ਕੋ ਮਾਰੇ ਤਾਂ ਉਹ ਰੋਸ ਨਾ ਹੋਈ ਸੱਖਤੇ ਲੜਦੇ ਨੇ ਲੜੇ ਕੋਈ ਉਹਨਾਂ ਦੀ ਨਹੀਂ ਸੁਣਦਾ ਸੱਖਤੇ ਹਾਥੀ ਕੀ ਪੁਕਾਰ ਹਾਥੀ ਦੀ ਪੁਕਾਰ ਨਹੀਂ ਸੁਣਦਾ ਬਲ ਬਾਛੇ ਪਹੁੰਚਦਾ ਹੈ ਤਾਂ ਇਹ ਉਹਦਾ ਅੰਕਾਰ ਹੀ ਨੇ ਉਹਦਾ ਬਾਛੇ ਬੰਦਿਆ ਚੀਂਟੀ ਦੀ ਪੁਕਾਰ ਬੈਲੈਂਸ ਸੁਣ ਲੈਣ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਣੀ ਚੀਟੀ ਦੀ ਜਗ੍ਹਾ ਬੈਠੇ ਸੁਣ ਲੈਣਾ ਚੀਟੀ ਕੌਣ ਹੈ ਚੀਟੀ ਭਗਤ ਹੈ ਕਦ ਹਰਾਇਆ ਖਾਂੜ ਰੇਤ ਵਿੱਚ ਬਿਖਰੀ ਹਾਥੀ ਚੁੜੀ ਨਾ ਜਾਏ ਕਾਰਿਕੇ ਮੈਂ ਚੁੜੂਗਾ ਕਾਰਿਕੇ ਨਹੀਂ ਚੁੜ ਸਕਦਾ ਕਾਲ ਕਵੀਰ ਗੁਰ ਭਲੀ ਚੀਟੀ ਬਣ ਕੇ ਖਾਏ ਇਹ ਚੀਟੀ ਵਾਲੀ ਗੱਲ ਇੱਥੇ ਤਾਜ਼ਾ ਲਿੰਦੀ ਹੈ ਉੱਥੋਂ ਚੱਕ ਕੇ ਲੈਂਦੀ ਹੈ ਉਹ ਚੀਟੀ ਚੀਟੇ ਨੂੰ ਬਲ ਜਾਂਦੀ ਹੈ ਖਰਾਕ ਚੀਂਡੀ ਦੀ ਖਰਾਕ ਥੋੜੀ ਹੁੰਦੀ ਹੈ ਹਾਥੀ ਰੌਣਾ ਪਾਈ ਜਾਵੇ ਸਮਾਧੀ ਲਾਈ ਜਾਵੇ ਵਾਲਾ ਫੇਰ ਜਾਵੇ ਉਹ ਨੂੰ ਨਹੀਂ ਦਿੰਦਾ ਕਹਦੇ ਉਹਦੀ ਚੀਟੇ ਦੀ ਬੈਲੈਂਸ ਹੁੰਦੀ ਨੇ ਜਿਉਂ ਉਹ ਗੇ ਜੋਗਾ ਹੈਗਾ ਸਭ ਕੋ ਪਿਆਉਣਾ ਰੇ ਤਕੀ ਲੜ ਉਹਦਾ ਮੂਹੇ ਉੱਡਾ ਹੈ ਬਰੀਕ ਚੀਜ਼ ਬਾਤ ਉਹਦਾ ਬਰੀਕ ਹੈ ਕਿਤੇ ਇੰਦਰ ਦਵਾਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਇੰਦਰ ਦਵਾਰ ਕਿਤੇ ਤੇਰੇ ਦਵਾਰੇ ਤੇ ਬੈਠੇ ਤੇਰੇ ਦਵਾਰੇ ਤੇ ਬੈਠੇ ਕਿਤੇ ਇੰਦਰ ਸਾਰਾ ਤੇਰਾ ਦਵਾਰਾ ਹੀ ਹੈ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਬ੍ਰਹਮਣ ਜਿਹੜੇ ਚਾਰ ਪ੍ਰਕਾਰ ਦਾ ਗਿਆਨ ਚਾਰ ਪ੍ਰਕਾਰ ਦੇ ਵੇਦਾਂ ਦਾ ਕਤਲ ਕਰਦੇ ਨੇ ਮੁਖ ਚਾਰ ਨਾ ਚਾਰ ਪ੍ਰਕਾਰ ਦਾ ਗਿਆਨ ਰੁਕੋ ਕਿਤੇ ਕ੍ਰਿਸ਼ਨ ਆਵਤਾਰ ਕੇ ਰਾਮ ਕਹੀ ਹ ਤਾਂ ਕਿ ਲੋਕ ਕ੍ਰਿਸ਼ਨ ਅਵਤਾਰ ਨੇ ਕਦ ਨਹੀਂ ਰਾਮ ਨੇ ਰਾਮ ਕਹੀਤਾ ਕ੍ਰਿਸ਼ਨ ਅਵਤਾਰ ਹੈ ਰਾਮ ਕਹੀਤਾ ਹੈ ਕਿਤੇ ਕ੍ਰਿਸ਼ਨ ਅਵਤਾਰ ਕਿਤੇ ਰਾਮ ਅਵਤਾਰ ਕ੍ਰਿਸ਼ਨ ਅਵਤਾਰ ਦੇ ਹੁੰਦਾ ਕ੍ਰਿਸ਼ਨ ਦਾ ਨਾਮ ਹੈ ਨਾ ਅਜੀਬ ਆਤਮਾ ਕ੍ਰਿਸ਼ਨ ਦਾ ਕਾਲੇ ਦਾ ਨਾਮ ਕਾਲਾ ਦਾ ਦਸ਼ੀਨ ਵਿੱਚ ਹੈ ਇਹ ਅਵਤਾਰ ਹੈ ਕਿਤੇ ਰਾਮ ਕਹੀਤਾ ਕਿਤੇ ਰਾਮ ਕਹੀਤਾ ਹੈ ਜਿਹੜੇ ਪ੍ਰਾਥਮਿਕ ਆਰਾਮ ਨੂੰ ਨਾਮ ਕਹਿੰਦੇ ਨੇ ਕਿਉਂਕਿ ਜਿੱਥੇ ਕ੍ਰਿਸ਼ਨ ਨਾਮ ਆਉਥੇ ਹੀ ਹੈ ਜਿੱਥੇ ਕ੍ਰਿਸ਼ਨ ਨਾਮ ਆਰਾਮ ਇਹ ਦੋਏ ਰਲ ਕੇ ਕਹਿੰਦੇ ਨੇ ਕ੍ਰਿਸ਼ਨ ਵੀ ਅੱਧਾ ਆਉ ਵੀ ਅੱਧਾ ਉਹ ਤਾਂ ਅੱਧੇ ਦੀ ਪੂਜਾ ਹੀ ਕਰਦੇ ਨੇ ਅੱਧੇ ਨੂੰ ਜਾਣਦੇ ਨੇ ਸਾਬਤਾਂ ਨੂੰ ਪਤਾ ਹੀ ਨਹੀਂ ਸੀ ਸਾਬਤਾਂ ਕੀ ਹੈ ਇਸੇ ਕਰਕੇ ਉਹਨਾਂ ਨੂੰ ਮੂਰਤੀ ਦੀ ਲੋੜ ਪਈ ਉਹਦੇ ਲੋੜ ਤਾਂ ਹੀ ਪਈ ਜਿਹੜਾ ਉਹ ਵੀ ਅੱਧਾ ਉਹ ਵੀ ਅੱਧਾ ਕਿਤੇ ਸਸੀ ਰਾਸੀ ਕਿਤੇ ਸੂਰਜ ਪ੍ਰਕਾਸੀ राम भक्त ਹੈ ਇਹ ਗੁਰਬਾਣੀ राम भक्त ਅਣਿਲੇ ਤੀਰ राम भक्ति ਦੀ राम भक्ति ਜੇ ਇੱਕ ਇਹਨਾਂ ਨੂੰ ਕਹਿੰਦੇ ਆਂ राम भक्ति ਇਹ राम भक्ति ਹੈ ਇਹਨਾਂ ਦੇ ਇਹੋ ਜਿਹੋ ਕੀੜੇ ਦੇ ਪੌਣ ਤੇ ਪਾਣੀ ਪੈਦਾ ਕਰਬ ਗਰਪਾਲ ਸਿੰਘ ਦੇ ਕੀੜਿਆਂ ਦੇ ਭੌਣ ਤੇ ਇਹਨਾਂ ਨੂੰ ਐ ਲੱਗੂਆ ਜਿਵੇਂ ਰਾਮ ਭਗਤ ਕਹ ਜੀਏ। ਇਹ ਕੀ ਕਹਤਾ? ਰਾਵਣ ਵਾਲੇ ਨੇ ਲੜਦੀਆਂ ਇਹਨਾਂ ਨੂੰ। ਇਹ ਹੈ ਰਾਮ ਭਗਤ। ਕ੍ਰਿਸ਼ਨ ਭਗਤੇ ਵੀ ਆ ਰਾਮ ਭਗਤ ਜੀ ਦੋਹ ਜੀ ਤਾਂ ਇੱਕ ਦੀ ਬੋਲਤੀ ਬਣਦੇ ਇਹ ਆਤਮ ਚਿੰਤਨ। ਅੱਪੇ ਜਬੋ ਆਪਣਾ ਜਾਪ ਹੈ ਕਿਸੇ ਦਾ ਜਾਪ ਨਹੀਂ ਹੈ। ਇੰਨਾ ਵੀ ਪਤਾ ਇਹਨਾਂ ਨੂੰ ਇਹਨਾਂ ਨੂੰ ਤਾਂ ਵੈਗੁਰੂ ਦਾ ਜਾਪ ਲੱਗਦਾ ਹੈ ਇਹਨਾਂ ਨੂੰ ਨਹੀਂ ਪਤਾ ਵੈਗੁਰੂ ਕੀ ਹੁੰਦਾ ਹੈ ਤਾਂ ਵੈਗੁਰੂ ਦਾ ਜਾਪ ਸਮਝਦੇ ਨੇ ਵੈਗੁਰੂ ਦਾ ਜਾਪ ਨਹੀਂ ਆਤਮ ਚੇਤਨ। ਕੁਰਬਾਨੀ ਆਤਮ ਚੇਤਨ ਆਪੇ ਜੱਭੋ ਆਪਣਾ ਜਾਪ ਹੈ ਆਪਣੇ ਆਪ ਨੂੰ ਸਮਝਣਾ ਹੈ ਨੂੰ ਸਮਝਣਾ ਆਪਣੇ ਆਪ ਨੂੰ ਸਮਝਣਾ ਯਾਰ। ਕੋ ਨਾਨਕ ਬਣਾ ਆਪਾ ਚੀਦੇ ਬੇਟੇਰਾ ਭਰਮ ਕੀ ਕਾਈ। ਇਹਨਾਂ ਨੂੰ ਕੀ ਪਤਾ ਇਹ ਤਾਂ ਅਸਰ ਜੀ ਮੈਂ ਪੜਨਾ ਤਕਾਇਨਾ ਉਹਵੇਂ ਹੈ ਬੰਦੀ ਬੈਠੇ ਨੇ ਲਫ ਦੇ ਵੈਗਰੂ ਬਣਾ ਲਿਆ ਹੋਰ ਵੈਗਰੂ ਦਾ ਅਰਥ ਤਾਂ ਨਹੀਂ ਬਦਾ ਵੈਗਰੂ ਰਕੀਉਂ ਤਾਂ ਵੈਗਰੂ ਦਾ ਉਸਤ ਤੀਰ ਹੁੰਦਾ ਵਾਇ ਤਾਂ ਉਸਤ ਨੂੰ ਕਹਿੰਦੇ ਵਾ ਵਾ ਵਾਲੀ ਲੁਗਾਰ ਵਾ ਵਾ ਵਾ ਦੀ ਹੈ ਉਹਦੀ ਵਧਾਈ ਹੈ ਵਾ ਵਾ ਵਧਾਈ ਨੂੰ ਕਹਿੰਦੇ ਗੁਰੂ ਵੇ ਜਲਦੀ ਵੜਾਈ ਹੈ ਵਾਹ ਵਾਹ ਬਾਣੀ ਰੰਕਾਰ ਹੈ ਜਿਹੜੀ ਤੇ ਵਾਹ ਬਾਣੀ ਹੈ ਸਿੱਧੇ ਦੇ ਨਾਕਾਰ ਅੱਖਰਾਂ ਦੀ ਹੈ ਜੀ ਅੱਖਰਾਂ ਦੇ ਪਰੇ ਹੋ ਤਾਂ ਹੈ ਅੱਖਰਾਂ ਦੇ ਵਿੱਚ ਬੋਲੀ ਹੈ ਬਾਣੀ ਨਹੀਂ ਹੈ ਬਾਣੀ ਤਾਂ ਹੋਰ ਚੀਜ਼ ਹੈ ਬਾਣੀ ਤਾਂ ਬਿਨਾਂ ਕਰਨਾ ਦੇ ਸੁਣਨ ਵਾਲੀ ਹੈ ਕਿਤੇ ਸੱਸ ਰਾਸੀ ਕਿਤੇ ਸੂਰਜ ਪ੍ਰਕਾਸੀ ਕਿਤੇ ਸੱਸਿ ਰਾਸੀ ਅਸੀਰ ਅਸੀਰ ਜਿਹੜੇ ਚੰਦਰਵੰਤ ਸਿੰਘ ਕ੍ਰਿਸ਼ਨ ਵਾਲੇ ਜੱਦਰਵੰਤ ਸਿੰਘ ਨੇ ਸਾਰੇ ਚੰਦਰਵੰਦੀ ਦੇਖੋ ਚੰਦਰਮਾ ਕਿਉਂ ਗਿਆ ਕ੍ਰਿਸ਼ਨ ਨੂੰ ਬਲਦੂ ਵੀ ਚੰਦਰਵੰਤ ਕਹਿਆ ਹੋਇਆ ਕੁਰਬਾਣੀ ਕਿਉਂਕਿ ਚੰਦਰਵੰਦੀ ਆਪਣੀ ਜੋਤ ਨਹੀਂ ਹੁੰਦੀ ਚੰਦਰਵੰਦੀ ਭਗਵੀਂ ਜੋਤ ਹੁੰਦੀ ਸੂਰੀ ਤਾਂ ਹੁੰਦੀ ਹੈ ਬੰਦੀ ਵੀ ਆਪਣੀ ਜੋਤ ਨਹੀਂ ਹੈ ਬਾਹਰਲੇ ਚੰਦਰਮੇ ਨੂੰ ਤਾਂ ਚੰਦਰਮਾ ਬੰਨੇ ਉਹਦੀ ਆਪਣੀ ਲਾਈਟ ਹੈ ਲਾਈਟ ਸੂਰਜ ਤੋਂ ਫਿਰਦੀ ਉਹਦੇ ਤੇ ਜੇ ਵਿਚਾਲੇ ਜ਼ਮੀਰ ਆਇਆ ਚੰਦਰਮਾ ਕਾਲਾ ਹੋ ਜਾਂਦਾ ਸੂਰਜ ਨਿਕਾਲਾ ਹੁੰਦਾ ਸੂਰਜ ਦੇ ਵਿਚਾਲੇ ਜੇ ਚੰਦਰਮਾ ਆਉਂਦਾ ਸੂਰਜ ਉਹਨਾ ਸਾਨੂੰ ਦੀਦਾਰੀ ਹੈ ਉਹਨਾਂ ਦੀਦਾਰੀ ਹੈ ਜਿਵੇਂ ਹੱਥ ਪੂਰੇ ਆਜਵੇਂ ਨਾ ਉਹਨਾਂ ਦੀਦਾਰੀਆਂ ਕਾਲਾ ਨਹੀਂ ਹੁੰਦਾ ਸੂਰਜ ਚੰਦਰਮਾ ਤੇ ਲਾਈਟ ਹੀ ਨਹੀਂ ਪੈਂਦੀ ਯਾਰ ਰੁਕ ਜਾਂਦੀ ਹੈ ਕਾਲਾ ਹੋ ਜਾਂਦਾ ਉਹਦਾ ਅਸਲੀ ਜੋ ਰੂਪ ਉਹੀ ਦੀਦਾ ਸਾਨੂੰ ਜਨਰਲ ਆਪਣੀ ਲੈਟੀ ਸੂर्यਵੰਸੀ ਨ ਕੋ ਜਿਹੜੇ ਰਾਮ ਆ ਸੂਰਜਵੰਸੀ ਆ ਉਹਨੂੰ ਕਿਹਾ ਆ ਇਹ ਚੰਦਰਵੰਸੀ ਐ ਤੂੰ ਪਤਾ ਲੱਗਣਾ ਗੱਲ ਕੀ ਆ ਕੁਝ ਚੰਦਰਵੰਸੀ ਬੋਲਦੇ ਨੇ ਆਪਣੇ ਆਪ ਨੂੰ ਸੂਰਜਵੰਸੀ ਬੋਲਦੇ ਨੇ ਦੋ ਧੜਿਆਂ 'ਚ ਵੰਡੇ ਗਏ ਫਿਰ ਇਹ ਕ੍ਰਿਸ਼ਨ ਨੂੰ ਬੁਲਣ ਵਾਲੇ ਚੰਦਰਵੰਸੀ ਬੋਲਦੇ ਨੇ ਆਪਣੇ ਆਪ ਨੂੰ ਦੂਜੇ ਸੂਰਜਵੰਤ ਸੀ ਬੰਦ ਤੇ ਰਾਉ ਦੋ ਕਿਸਮ ਦੇ ਇੱਥੇ ਰਾਜੇ ਵੀ ਹੋਏ ਨੇ ਦੋ ਕਿਸਮ ਦੇ ਇਹ ਵਿਸ਼ਨੂੰ ਦੇ ਦੋ ਹੋ ਗਏ ਕਹਾਂ ਜਾ ਕੇ ਅਵਤਾਰ ਦੋ ਅਵਤਾਰ ਵਿਸ਼ਨੂੰ ਦੇ ਨੇ ਰਾਮਚੰਦਰ ਵੀ ਇਹ ਦੂਆ ਵੀ ਦੋ ਵਿਸ਼ਨੂੰ ਦੇ ਅਵਤਾਰ ਤਾਂ ਹੀ ਕਹਿੰਦਾ ਦੋਏ ਕੋਨੇ ਚੰ ਦੋਆਂ ਦੀ ਕੋ ਬੰਦਨ ਲੈ ਹੋਰ ਸਹਣਦੇ ਆਡਾ ਨਹੀਂ ਹਣ ਕਹਿੰਦੇ ਕੋਰੇ ਦੋਏ ਰਿਕੋ ਕੇ ਮੈਨੇ ਫਿਰ ਵਾ ਵਾ ਵਾ ਡਡ ਸਭ ਕੁਝ ਡਡ ਜਿਵੇਂ ਇਹਨਾਂ ਨੇ ਕਰੇ ਹੋਏ ਨੇ ਜਨਮ ਆ ਡਡ ਹੋਇਆ ਹੋਇਆ ਇੱਕੋ ਕੇ ਬਨੇ ਬਸ ਇੱਕੋ के ਹੈ ਜੇ ਗੁਰਬਾਨੀ ਦੇ ਬੰਦੀ ਗੁਰਬਾਨੀ ਦੇ ਹਿਸਾਬ ਨਾਲ ਬੰਦੀ ਫਿਰ ਇੱਕੋ ਨੇ ਇਹਨਾਂ ਦੇ ਹਿਸਾਬ ਨਾਲ ਬੰਦੀ ਹੈ ਇਹ ਹੀ ਸੋਧ ਦੇ ਸਭ ਤੋਂ ਸਾਸਤ ਸਗਲਾ ਗੁਰਬਾਨੀ ਅੰਤਰਾਤਮਾ ਸੂਰਿਵੰਸੀ ਹੈ ਜਿਹੜਾ ਮਨ ਹੈ ਉਹ ਚਦਰਵਤ ਸੀ ਹੈ ਆਪਣੀ ਜੋਤਰੀ ਹੁੰਦੀ ਹੈ ਦੇਖੋ ਤੇ ਇਹਦੇ ਚਾਨਣ ਸਭ ਮੈਂ ਚਾਨਣ ਕਿਹਦੇ ਚਾਨਣ ਸੂਰਜ ਦੇ ਚਾਨਣ ਸਭੇ ਚਾਨਣ ਹੋਏ RAM ਨੇ ਚਾਨਣ ਨਾ ਕਹੋ ਕਬੀਰ ਤੂੰ RAM ਕੀ ਅੰਸ਼ ਕੀ ਅੰਸ਼ ਹੈ RAM ਸੂਰਜਵੰਸੀ ਹੈ ਜੇ ਤਾਂ ਇਦਾਂ ਸਮਝਣਗੇ ਫੇਰ ਤਾਂ ਸਭ ਕੁਝ ਠੀਕ ਹੈ ਪਰ ਇਹਨਾਂ ਨੂੰ ਕੀ ਪਤਾ ਵਿਚਾਰੇ ਨੂੰ ਕੀ ਹੈ ਇਹਨਾਂ ਦਾ ਆਮਰ ਗ੍ਰੇਸ਼ਣ ਤੋਂ ਹੋਈ ਜਾਂਦੀ ਹੈ ਇਹਦਾ ਗਾਹਾਂ ਫਿਰ ਜੇ ਇੱਕ ਵਾਰ ਇਹਨਾਂ ਨੂੰ ਰਾਹ ਦਾ ਨਾ ਸੋਣਿਆ ਫਿਰ ਤਾਂ ਬੁੱਧੀ ਬੰਦ ਹੋ ਜਾਂਦੀ ਹੈ ਸੁਣਦੀ ਹੋਈ ਨਹੀਂ ਕੁਝ ਫੇਨੀ ਜ਼ੋਰ ਦੇ ਆਣੇ ਸਮਝਣਾਂ ਗਿਆ ਜਾਂ ਸੁਣਨਾ ਹੀ ਨਹੀਂ ਜਾਂ ਸੁਣਨਾ ਹੀ ਨਹੀਂ ਸਮਝਣਾ ਸੋਏ ਇਹਨਾਂ ਨੇ ਬੁੱਧੀ ਇਹਦੇ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸੀ ਸ਼ਸ਼ੀ ਰਾਸੀ ਐ ਚੰਦਰਵੰਸੀ ਸੂਰਜ ਪ੍ਰਕਾਸ਼ ਸੀਗਾ ਉਹ ਸੂਰਜਵੰਸੀ ਸੂਰਜਵੰਸੀ ਵੀ ਉਹ ਇਹਨੇ ਰਾਜੇ ਉਹਨਾਂ ਦੀ ਕਥਾ ਲਿਖੀ ਹੋਈ ਹੈ ਜਿਹੜਾ ਰਾਮਚੰਦਰ ਦਾ ਬਾਬਾ ਹੈ ਉਹਦੀ ਕਥਾ ਲਿਖੀ ਹੈ ਰਾਜਾ ਰਗਦੀ रामचंद्र ਜੋ ਗੋਲ ਜਿਹੜੇ ਉਹਦੇ ਵਿੱਚ ਰਾਮਚੰਦਰ ਜੋ ਗੋਲੀ ਦੱਸਿਆ ਜੋ ਰਾਜਾ ਰਗਦੇ ਗੋਲ ਦੱਸਿਆ ਨੇ ਦਸ ਪਾਜਾ ਰਾਮਚੰਦਰ ਨਹੀਂ ਹੈਗੇ ਗਰਮਾਨ ਸੀਗਾ ਰਾਮ ਜਦ ਰਾਵਲ ਨੂੰ ਕਹ ਰਿਹਾ ਗਰਮਾਨ ਨੂੰ ਬੇਟਾ ਰਾਵਲ ਨੂੰ ਕਹ ਰਿਹਾ ਗਰਮਾਨ ਇਹ ਤੋਂ ਕੋ ਲੈ ਲੋ ਪੂਰੀ ਗਰਮਾਨ ਰਾਂ ਰਾਜੇ ਕੋ ਤਾਂ ਇਹ ਆ ਕੇ ਬੈਠ ਗਏ ਜੇ ਜੋਗੀ ਆ ਕੇ ਬੈਠ ਕੇ ਉਹਨੇ ਕਹਿਆ ਸ਼ੇਵ ਰੂਪ ਹੈ ਜੇ ਸਦੈਸੀ ਆ ਕੇ ਬੈਠ ਗਿਆ ਕਹਿੰਦੇ ਦੱਤੇ ਹੀ ਦੱਤ ਉਤਾਰ ਰ ਉਹ ਤਾਂ ਇਹ ਜੀ ਸੀਗਾ ਜੇ ਆਗੇ ਬ੍ਰਹਮਾ ਬੈਠ ਕੇ ਬ੍ਰਹਮ ਰੂਪ ਕਰ ਜਾਂਦਾ ਬ੍ਰਾਹਮਣ ਬ੍ਰਹਮ ਰੂਪ ਕਰ ਜਾਂਦਾ ਜੇ ਬ੍ਰਾਹਮਣ ਆ ਕੇ ਕਹਿੰਦੇ ਉਹ ਕਹਿੰਦੇ ਬ੍ਰਹਮਾ ਹੀ ਹੈ ਬਿੱਡਾ ਗਿਆ ਲੋਰਤੀ ਉਹ ਸਾਰਾ ਸਾਰੇ ਉਹਦੇ ਥੱਲੇ ਸੀ ਗੱਲ ਦੇ ਵਿੱਚ ਰਾਵਦਤ ਇਹ ਨਹੀਂ ਲਿਖਿਆ ਰਾਵਦਤ ਦਰਵਾਜ਼ੇ ਇਹ ਜੁਰਮ ਸੀ ਕਿਤੇ ਮੁੰਡੀਆਂ ਉਦਾਸੀ ਤਾਂ ਸੂਰਜਵੰਸੀ ਕਹਿੰਦੇ ਰਾਮ ਰਾਮਚੰਦ ਨੂੰ ਇਹਦੇ ਬਜ਼ੁਰਗ ਸੂਰਜ ਜੀ ਟੱਡੋ ਗਿਆਨ ਸੀ ਉਹਨਾਂ ਕੋਲ ਪੂਜੁਰਗਾ ਕੋ ਇਹਦੇ ਕੋਲ ਨਹੀਂ ਸੀ ਘਰ ਆਪਚੰਦਰ ਕੋ ਸੂਰਜਵੰਸੀ ਹੈ ਵਧੀਆ ਹੈ ਬੰਸ ਸੂਰਜ ਦੇ ਵਿੱਚ ਉਹ ਹੈ ਆਪਨੀ ਸੂਰ ਜਾਏਗਾ ਕਿਤੇ ਮੁੰਡੀਆਂ ਉਦਾਸੀ ਕਿਤੇ ਮੁੰਡੀਆਂ ਉਦਾਸੀ ਕਿਤੇ ਸਰਮੁਲ ਨੇ ਉਦਾਸੀ ਸੰਤ ਯੋਗ ਦਵਾਰ ਕਹੀ ਹੱਟਾਂ ਵਾਲੇ ਹੁੰਦੇ ਨੇ ਇੱਕ ਇੱਕ ਮੁੰਡੀਆਂ ਹੁੰਦੇ ਨੇ ਦੋ ਤਿੰਨ ਜੋਗੀ ਵੀ ਉਹ ਉਦਾਸੀ ਕਹਿੰਦੇ ਨੇ ਆਪਣੇ ਆਪ ਨੂੰ ਮੁੰਡੀਆਂ ਉਦਾਸੀ ਉਦਾਸੀ ਕਹੀ ਉਹ ਯੋਗ ਦਵਾਰ ਕਹਿੰਦੇ ਨੇ ਜੋਗ ਜੋਗ ਦਾ ਜਿਹੜਾ ਹੈਗਾ ਜੋਗ ਨਾਲੇ ਕਹਿੰਦੇ ਦਵਾਰ ਜਿਹੜਾ ਜੋਗ ਹੈਹੀ ਦਵਾਰ ਹੈ ਉਹਦਾ ਸੱਚਖੰਡ ਦਾ ਦਰਵਾਜਾ ਮੁਕਤੀ ਦਾ ਮਾਰਗ ਜੋਗੇ ਹੈ ਉਹ ਐ ਕਹਿੰਦੇ ਨੇ ਯੋਗ ਦਾ ਦਵਾਰ ਕਹਿੰਦਾ ਅਸੀਂ ਸਾਡੇ ਕੋਲੇ ਯੋਗ ਦਾ ਦਵਾਰ ਹੈ ਸਤੋਵਨ ਤੁਸੀਂ ਇਦਾਂ ਨਹੀਂ ਬਣ ਸਕਦੇ ਕੀਤੇ ਮਹਾਦੀਨ ਕੀਤੇ ਵਿਆਸ ਸੇ ਪ੍ਰਵੀਨ ਕੀਤੇ ਮਹਾਦੀਨ ਨੇ ਜਿਹੜੇ ਆਪਣੇ ਬੱਬੂ ਸਾਹਿਬ ਆਏ ਦੇ ਬੱਬੂ ਆਪਣਾ ਕੁਸਲ ਬਣਾ ਦੇ ਇਹਨਾਂ ਦੇ ਵੀ ਬਹੁਤ ਆਏ ਨੇ ਗਰਮ ਇਹ ਇਹ ਉਹਨਾਂ ਨੂੰ ਕਹਿੰਦੇ ਨੇ ਨਵੀ ਇਹਨਾਂ ਦੇ ਨੰਬੇ ਬਹੁਤ ਆਏ ਨੇ ਉੱਚ ਗਿਆਨ ਵਾਲੇ ਸੀ ਉਹ ਵੀ ਕਿਤੇ ਵਿਆਸ ਸੇ ਪ੍ਰਵੀਨ ਕਿਤੇ ਬੇਦ ਵਿਆਸ ਵਰਗੇ ਪ੍ਰਵੀਨ ਅਸੀਂ ਉਹਨੂੰ ਹੁਣ ਗੁਰਮੁਖ ਕਹਿੰਦੇ ਆ ਗੁਰਮੁਖ ਅੰਧੀ ਕਹਿੰਦੇ ਉਹਦਾ ਬੇਦ ਕਹਿੰਦੇ ਸੀ ਵਿਆਸ ਕਹਿੰਦੇ ਸੀ ਕਿਤੇ কুমੇਰ ਕੁਲੀਨ ਕਿਤੇ ਜੱਛ ਕਹੀਤਾ ਕਿਤੇ কুমੇਰ ਕੁਲੀਨ ਕੁਮੇਰ ਕੁਮੇਰ ਜਿਹੜੇ ਨੇ ਨਾ ਇਹ ਇੱਧਰ ਦੇ ਖਜ਼ਾਨਚੀ ਰਾਜ ਦੇ ਉਹ ਕੁਮੇਰ ਕੰਦਰੂ ਲੋ ਇਹ ਜਿਹੜੇ ਜੱਛ ਗੰਧਰਵ ਇਹ ਪੜੇ ਲਿਖੇ ਲੋਕ ਸੀ ਇਹ ਕਤਾਰਾਂ ਦੇ ਜੀਬ ਗਲਝੜਦੇ ਸੀ ਗਾਉਂਦੇ ਵੀ ਸੀ ਨੱਚਦੇ ਵੀ ਸੀ ਇਹ ਪੜੇ ਲਿਖੇ ਸੀ ਸਾਰੇ ਕੁਮੇਰ ਕੁਲੀਨ ਗੁਲੇ ਉਹਨਾਂ ਦੀ ਕੁਲ ਦੇ ਵਿੱਚੋਂ ਅਖਿਆਤ ਹੈ ਕਿ ਇਥੇ ਜੱਜ ਗਈ ਹੈ ਉਹ ਵੀ ਭਗਤੀ ਕਰਦੇ ਨੇ ਅਸਲ ਜੋ ਵੀ ਭਗਤ ਬੰਦੇ ਨੇ ਆਪਣੇ ਆਪ ਰੂਵੀ ਭਗਤੀ ਹੈ ਸਾਡੀ ਕਰ ਤਾਂ ਹਾਂ ਵਿਚਾਰ ਕਰਦੇ ਰਹਿੰਦੇ ਜੋ ਦੀ ਜਿਹੜਾ ਕਰਦੇ ਵਿਚਾਰ ਕਰਦੇ ਰਹਿੰਦੇ ਜੇ ਪਰ ਉਹਦੀ ਪੂਰਨਤਾ ਦੀ ਪਾਰ ਨਹੀਂ ਪਾ ਸਕਦੇ ਉਹਦੇ ਗਿਆਨ ਦੀ ਸਮਝ ਨਹੀਂ ਹੈ ਵਸਤੂ ਕੀ ਹੈ ਉਹ ਕਿੱਥੋਂ ਬਣੂ ਇਹਦੀ ਬਤ ਹੈ ਕਿਸੇ ਰਾਦਰ ਉਪਉਲਾ ਕੀ ਹੈ ਇਹਦੀ ਪਤਾ ਕਿਸੇ ਨੂੰ ਤਾਂ ਤੇ ਅਪਾਰ ਨਿਰਾਧਾਰ ਲਈਤ ਹੈ ਤਾਂ ਹੀ ਤਾਂ ਕਹਿੰਦੇ ਨੇ ਅਪਾਰ ਹੈ ਉਹ ਨਿਰਾਧਾਰ ਹੈ ਉਹ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਉਹਦਾ ਆਧਾਰ ਹੈ ਉਹ ਨਿਰਾਧਾਰ ਹੈ ਉਹ ਕਿਸੇ ਦੇ ਆਸਰੇ ਨਹੀਂ ਹੈ ਨਿਰਾਧਾਰ ਦੀ ਪ੍ਰਾਪਤੀ ਚਾਹੁੰਦੇ ਨੇ ਜਿਹਦਾ ਆਧਾਰ ਕੀ ਹੈ ਸਾਰੀ ਸ੍ਰਿਸ਼ਟੀ ਦਾ ਆਧਾਰ ਉਹ ਹੈ ਆ ਆ ਤਾਕਤ ਨਾਲ ਹੱਥ ਖੜੀਏ ਉਹਦੇ ਆਪਣੇ ਫਿਰ ਦੁਬਾ ਗਾਣ ਰਹਾ ਹਿਆ ਕਿਦੀ ਸ਼ਕਤੀ ਨਾਲ ਖੜੀਏ ਉਹਦੀ ਸ਼ਕਤੀ ਨਾਲ ਪਾਣੀ ਦੇ ਹੱਥੇ ਪਹਾੜ ਤਾਰਦੇ ਕਿਦੀ ਸ਼ਕਤੀ ਨਾਲ ਤਾਰਦੇ ਉਹਦੀ ਸ਼ਕਤੀ ਨਾਲ ਤਾਰਦੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਕਹਿੰਦੇ ਧਰਤੀ ਪਾਣੀ ਜਿਲਦੀ ਹੈ ਸਾਇੰਸ ਵੀ ਵੀ ਬੰਦਦੇ ਨੇ ਅਤੇ ਖੇਡੋ ਹੀ ਜਣ ਨਰਾ ਲਹੀਤ ਹੈ ਹਾਂ ਆਪ ਨਰਾ ਤਾਰ ਹੈ ਉਹਦੇ ਤੇ ਕਿਸੇ ਦਾ ਹੱਥ ਨਹੀਂ ਹੈ ਉਹ ਕਿਸੇ ਤੇ ਬੈਰ ਨਹੀਂ ਰੱਖਿਆ ਹੈ ਉਹਦੇ ਉਹਨੇ ਸਾਰਿਆਂ ਨੂੰ ਟਿਕਾਇਆ ਹੋਇਆ ਜਗਾ ਜਗਾ ਉਹਦੀ ਸ਼ਕਤੀ ਨਾਲ ਸਾਰੇ ਖੜੇ ਨੇ ਉਹਦੇ ਪਿਛੇ ਕਿਸੇ ਦੂਜੇ ਦੀ ਸ਼ਕਤੀ ਵੀ ਕੰਮ ਕਰਦੀ ਉਹਦੀ ਆਪਣੀ ਸ਼ਕਤੀ ਹੋਈ ਪੂਰਨ ਅਵਤਾਰ ਨਿਰਧਾਰ ਹੈ ਨਾ ਪਾਰਾਵਾਰ ਪਾਈਏ ਪੂਰਨ ਅਵਤਾਰ ਹੈ ਪੂਰਨ ਅਵਤਾਰ ਹੈ ਨਿਰਧਾਰ ਨਿਰਧਾਰ ਪੂਰਨ ਅਵਤਾਰ ਨਿਰਧਾਰ ਉਹਦਾ ਪੂਰਨ ਅਵਤਾਰ ਹੁੰਦਾ ਉਹ ਵੀ ਨਿਰਧਾਰ ਹੁੰਦਾ ਉਹ ਨੂੰ ਮਾਇਆ ਦਾ ਨਿਰਧਾਰ ਨਹੀਂ ਲੋੜੀ ਹੁੰਦੀ ਸ਼ਬਦ ਦਾ ਨਿਰਧਾਰ ਹੁੰਦਾ ਪੂਰਨ ਅਵਤਾਰ ਨਿਰਧਾਰ ਹੈ ਉਹ ਵੀ ਨਿਰਧਾਰ ਹੁੰਦਾ ਜਿਹੜਾ ਪੂਰਨ ਅਵਤਾਰ ਹੁੰਦਾ ਨਾ ਉਹਦਾ ਉਹ ਵੀ ਨਾ ਉਹ ਦਾ ਆਧਾਰ ਵੀ ਹੁੰਦਾ ਉਹਦਾ ਨਾ ਪਾਰਾਵਾਰ ਪਈ ਹੈ ਉਹਦਾ ਹੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਹੋਰ ਤਾਂ ਕੀ ਦਾ ਪੁੱਣ ਗੁਰਮੁਖ ਦਾ ਪੁੱਲ ਉਹ ਤਾਰਾ ਉਹਦਾ ਹੀ ਪਾਰਾਵਾਰ ਪਾਇਆ ਜਾਂਦਾ ਇੱਥੇ ਤੁਦਿਆਂ ਦਾ ਤਾਂ ਕੀ ਦੇ ਪੁੱਣ ਦਾ ਆ ਹੈ ਅਪਾਰ ਕਹਿ ਬਖਾਨੀਆਂ ਉਬਿਨਰਾ ਜਾ ਰਿਹਾ ਹੈ ਜਿਹੜਾ ਹੁਕਮ ਦੇ ਵਿੱਚ ਸੁਪਾ ਗਿਆ ਉਹ ਵੀ ਨਰਾ ਤਾਰਿਆ ਹੈ ਅਪਾਰ ਕਹਿ ਬਖਾਨੀਆਂ ਇਸ ਕਰਕੇ ਉਹਨੂੰ ਉਹਨੂੰ ਵੀ ਅਪਾਰ ਹੈ ਕਹਤਾ ਲੋਕਾਂ ਨੇ ਜਿਹੜੇ ਗੁਰਬਖੋਏ ਨੇ ਨਾ ਉਹਨਾਂ ਨੂੰ ਵੀ ਕਹਤਾ ਅਪਾਰ ਹੈ ਉਹਨਾਂ ਦੀ ਬੁੱਧੀ ਵੀ ਵਿਵੇਕ ਬੁੱਧੀ ਉਹਨਾਂ ਕੋਲ ਹੈ ਉਹਦੀ ਪਰਮੇਸ਼ਰ ਦੀ ਬੁੱਧੀ ਹੈ ਇਹ ਪਰਮੇਸ਼ਰ ਦੀ ਬੁੱਧੀ ਹੈ ਇਹ ਜਗਦੀਸ਼ ਦੀ ਜੋਤ ਹੈ ਕਬੀਰ ਨੇ ਕਿਹਾ ਸੀ ਕਿ ਨਾ ਬੋਤੀ ਬਾਗ ਵਿੱਚ ਤੇਰੇ ਧਾਨਕ ਸਜਾਏ ਆ ਬੋਤੀ ਖੜਾਏ ਹੋਏ ਨੇ ਸਾਰੇ ਕੁਰਬਾਨੀ ਚ ਬਾਗ ਦੇ ਵਿੱਚ ਪੜਨ ਵਾਲੇ ਇੰਨੇ ਨੇ ਇਹ ਸਾਰੇ ਇੰਨੇ ਨੇ ਗੁੱਦੀ ਹੀ ਨਾ ਕਹਿੰਦੇ ਨੇ ਗੁੱਦੀ ਹੀ ਕਹਿੰਦੇ ਨੇ ਅੱਖਾਂ ਨਾ ਹੈਗੀਆਂ ਨੇ ਪੜਦੇ ਹੋਰ ਕਾਦੇ ਨਾਲ ਅੰਦਾ ਦੇਖ ਸਜਾਏ ਜੋਤ ਬਿਨਾਂ ਜਗਦੀਸ਼ ਕੀ ਜਗਦੀਸ਼ ਵਾਲੀ ਜੋਤ ਨਹੀਂ ਹੈ ਕੋਲ ਇਹਨਾਂ ਦੀ ਆਪਣੀ ਜੋਤ ਹੈ ਆਪਣੀ ਜੋਤਾਂ ਨਹੀਂ ਅਦੀਦੇ ਇਹ ਜੋਤ ਬਦਲਣੀ ਚਾਹੀਦੀ ਸੀ ਇਹਨਾਂ ਨੂੰ ਜੋਤ ਬਦਲ ਦੀ ਕਿਰਪਾ ਨਾਲ ਜੋਤਾਂ ਕਿਰਪਾ ਨਾਲ ਬਦਲਦੀਆਂ ਇਹ ਤਾਂ ਆਪਣੀ ਅਕਲ ਨਾਲੇ ਬੜਦੇ ਨੇ ਕੁਰਬਾਨੀ ਨੂੰ ਆਪਣੀ ਅਕਲ ਨਾਲੇ ਸਮਝਦੇ ਨੇ ਤੁਕਾਰੀ ਜੋ ਹੈ ਜੋਤ ਮਨਾ ਜਗਦੀਸ਼ ਕੀ ਜਗਤੋਂ ਲੰਘੇ ਜਾਏ ਜੇ ਇਹ ਲੋਗ ਨੂੰ ਸਮਝ ਲੈਦੇ ਹੋਰ ਕੋ ਵਿਦਵਾਨ ਸ਼ਹਾਦੇ ਗੁਰਬਾਨੀ ਤੇ ਸਭ ਇਹ ਦਾਅਵੇ ਕਰਨੀ ਛੱਡ ਦਿੰਦੇ ਸਭ ਜਣ ਵਾਲੇ ਪਾਸੇ ਆ ਜਾਂਦੇ ਪੁੱਛਣ ਲੱਗ ਜਾਂਦੇ ਵੀ ਗੱਲ ਕੀ ਐ ਇਹ ਲਿਖਿਆ ਕਬੀਰ ਦੇ ਸ਼ਰੋਗਰ ਥਾ ਕੇ ਦਿਖਾ ਦੇ ਕੋਈ ਜਿਹੜਾ ਬਹੁਤਾ ਆਪਣੇ ਆਪ ਨੂੰ ਕਲਾਕਾਰ ਸਮਝਦਾ ਹੈ ਅਜਿਹੇ ਲੋਕ ਕਬੀਰ ਵਾਲੇ ਉਹ ਇਹਨਾਂ ਦਾ ਕੋਈ ਫਰਕ ਦਾ ਪਤਾ ਨਹੀਂ ਤੁਹਾਨੂੰ ਗੱਲਾਂ ਘੜਕੜੀਆਂ ਕਰਦੇ ਕਾਰ ਨੂੰ ਮੈਂ ਬਗਜੌੜੀ ਮਾਰਦੇ ਹੂੰ ਕਿਨੇ ਤੁਹਾਨੂੰ ਘਾਸ ਗੇਰ ਲੀਏ ਕਿਸੇ ਨੇ ਕਹ ਸਾਰਾ ਪਰਦਾ ਹੀ ਚੱਕ ਦੇਣਾ ਜਾਂ ਪਰਦਾ ਹੀ ਚੱਕਿਆ ਜਾਣ ਉਹਦਾ ਪਰਦੇ ਦੇ ਪਿੱਛੇ ਸਾਰਿਆਂ ਨੂੰ ਪਤਾ ਲੱਗ ਜਾਣਾ ਵਿਆਹ ਪਿਆ ਸਭ ਕੁਝ ਲੈ ਤੁਸੀਂ ਗੱਲਾਂ ਕਰਦੇ ਹੋ ਜਵਾਬ ਦੇਣੇ ਔਖੇ ਹੋ ਜਾਣਗੇ ਅਗਲੇ ਜਵਾਬ ਮੰਗਣਗੇ ਜਵਾਬ ਦੇਣੇ ਔਖੇ ਹੋ ਜਾਣਗੇ ਜਰਾ ਬਚ ਕੇ ਬੋਲੋ ਥੋੜਾ ਜਿਹਾ ਜਿੱਡਾ ਉਹ ਆੜੇ ਹੱਡ ਲੈਣੇ ਕਬੀਰ ਕਹਾ ਔਰਨ ਕੋ ਉਪਦੇਸ਼ ਤੇ ਮੁਖ ਮੇਂ ਪੜਾ ਰੇਤ ਉਹ ਵੀ ਐਵੇਂ ਕਰਦੇ ਸੀ ਜਿਹਨਾਂ ਨੂੰ ਕਬੀਰ ਕਹਿ ਰਿਹਾ ਔਰਨ ਕੋ ਉਪਦੇਸ਼ ਤੇ ਮੁਖ ਮੇਂ ਪੜਾ ਰੇਤ ਰਸਵਰਾਣੀ ਰਖਤੇ ਖਾਇਆ ਘਰ ਦਾ ਖੇਤ ਆਪਣੇ ਪੱਲੇ ਕੱਖ ਵੀ ਨਹੀਂ ਹੈ ਲੋਕਾਂ ਨੂੰ ਉਪਦੇਸ਼ ਕਰਦੇ ਹੋ ਸਭ ਕੁਝ ਲੈ ਆਇਆ ਗੁਰਬਾਣੀ ਚ ਤੁਸੀਂ ਕਦੇ ਪੜ੍ਹੀ ਹੈ ਪੜਿਆ ਇੱਕ ਅੱਖ ਦੀ ਤੁਸੀਂ ਤਾਂ ਜੇ ਪੜ ਲਵੇ ਗੁਰਬਾਣੀ ਆਪੇ ਚੁੱਪ ਕਰ ਜਾਂਦਾ ਇਹ ਆ ਬੱਚਾ ਪਕਰਾ ਦਿੰਦੀ ਹੈ ਬਾਣੀ ਪੜਦੇ ਪੜਦੇ ਨੂੰ ਚੁੱਪ ਕਰਾ ਲੈਂਦੀ ਹੈ ਕੋਈ ਬੋਲੀਦਾ ਨਹੀਂ ਹੁੰਦਾ ਜਿਆਦਾ ਅਦਵਾ ਹੈ ਪਰਮਪੂਰਨ ਪ੍ਰਕਾਸ਼ੀ ਅਦਵਾ ਹੈ ਪਰਮਪੂਰਨ ਪ੍ਰਕਾਸ਼ੀ ਅਦਵਾ ਵੈਤ ਨਹੀਂ ਹੈ ਆਪਣਾ ਪਰਾਇਆ ਨਹੀਂ ਹੈ ਕੋਈ ਦੂਸਰਾ ਨਹੀਂ ਸਾਰੇ ਆਪਣੇ ਨੇ ਅਬਨਾਸ਼ੀ ਜਿਹੜਾ ਅਦਵਾ ਉਹ ਉਹ ਵੀ ਹੈ ਓਏ ਓਏ ਓਦਵਤ ਉਹ ਬਨਾਸ਼ੀ ਹੋ ਜੂਗਾ ਅਦਵਾਏ ਜੇ ਆਦਮੀ ਕੋਈ ਹੋਜੇ ਨਾ ਆਤਮਾ ਉਹ ਵੀ ਆਪਣਾਸ਼ੀ ਹੈ ਹੋਜੂ ਉਹ ਕਦਾ ਦੇਖੇ ਕੋਈ ਅਦਵਾਏ ਹੋਵੇ ਬੈ ਪਤਾ ਲ ਕੋ ਆਪਣਾਸ਼ੀ ਅਕ ਨਹੀਂ ਹੈ ਅਦਵਾਏ ਹੋਣਾ ਹੀ ਨਹੀਂ ਆਪਣਾਸ਼ੀ ਕੇ ਹੋਜੂ ਅਦਵਾਏ ਆਪਣਾਸ਼ੀ ਹੈ ਪਰਮਪੂਰਨ ਅੰਦਰੋਂ ਦਏ ਦੂਜੀ ਕੱਢ ਦੇਵੇ ਜੇ ਦੁਆ ਕੇ ਸਾਨੂੰ ਬੰਦੇ ਹੀ ਨਾ ਉਹ ਜਿਹੜਾ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਇਓ ਇਹ ਤਾਂ ਨਹੀਂ ਡੇੜੀ ਹੈ ਔਕਾ ਕੁਛ ਵੀ ਨਹੀਂ ਔਕਾ ਮੰਨਣਾ ਔਕਾ ਕੁਛ ਵੀ ਨਹੀਂ ਸਭ ਤੋਂ ਬਸ ਮੰਨਣਾ ਹੀ ਔਖ ਹੈ ਖੜੇ ਤਾਂ ਸਹੀ ਕਿਤੇ ਇਹ ਤਾਂ ਖੜਦਾ ਹੀ ਕਦੇ ਨਹੀਂ ਬਣੂ ਕਿਤੇ ਤਾਂ ਖੜੇ ਹਾਂਜੀ ਪਰਮ ਪ੍ਰਕਾਸ਼ੀ ਪਰਮ ਪ੍ਰਕਾਸ਼ੀ ਪ੍ਰਕਾਸ਼ ਵਰ ਕਿਹਾ ਜਾਂਦਾ ਪਰਮ ਪ੍ਰਕਾਸ਼ ਹੋ ਜਾਂਦਾ ਹੋ ਵੀ ਜਾਂਦਾ ਪੂਰਾ परम प्रकाश हुंदा ज्ञान दा प्रकाश ज्ञान दा प्रकाश हुंदा हृदय च उत्तर होए ज्ञान प्रकाश तिस स्थान का नहीं विनाश हो गया ना अपना الشيء हो गया कि नहीं अंतर होए ज्ञान प्रकाश तिस स्थान का नहीं विनाश विनाश नहीं होता होता फिर सगड़ी दाव छ पैया भक्ति ओही गल है लिखी हुई ਘੇਲੀ ਬਗਦ ਇਹੇ ਨਹੀਂ ਮਿਲਦੀ ਗੁਰਬਾਣੀ ਨੂੰ ਬੰਦੇ ਨੂੰ ਕੀ ਬਤਾਉਣਾ ਇਹਦਾ ਮੇਰੇ ਜਗਦੀਸ਼ ਦੀ ਜੋਤ ਉਹਦੀ ਤਾਂ ਪਛਾਣ ਲੈਂਦੇ ਉਹ ਕਿੱਥੋਂ ਲੈ ਕੇ ਆਉਣੇ ਹੈ ਜੋਤ ਬਿਨਾ ਜਗਦੀਸ਼ ਕੀ ਜਗਤੋਂ ਲੰਗੇ ਮਹਾਰੂਪ ਹੋ ਕੇ ਰਾਸੀ ਹੈ ਮਹਾਰੂਪ ਹੋ ਕੇ ਰਾਸੀ ਮਹਾਰੂਪ ਹੋ ਕੇ ਰਾਸੀ ਹੈ ਅਨਾਸੀ ਕਹਿ ਕੇ ਮੰਨੀ ਜਿਹੜਾ ਮਹਾਰੂਪ ਦਾ ਵਾਂ ਰੂਪ ਦੀ ਰਾਸ ਹੈ ਵਾਂ ਰੂਪ ਦੀ ਮੂਰਤ ਹੈ ਤੇ ਕਹ ਲਓ ਆਹ ਨੂੰ ਰੂਪ ਕੀ ਰਾਸੀ ਹੀ ਨਹੀਂ ਵਾਂ ਰੂਪ ਕੀ ਨੂੰ ਅਨਾਸੀ ਕਹਿ ਕੇ ਉਹਦਾ ਨਾਸ ਨਹੀਂ ਹੁੰਦਾ ਉਹਨੂੰ ਅਨਾਸੀ ਕਹਿ ਕੇ ਬੰਨਣਾ ਚਾਹੀਦਾ ਨਾਸਵੰਤ ਨਹੀਂ ਰਹਿੰਦਾ ਫਿਰ ਉਹ ਜੋਤ ਨਾਸਵੰਤ ਹੁੰਦੀ ਹੋਈ ਨਹੀਂ ਜੋਦਰੀ ਨਾਸਮਤ ਹੈ ਜੋ ਦਾਦਾ ਹੁਣਾ ਜਾਣਦੇ ਸ੍ਰੀ ਨਾਚ ਜਿੱਦਾਂ ਜਿਹੜੇ ਸ਼ੁੱਧਰੀ ਹੁੰਦੀ ਜਿੱਦਾਂ ਜਿਹੜਾ ਗਿਆਨ ਪੂਰਾ ਨਹੀਂ ਹੈ ਜਿੱਦਾਂ ਜਿਹੜੇ ਦਰਮਾਇਆ ਦੀ ਭੁੱਖ ਹੈ ਜਿੱਦਾਂ ਜਿਹੜੇ ਮੰਨਦਾ ਮੈਂ ਕੁਝ ਕਰਦਾ ਐ ਕਾਰ ਲੈਦੇ ਜੰਬ ਲੈਣਦੇ ਔਰ ਕਾਰ ਲੈ ਲੱਕੀਆ ਜੰਮ ਲੈਣਦੇ ਜੰਤਰ ਹੋ ਨਾ ਜਾਤ ਜਾ ਬਾਪ ਹੋ ਨਾ ਮਾਇ ਤਾਂ ਕੀ ਜਤਰ ਨਾ ਜਾਤ ਜਾ ਬਾਪ ਹੋ ਨਾ ਮਾਇ ਤਾਂ ਨਾ ਤਾਂ ਉਹਦਾ ਕੋਈ ਯੰਤਰ ਹੈ ਬਚ ਕਰਨ ਯੰਤਰ ਮੰਤਰ ਕਰਦੇ ਨੇ ਯੰਤਰ ਨਾਲਾ ਤਬੀਰ ਦੇਤਾ ਤੈਨੂੰ ਐਸਾ ਕੋਈ ਤਬੀਰ ਨਹੀਂ ਆ ਜਿਹਦੇ ਤਾਂ ਹੁਕਮ ਤੁਹਾਡੇ ਤੇ ਲਾਗੂ ਨਾ ਹੋਵੇ ਉਹਦਾ ਇਹ ਕੋਈ ਨਾ ਬਜੋ ਕੋਈ ਉਹ ਤਾਂ ਹੋਗੋ ਨਹੀਂ বাজਾਈ ਜਾਣਾ ਗਾਲ ਤੋਂ ਉਹਦਾ ਕੋਈ ਇਲਾਜ ਨਹੀਂ ਹੈ ਕੋਈ ਯੰਤਰ ਨਹੀਂ ਹੈ ਯੰਤਰ ਹੂੰ ਨਾ ਜਾਤ ਜਾ ਕੀ ਦਾਦਾ ਕੋਈ ਸਰੀਰ ਹੈ ਨਾ ਕਿ ਯੰਤਰ ਹੈ ਬਾਬੂ ਹੁਨਾ ਮਾਇਤਾ ਕੀ ਨਾਲ ਦੀ ਮਾਂ ਬਾਪ ਹੈ ਕੋਈ ਪੂਰਨ ਪ੍ਰਵਾਹ ਕੀ ਸੋ ਛਟਾ ਕੈ ਅਨਵਾਨੀ ਐ ਪੂਰਨ ਪ੍ਰਵਾਹ ਕੀ ਛਟਾ ਕੈ ਅਨਵਾਨੀ ਐ ਐ ਗਾ ਲੋ ਤੇਜ ਰੋਸ਼ਨੀ ਦੀ ਛਟੇਕ ਤੇਜ ਰੋਸ਼ਨੀ ਦੀ ਬੀਮ ਕਹਿ ਸਕਦੇ ਆਪਾਂ ਵੀਬ ਵੀਬ ਕਹਿੰਦੇ ਨੇ ਰੋਸ਼ਨੀ ਦੀ ਜਿਹੜੀ ਹੁੰਦੀ ਐ ਲਾਈਟ ਜੋਤ ਇਕੱਠੀ ਵੱਜ ਵੀ ਛਟਾ ਜਿਵੇਂ ਤੋਂਪਾ ਕੱਲੀ ਤੁੱਪੇ ਤੋਂ ਸੂਰਜ ਨੂੰ ਲੱਗੇ ਅੱਛਾ ਠਾਕ ਆ ਕਹ ਲੋ ਜਿੱਤੇ ਯਾ ਇਹਦੇ ਚਾਲਣ ਹੋ ਗਿਆ ਜਿੱਦੇ ਇਹਦੇ ਚਾਲਣ ਹੁੰਦਾ ਬਸ ਉਹੀ ਚੀਜ਼ ਆ ਉਹ ਐਨ ਜੇ ਹੁਣ ਜਿਹਨੂੰ ਦੱਸਣਾ ਉਹ ਤਾਂ ਇਹ ਕਹੇ ਵੀ ਆ ਅਨੁਮਾਨ ਕਰ ਲੈ ਵੀ ਤੁੱਪਾ ਹੈ ਭਾਈ ਤੇਰੇ ਅੰਦਰ ਤਾਂ ਚੜਿਆ ਆ ਜਿਆਦਾ ਤਾਂ ਤੇਰੇ ਚੜਿਆ ਹੋਵੇ ਪਤਾ ਲੱਗ ਜੂ ਜਾਂ ਅੰਦਰੋਂ ਹਨੇਰਾ ਦੂਰ ਹੋ ਆਪੇ ਪਤਾ ਲੱਗ ਜੂ ਵੀ ਕੀ ਆ ਜਿਹੜੀ ਚੀਜ਼ ਦੀ ਸਮਝ ਆ ਜਾਂਦੀ ਹੈ ਉੱਥੇ ਦੱਜੜ ਜਾਂਦਾ ਨਾ ਉਹ ਬਸ ਉਹ ਦੱਜੜਦਾ ਜਾਂਦਾ ਹੌਲੀ ਹੌਲੀ ਹੰਤੋ ਜੋ ਦਾਲ ਪ੍ਰਕਾਸ਼ ਤੇਜ ਹੂੰ ਕਿਹਨ ਦਾ ਕੀ ਰਾਤ ਸੀ ਕੋ ਜੰਤਰਾ ਹੈ ਕੀ ਤੇਜ ਹੂੰ ਕੇ ਤੰਤਰ ਤੇਜ ਜੋਤ ਰੋਸ਼ਨੀ ਤੇਜ ਹੂੰ ਕੇ ਤੰਤਰ ਹੈ ਕੀ ਕੋਈ ਰੋਸ਼ਨੀ ਦਾ ਪੈਦਾ ਕਰਨ ਦੇ ਕੋ ਬਿਛੇਰ ਹੈ ਇਹ ਦੀ ਰੋਸ਼ਨੀ ਰਾਜਸੀ ਕੋ ਰੋਸ਼ਨੀ ਪੈਦਾ ਕਰਨ ਵਾਲੀ ਬਿਛੇਰ ਹੈ ਯਾ ਰਾਜਸੀ ਕੋ ਜੰਤਰ ਹੈ ਕੀ ਜੰਤਰ ਹੈ ਕੀ ਸਾਰਾ ਰਾਜ ਰਾਜਸੀ ਦਾ ਕੋਤ ਰਾਜਨੀਤੀ ਨਹੀਂ ਹੁੰਦਾ ਰਾਜਨੀਤੀ ਹੋਰ ਗੱਲ ਹੈ ਰਾਜਸੀ ਹੋਰ ਗੱਲ ਹੈ ਰਾਜਿਆ ਰਾਜ ਕਲਦੀ ਸਭਰਥ ਰਾਜ ਕਲਦੀ ਸ਼ਕਤੀ ਰਾਜਸੀ ਹੋਰ ਗੱਲ ਹੈ ਰਾਜਨੀਤੀ ਹੋਰ ਗੱਲ ਹੈ ਰਾਜਨੀਤੀ ਲਿਖੀ ਜਾਂਦਾ ਹੈ ਦਾ ਤੇ ਕੀ ਬਲ ਉਹ ਨੂੰ ਨੀਤੀ ਦੀ ਕੀ ਲੋੜ ਹੈ ਲੋਕਾਂ ਨੂੰ ਹੁਕਮ ਹੁਕਮ ਮਨੋਰਥ ਦੀ ਸ਼ਕਤੀ ਹੈ ਰਾਜਸੀ ਕੋ ਜੰਤਰ ਹੈ ਕੀ ਹੁਕਮ ਮਨੋਰਥ ਦੀ ਕੋ ਜੰਤਰ ਹੈ ਤੇੜੇ ਕੋ ਮਸ਼ੀਨ ਸਾਰਿਆਂ ਨੂੰ ਬੁਲਾਈ ਜਲ ਕੋਈ ਕੋਈ ਮੰਦਾ ਬਣੀ ਨਾ ਹੁਕਮ ਦਾ ਵਾਰ ਚੱਲੇ ਚੱਲ ਸਕੇ ਹਕੂਕ ਮੋਹਣੀ ਕੋ ਮੰਤਰ ਹੈ ਤੇਰਾ ਕੋਈ ਮੋੜੇ ਨਹੀਂ ਸਕਦਾ ਤੂੰ ਸਮਝੇ ਨਹੀਂ ਆਉਂਦੇ ਵੀ ਕੀ ਗੱਲ ਹੈ ਕਿਉਂ ਨਹੀਂ ਮੋੜ ਤੇਰੇ ਕੋ ਵੀ ਸਾਰਿਆਂ ਨੂੰ ਮੋਇਆ ਹੋਇਆ ਜਿਵੇਂ ਤੂੰ ਕਹਿੰਦਾ ਉਹ ਵੀ ਜਾਂਦੇ ਨੇ ਸਾਰੇ ਇਹ ਕੋਈ ਤੇਰੇ ਕੋ ਮੁੰਤਰੀ ਆਇਆ ਸੀ ਵਿੱਚ ਜੋ ਤੂੰ ਕਹਿੰਦਾ ਸੱਤੇ-ਸੱਤ ਕਹੀ ਜਾਂਦੇ ਨੇ ਸਾਰੇ ਨਿਯੰਤਰਕ ਐ ਕੈ ਜਾਨੀਆ ਤਾਂ ਹਉਂਦਾ ਫੈਨ ਜੰਤਰ ਬੰਦਲ ਜਾਈਦਾ ਜੰਤਰ ਬੰਦਲ ਤੰਤਰ ਤੋਂ ਪਰੇ ਇਹਨੂੰ ਜਲ ਤਰ੍ਹਾਂ ਨੂੰ ਬੰਦਤਰ ਨੂੰ ਤੰਤਰ ਤੇਜ ਹੂੰ ਕੇ ਤਰ ਹੈ ਕੀ ਰਾਜਸੀ ਕੋ ਸਰ ਹੈ ਕੀ ਤੇਜ ਹੂੰ ਕੇ ਤਰ ਹੈ ਕੀ ਤੇਜ ਹੂੰ ਕੇ ਤਰ ਹੈ ਕੀ ਤੂੰ ਤੇਰਾ ਕੋ ਪ੍ਰਕਾਸ਼ ਤੇ ਇਦਾਂ ਕੋਈ ਪ੍ਰਵਾਹ ਤੇ ਜੋਤ ਦਾ ਪ੍ਰਵਾਹ ਸਾਰੇ ਨੇ ਕਿ ਰਾਜਸੀ ਕੋ ਸਾਰੇ ਹੈ ਕਿ ਰਾਜਸੀ ਕੋ ਸਾਰੇ ਰਾਜਸੀ ਕੋ ਸਾਰੇ ਹੈ ਕਿ ਹਾਂ ਰਾਜਸੀ ਜਿਹੜੀ ਹੈ ਜਿੰਨੇ ਵੀ ਆਪਣਾ ਹੁਕਮ ਮਨੋਣ ਵਾਲੇ ਨੇ ਲੋਕ ਹੋਰ ਸੰਸਾਰ ਤੇ ਹੈਗੇ ਨਾ ਬੜੇ ਬੜੇ ਰਾਜੇ ਸਾਰਿਆਂ ਨੂੰ ਸਰਕਾਰ ਨੂੰ ਵਾਲਾ ਸਾਰਿਆਂ ਤੇ ਹੁਕਮਦਾਰ ਨੂੰ ਵਾਲਾ ਤੇਰੇ ਮੂਰੇ ਕੋਈ ਨਹੀਂ ਆਰਦਾ ਕੋਈ ਕਿਸੇ ਦੇ ਮੂਰੇ ਅੜਦਾ ਨਹੀਂ ਕਿਸੇ ਦੀ ਕੋਈ ਲੜਾਈ ਰਹੇ ਤੇਰੇ ਲਈ ਕਿ ਕਿਸੇ ਦੀ ਚਲਦੀ ਹੈ ਤੂੰ ਸਾਰੇ ਨੂੰ ਸਰਕਾਰੀ ਫਿਰਦਾ ਹੈ ਰਾਜਿਕੋ ਸਰ ਹੈ ਹਾਂ ਤੇਰੇ ਹੁਕਮ ਦੀ ਪਾਲਣਾ ਤੁਨੋਂ ਕਰਨੀ ਪਊਗੀ ਆਪਸ ਵਿੱਚ ਕੋਈ ਕਿਸੇ ਦੀ ਕਰੇ ਕੋਈ ਦੋਸਰੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਊਗੀ ਖੁਬ ਤੇਰੇ ਹੁਕਮ ਨੂੰ ਮੋੜਨਾ ਕਿਸੇ ਤੇ ਬਸਤੀ ਗੱਲੇ ਹੀ ਨਹੀਂ ਰਹੀ ਉਹ ਜੋ ਹੁਣੇ ਹੋਈ ਜਾਣੇ ਕੋਈ ਉਹਨੂੰ ਬੋੜ ਨਹੀਂ ਸਕਦਾ ਹੁਕਮ ਦੇ ਬੋੜਨਾ ਕੋਈ ਸਾਦੇ ਨਹੀਂ ਹੈ ਕਿਤੇ ਵੀ ਕੋਈ ਕੱਡਾ ਹੀ ਮੰਤਰ ਜੰਤਰ ਵਾਲਾ ਹੋਵੇ ਕੱਡਾ ਹੀ ਆਪਣੇ ਆਪ ਨੂੰ ਕੋਈ ਬਲੀ ਕਹਾਉਂਦਾ ਹੋਵੇ ਕੋਈ ਕਿੰਨਾ ਹੀ ਤਪਸਵੀ ਹੋਵੇ ਕੁਛ ਵੀ ਹੋਵੇ ਹੁਕਮ ਨੂੰ ਨਹੀਂ ਬੋੜ ਸਕਦਾ ਉਹਦੇ ਤੇ ਪਾਣੇ ਵਰਤੂਗਾ ਪਾਣੇ ਨੂੰ ਨਹੀਂ ਬੋੜ ਸਕਦਾ ਕੋਈ ਸੁੱਧਤਾ ਕੋ ਘਰ ਤਿੱਦ ਦਾ ਕੀ ਸਾਰ ਹੈ ਵਰਤਿਆ ਇਹ ਪੜ੍ਹ ਇਸਦਾ ਨਹੀਂ ਵਰਤਿਆ ਪੜ੍ਹ ਲਈ ਵਰਤਿਆ ਹੁਣ ਜਾਇ ਉਹ ਰੱਬ ਬੋਲਦੇ ਨੇ ਪਰ ਵਰਤਿਆ ਤਾਂ ਪੜਾਈ ਗਏ ਬੱਦੇ ਹੀ ਨੇ ਜਿਹਨਾਂ ਨੇ ਭੜਿਆ ਉਹ ਪਾਣਾ ਖੱਬਤੇ ਵਰਤੇ ਜਾਂਦੇ ਤੇਰਾ ਪਾਣਾ ਨਹੀਂ ਬੁਲ ਸਕਦਾ ਜੇ ਤੂੰ ਚਾਹਣਾ ਹੋ ਜਾਂਦਾ ਉਹ ਵੀ ਹੋ ਜਾਂਦਾ ਕਿੱਡਾ ਹੀ ਕੋ ਆਦਮੀ ਹੋਵੇ ਜਾਂਦਾ ਬਾਜ ਜਾਏ ਉਹ ਸਤ ਰੱਬ ਨੂੰ ਵੀ ਵੱਡਾ ਬੰਨਣ ਲੱਗ ਜਾਣ ਲੋਕ ਤੇਰੇ ਅੰਦਰ ਕੁਛ ਕੀ ਕੁਛ ਵੀ ਨਹੀਂ ਕਿਸੇ ਦਾ ਵਾਸ ਚੱਲਦਾ ਹੀ ਕੋਈ ਨਹੀਂ ਹੈ ਸੁੱਧਤਾ ਘਰ ਹੈ ਕੀ ਸਿੱਧਤਾ ਕੀ ਸਾਰ ਹੈ ਸੁੱਧਦਾ ਉਹ ਘਰ ਸੁੱਧਤਾ ਦਾ ਘਰ ਹੈ ਜਿਹੜਾ ਤੇਰੇ ਕੋਲ ਆ ਗਿਆ ਉਹਨੂੰ ਸੁੱਧ ਕਰ ਦਿੱਤਾ ਹੈ ਸਭ ਨੂੰ ਸੁੱਧ ਕਰ ਕਰ ਰੱਖੀ ਜਾਂਦਾ ਮਲੀਨ ਨਹੀਂ ਕਰਦਾ ਕਿਸੇ ਦਾ ਹਰਦਾ ਬਾਕੀ ਜਿਹੜੇ ਬڑے ਬڑے ਨੇ ਸ਼ੁੱਧ ਕੱਟ ਕਰਦੇ ਨੇ ਵਲੀਨ ਜਿਆਦਾ ਕਰਦੇ ਨੇ ਜਿਹੜੇ ਆਪਣੀ ਵਡਿਆਈ ਕਰਾਉਂਦੇ ਨੇ ਵਲੀਨ ਕਰਦੇ ਨੇ ਜਿਹੜੇ ਖੁਦਾ ਦੇ ਸ਼ਰੀਕ ਬਣੇ ਨੇ ਵਲੀਨ ਕਰਦੇ ਨੇ ਇਹਦਾ ਲੋਕਾਂ ਨਾਲ ਕੀ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਵੱਡੋ ਬੜਾ ਬਣਿਆ ਕਹਾਇਆ ਉਹਨਾਂ ਨੇ ਹਿਰਦੇ ਬਲੀਨ ਕੀਤੇ ਨੇ ਸ਼ੁੱਧ ਨਹੀਂ ਕੀਤੇ ਹੰ ਲੋਕ ਆਪਣੇ ਨਾਲ ਜੋੜ ਲੈ ਤੇ ਤੋ ਵਾਕੀ ਇੱਥੇ ਦੇ ਸ਼ਰੀਕ ਬਣ ਕੇ ਤੇ ਉਹਦਾ ਸ਼ਰੀਕ ਬਣਾਉਣਾ ਜਿਹੜਾ ਬਲੀਦ ਕਰਨਾ ਲੋਕਾਂ है ਹਿਰਦਾ ਸਿੱਧਤਾ ਕੀ ਸਾਰ ਹੈ ਸਿੱਧਤਾ ਕੀ ਸਾਰ ਹੈ ਤੇ ਤੋ ਵਧੀਆ ਸਮਝ ਕਿਤੇ ਨਹੀਂ ਹੈ ਬਸ ਸਭ ਘਟੀਆਂ ਸਮਝਾਣਾ ਤੇ ਤੇ ਥੱਲੇ ਥੱਲੇ ਤੂੰ ਸਾਰ ਦਾ ਵੀ ਤਤ ਸਾਰਾ ਕਿ ਸਾਰ ਹੈ ਹਾਂ ਤੇ ਤੂੰ ਸਾਰ ਜਿੰਨੀ ਆ ਉਹਦਾ ਤਤ ਹੈ ਜੋ ਸਮਝ ਆਇਆ ਉਹਦਾ ਵੀ ਤਤ ਤੂੰ ਕੱਢਿਆ ਹੈ ਤਤ ਤਤ ਕੱਢਿਆ ਹੈ ਸਾਰ ਦਾ ਸਾਰ ਜਿਹੜਾ ਉਹ ਥੱਲੇ ਸਭ ਕੁਝ ਅਜੀ ਤਾਂ ਤਤਨਗੜਾ ਬਾਕੀ ਸਭ ਥੱਲੇ ਰਹਿ ਗਏ ਸਦਾ ਕਿਸ ਕੀ ਖਾਨ ਹੈ ਕੀ ਕਾਮਨਾ ਕੀ ਖਾਨ ਕਾਮਨਾ ਕਿੱਥੋਂ ਪੈਦਾ ਹੁੰਦੀ ਹੈ ਜਿੱਦੀ ਕਾਮਨਾ ਤੇਰੇ ਚੋਂ ਪੈਦਾ ਹੁੰਦੀ ਹੈ ਫਿਰ ਉਹ ਦੂਜੇ ਚ ਪਾ ਦਿੰਦੇ ਤੂੰ ਉਹ ਵੀ ਕਾਮਨਾ ਕਰਨ ਲੱਗ ਜਾਂਦਾ ਜਿਹੜੀ ਕਾਮਨਾ ਅਸੀਂ ਕਰਦੇ ਆ ਤੇਰੇ ਤੋਂ ਲੈਣ ਦੇ ਹੈ ਤੇਰੀ ਚਾਹਣਾ ਤੂੰ ਕਰਨਾ ਕਰ ਕਰ ਦਿੰਦੇ ਆ ਅਸੀਂ ਕਾਵਨਾ ਤੋਂ ਹੈ ਕਾਵਨਾ ਆਦੂ ਕਰਦਾ ਕਰਨ ਗਿਜ਼ੇ ਦਿਮਾਂਜ ਹੋ ਗਿਆ ਜਾਂਦੇ ਜਾਂਦੇ ਰੇਣੇ ਦੇ ਕੀੜੇ ਨੂੰ ਮਾਰਦਾ ਪਰ ਉਹਨਾਂ ਦਾ ਤਾਂ ਕਾਵਰ ਹੋਦੇ ਪੈਦਾ ਕਰਦੀ ਉਹਨੇ ਬਾਰੇ ਪੈਰ ਮਾਰਦਾ ਉਹਨਾਂ ਛੱਡ ਵੀ ਸਕਦਾ ਸੀ ਕਹਿੰਦੇ ਕਹਿੰਦਾ ਨਾ ਨਾ ਇਹਨੂੰ ਮਾਰਨਾ ਨਹੀਂ ਹੈ ਫੇਰ ਤੂੰ ਬਾੜੀ ਦਿੱਦਦਾ ਕਾਵਨਾ ਪੈਦਾ ਕਰ ਦਿੰਦੇ ਤੂੰ ਕਾਮਨਾ ਕਿਥੋਂ ਮੈਨਾਂਉਂਦੇ ਤੇ ਖਾਣੇ ਕਾਮਨਾ ਨਹੀਂ ਸਾਰੀਆਂ ਕਾਮਨਾਵਾਂ ਤੇਤੋਂ ਹੀ ਲੈਂਦੇ ਨੇ ਲੋਕ ਤੂੰ ਸਾਰੇ ਦਈ ਕਾਮਨਾ ਕੀ ਖਾਣ ਹੈਗੀ ਖਾਣੇ ਕਾਮਨਾ ਨਹੀਂ ਹੋਰ ਕੀ ਹੈ ਕੋਈ ਕਾਮਨਾ ਨਹੀਂ ਹੈ ਸਾਡੀਆਂ ਇਹ ਨਹੀਂ ਕਾਮਨਾਵਾਂ ਨੇ ਆਪਣੀਆਂ ਉਹ ਤਾਂ ਕੰਮ ਨਹੀਂ ਕਰਦੀਆਂ ਉਹ ਤਾਂ ਉਹਦਾ ਹੋ ਜਾਂਦੀ ਹੈ ਤੇਰੇ ਵਾਲੀ ਕਾਮਨਾ ਦਿੱਤੀ ਹੋਈ ਕਾਮਯਾਬ ਹੁੰਦੀ ਹੈ ਸਾਡੇ ਵਾਲੀ ਜਿਹੜੀ ਰੰਦੀ ਜਾਂਦੀ ਹੈ ਉਹ ਨਹੀਂ ਕਾਮਯਾਬ ਹੁੰਦੀ ਕਾਮਯਾਬ ਤੇਰੇ ਵਾਲੀ ਹੁੰਦੀ ਹੈ ਸਾਡੀਆਂ ਤਾਂ ਕਾਮਨਾਵਾਂ ਨੇ ਝੂਠੀਆਂ ਨੇ ਖੋਟੀਆਂ ਨੇ ਜੇ ਤਾਂ ਜਿਹੜੀ ਕਾਮਨਾ ਤੇਰੀ ਅਸਰ ਇਹ ਜਿਹੜੀ ਕਾਮਨਾ ਮਸਰੇ ਚੜਦੀ ਉਹ ਤੇਰੀ ਹੋਉਂਦੀ ਹੈ ਸਾਡੀ ਹੁੰਦੀ ਹੋਈ ਨਹੀਂ ਐਵੇਂ ਸਾਨੂੰ ਲੱਗਦਾ ਸਾਡੀਆਂ ਜਿਹੜੀ ਸਰੇ ਜਿਹੜੀ ਉਹ ਸਾਡੀਆਂ ਜਿਹੜੀ ਫੇਲ ਹੋ ਗਈ ਸਾਡੀਆਂ ਜਿਹੜੀ ਸਰੇ ਚੜ ਗਈ ਉਹ ਤੇਰੀ ਉਹ ਸੱਚੀ ਸੀ ਕਾਮਨਾ ਸੱਚੀ ਕਾਮਨਾ ਸੱਚਾ ਤਾਂ ਆਈ ਹੈ ਝੂਠੀ ਕਾਮਨਾ ਝੂਠੇ ਤਾਂ ਆਈ ਹੈ ਬਸ ਝੂਠਾ ਬਸ ਝੂਠਾ ਜਦ ਜੋ ਹੈ ਨਾ ਸੱਚੀ ਕਾਮਨਾ ਤੇਰੇ ਕਰਵਾਈ ਹੈ ਝੂਠੀ ਕਾਮਨਾ ਸਾਡੇ ਕਰਵਾਈ ਹੈ ਕਾਮਨਾ ਕੀ ਖਾਨ ਹੈ ਤੂੰ ਸਾਧਨਾ ਕੀ ਸ਼ਾਨ ਹੈ ਹੈ ਕਿ ਸਾਧਨਾ ਕੀ ਸ਼ਾਨ ਹੈ ਬਰਕਤਤਾ ਕੀ ਬਾਣ ਹੈ ਕੀ ਬਰਕਤਤਾ ਸਾਧਨਾ ਦੀ ਸ਼ਾਨ ਸਾਧਨਾ ਕਰਦੇ ਨੇ ਲੋਕ ਉਹਨੂੰ ਸਾਧਦੇ ਨੇ ਸਾਧਦੇ ਨੇ ਖਾਦੇ ਕੀ ਬਾਣ ਹੈ ਕੀ ਸਾਧਦੇ ਨੇ ਬਾਣ ਨੂੰ ਜਿੱਤਾਂ ਕਰਨ ਵਾਸਤੇ ਠੀਕ ਕਰਨ ਵਾਸਤੇ ਸਾਣ ਤੇ ਲੱਗਿਆ ਸਦਾ ਹੋ ਜਾਂਦਾ ਸ਼ਬਦ ਸਾਨ ਰਖਾਈ ਲਾਇ ਬੁੱਧੀ ਨੂੰ ਸਾਨ ਤੇ ਨਹੀਂ ਲੱਗਦਾ ਇਸਾਨ ਵੀ ਇਹ ਬੁੱਧੀ ਤੇਰਾ ਜਿਹੜਾ ਹੈ ਨਾ ਤੇਰਾ ਉਪਦੇਸ਼ ਸਾਨ ਇਹ ਨਾਲ ਤਾਂ ਉਹ ਤਰਾ ਜੱਗ ਚੱਕ ਦਿੰਦਾ ਰੂਪ ਨਾ ਦਿੰਦਾ ਗਲੇ ਧਾਰ ਘੜ ਦਿੰਦਾ ਸ਼ਬਦ ਸਾਨ ਰਖਾਈ ਲਾਇ ਰਖਾਈ ਲਾਇ ਵਿੱਚ ਸੁਭਾਈ ਤੂੰ ਤਾਂ ਛਾਂੜਦਾ ਵੀ ਕੰਮ ਕਰਦਾ ਜਾਂ ਗਾਲੀ ਬੁੱਦੀ ਨੂੰ ਵੀ ਚੱਕ ਕੇ ਛਾਂੜ ਤੇ ਲਾ ਕੇ ਕੰਪਨੀ ਬਣਾ ਦਿੰਦੇ ਜਿਹੜੀ ਸਟਾਣ ਵਾਲੀ ਹੁੰਦੀ ਆ ਵੀ ਕੂੜੇ ਦੀ ਟੋਕਰੀ ਉੱਥੋਂ ਚੱਕ ਕੇ ਵੀ ਉਹਨੂੰ ਇਹੋ ਜਿਹੀ ਬਣਾ ਦਿੰਦੇ ਤੇ ਲਾ ਕੇ ਸ਼ਕਲੇ ਬਦਲ ਜਾਂਦੀ ਆ ਸਭ ਕੁਝ ਬਦਲ ਜਾਂਦਾ ਉਹਦਾ ਪੁਛਾਲ ਨਹੀਂ ਹੁੰਦੀ ਵੀ ਉਹੀ ਆ ਛਾਂੜਲਾ ਹੁਦਾ ਏ ਸ਼ਾਨੀ ਹੈ ਸ਼ਬਦ ਹੀ ਹੈ ਸਾਧਨਾ ਦੀ ਸਾਨ ਹੈ ਸਾਧਨੋ ਸਿਤਾ ਉਹ ਸਾਧਨਾ ਸਾਧਨਾ ਤੇ ਠੀਕ ਹੁੰਦਾ ਹੈ ਸਾਧਨਾ ਸ਼ਬਦ ਉਪਦੇਸ਼ ਜਿਹੜਾ ਨਾ ਸਾਜ ਸ਼ਬਦ ਮੈਨੂੰ ਮੁਕਤ ਨਾ ਇਹ ਜੋਗੀ ਮੁਕਤੀ ਭਾਲਦੇ ਸੀ ਮੈਨੂੰ ਸ਼ਬਦ ਤੇ ਸਾਧਨਾ ਕਰਦੇ ਸੀ ਬਿੜੀ ਜਹਰੀ ਮੁਕਤੀ ਮੁਕਤੀ ਕਾਦਾ ਮਿਲਦੀ ਫਿਰ ਜਾਂ ਲੱਗੀ ਇਹ ਤੇ ਬਕਾਰਾਂ ਤੋਂ ਖਰਾਨੀ ਵਾਲੇ ਨੇ ਕਿਹਦੀ ਜੰਗ ਲਾ ਕੇ ਸਾਡੇ ਪਰੇ ਵੱਢ ਕੇ ਭਰੇ ਭਰੀ ਵਿਰਕਤਤਾ ਕੀ ਬਾਣ ਵਿਰਕਤਤਾ ਵਿਰਕਤਤਾ ਕੀ ਬਾਣ ਹੈ ਕੀ ਆ ਕਿਸੇ ਵੀ ਤੀਜੇ ਦੇ ਮੋਹ ਹੈ ਪੈਂਦਾ ਹੀ ਨਹੀਂ ਮਰਤਰਨਾ ਇਹਦਾ ਤਰੀਕਾ ਸਿਰੂ ਦੇ ਇਹਦਾ ਤੈਨੂੰ ਵਾਲ ਬਾਣ ਕਹਿੰਦੇ ਨੇ ਆ ਤੂੰ ਬ੍ਰੋਕਟਰ ਨਾ ਤੇਰੀ ਬੋਲੇ ਤਾ ਤੇ ਕਿ ਤੋ ਕੋ ਗੱਲੇ ਦੀ ਬੁੱਧੀ ਕੋ ਉਧਾਰ ਹੈ ਬੁੱਧ ਕੋ ਉਧਾਰ ਬੁੱਧ ਦਾ ਬੜਾ ਉਧਾਰ ਜਿੱਦੀ ਮਰਜੀ ਕੋ ਅਕਲ ਲੈ ਲਵੇ ਘਾਟਾ ਨਹੀਂ ਇਹ ਅਕਲ ਜੇ ਮੰਗੇ ਅਕਲ ਕੋ ਮੰਗਦਾ ਹੀ ਨਹੀਂ ਪਰ ਆਪਣੀ ਹੀ ਰੇ ਥੋੜੀ ਸਮਝਦਾ ਅਕਲ ਤਾਂ ਜੇ ਦਵੇ ਤਾਂ ਨਹੀਂ ਕੋਈ ਲੰਦਾ ਕਿਸੇ ਨੂੰ ਕੋਈ ਗੱਲ ਦਸੀ ਬੋਲਦਾ ਅਕਲ ਹੀ ਲੰਦਾ ਕੋਈ ਆ ਸੁੰਦਰ ਸਰੂਪ ਹੈ ਕੀ ਤੋਹਾਰ ਹੈ ਜੇ ਕੋਈ ਗਿਆਨ ਲਵੇ ਤਾਂ ਕਿ ਲਵੇ ਤੇ ਤਈ ਜਾਂਦੇ ਜਿੰਨੀ ਲਵੇ ਜਿੰਨੀ ਮਰਜ਼ੀ ਲਵੇ ਕਰ ਗਿਆਨ ਦੇ ਦੇ ਕੇ ਰਵਾੜੀ ਜਿੰਨਾ ਕੋਈ ਲਵੇ ਸੁੰਦਰ ਸਰੂਪ ਹੈ ਕੀ ਭੂਪਣ ਕੋ ਭੂਪ ਹੈ ਕੀ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਤੋ ਸੁੰਦਰ ਸਰੂਪ ਇਹ ਕਰ ਆ ਰਾਜਾ ਸਮਝੇ ਨਹੀਂ ਆ ਰਹੀ ਹੈ ਕੀ रूपों का रूप है कुमत को प्रहार है जेड़े रूपवंत रे बहुत ज्यादा रूप वाले ओना दा भी गात रूप है रूप हूं को रूप है और रूप दे रहे हैं बहुत सुंदर बुद्ध वाले ने ओना दी बुद्धि नु और कर रहे हैं એટલે ਆਪਣਾ ਕਮਤ ਕੋ ਪ੍ਰਹਾਰ ਤੇ ਕਮਤ ਤੇ ਕੁਬੁੱਦ ਤੇ ਪ੍ਰਹਾਰ ਕਰਦਾ ਕਮਤ ਜਿਹੜੀ ਪੁੱਠੀ ਮੱਤਾ ਹੈ ਉਹਨਾਂ ਤੇ ਉਹਨਾਂ ਤੇ ਸੱਟ ਮਾਰ ਕੇ ਵੀ ਢਿੱਕ ਲੰਦ ਜਿਵੇਂ ਤਰਵਾ ਤੇ ਸੱਟ ਮਾਰ ਕੇ ਵੀ ਤਾਂ ਸਿੱਧੀ ਕਰਦੇ ਨੇ ਜੇ ਕੋ ਬਿਦਬਲ ਪਿਆ ਹੋਵੇ ਉਹ ਸੱਦਾ ਵੀ ਤਾਂ ਕਰਨਾ ਪੈਂਦਾ ਕਮਤ ਕੋ ਪ੍ਰਹਾਰ ਕੁਬੁੱਦ ਕਰੰਤੇ ਲੋਕ ਹੜਾਉ ਕਹਿ ਲੋ ਉੱਠੀਆਂ ਮੱਤਾਂ ਨੇ ਜਿਹੜੀਆਂ ਨਾ ਮਨ ਬਤਾਨਾ ਤੇ ਪ੍ਰਹਾਰ ਕਰਦਾ ਹੈ ਕੁਮਤ ਮਨ ਕਹਿੰਦੇ ਨੇ ਜਿਹੜੀ ਰੋਬਣ ਵਾਲੀ ਮੱਤ ਹੈ ਭਾਇਆ ਬੱਲੂ ਜੋੜਦੀ ਹੈ ਨਾ ਰਿਤੀਆਂ ਸਿੱਧੀਆਂ ਵਾਲੂ ਲੈ ਕੇ ਜਾਂਦੀ ਹੈ ਕੱਬ ਜਗਾ ਹੋ ਜਵੇ ਹੋ ਜਵੇ ਸਾਰੇ ਪਦਾਰਥ ਬਗਦੀਏ ਬੁੱਤ ਉਹ ਕੁਮਤ ਹੈ ਉਹਦੇ ਤੇ ਪ੍ਰਹਾਰ ਕਰਦਾ ਪਰ ਅਸੀਂ ਨੂੰ ਗੁਰਮਤ ਬਣਾ ਲਈ ਅਸੀਂ ਕਹਿੰਦੇ ਆ ਗੁਰੂ ਘਰ ਚੋਂ ਚੀਜ਼ਾਂ ਮਿਲਦੀਆਂ ਨੇ ਅਸੀਂ ਮੰਨ ਲਿਆ ਮਿਲਦੀਆਂ ਨੇ ਗੁਰਬਾਣੀ ਕਹਿੰਦੀ ਉਹ ਤੇ ਪ੍ਰਹਾਰ ਹੈ ਗੁਰੂ ਗਲਤ ਕਹਿੰਦਾ ਅਸੀਂ ਗੁਰੂ ਛੱਡ ਕੇ ਅਸੀਂ ਗੁਰਮਤ ਛੱਡੀ ਬੈਠਿਆ ਸਾਰਾ ਨਹੀਂ ਛਡਾ ਦਿੱਤੀ ਸੀ ਨਾ ਜਿਹੜੇ ਸਾਲ ਰਹੇ ਗੁਰਦੁਆਰੇ 100 ਸਾਲ ਜੋ ਉਹ ਕਰ ਰਹੇ تھے ਉਹੀ ਹੋ ਰਿਹਾ ਹੈ ਗੋਲਕ ਗੋਲਕ ਤੇ ਕਬਜਾ ਕੀਤਾ ਸੀ ਪ੍ਰਚਾਰ ਹੋਈ ਹੈ ਜਿਹੜਾ ਉਹ ਕਰਦੇ ਸੀ ਪ੍ਰਚਾਰ ਹੋਣਾ ਬਦਲਦਾ ਸੀ ਸਿੱਧਾ ਸਾਡਾ ਅਰਦਾਸਾਂ ਨਾਲ ਕਰਤਾ ਸੀ ਪ੍ਰਚਾਰਤਾ ਹੋਣ ਵਾਲਾ ਹੀ ਚੱਲਦਾ ਹੈ ਅਰਦਾਸਾ ਹੋਣ ਵਾਲੀਆਂ ਹੀ ਜਲਦੀਆਂ ਨੇ ਫਿਰ ਗੋਲ-ਗੋਲ ਕਦੇ ਕਬਜ਼ਾ ਇਹਦਾ ਹੋ ਗਿਆ ਪ੍ਰਚਾਰ ਦੇ ਨਾਲ ਇਹਨਾਂ ਲੈਣਾ ਵੀ ਕੀ ਸੀ ਗੋਲਕਦਾ ਹੀ ਰੌਲਾ ਸੀ ਗੋਲਕੇ ਨਾਲ ਕੋ ਗਈ ਉਹ ਪੈਸੇ ਨੂੰ ਅਸਾਸੀ ਉਦੋਂ ਵਜ਼ੀਰੀਆਂ ਮਿਨਿਸਟਰੀਓ ਬਸ ਰਾਏ ਸੀ ਗੋਲ ਨੂੰ ਉਹਨਾਂ ਦਾ ਜਿਹੜੇ ਲੋਕਾਂ ਨੇ ਗੁਰਦਾਰੇ ਖੋਹੇ ਤੇ ਉਹਨਾਂ ਦਾ ਮਤਲਬ ਤੁਹਾਨੂੰ ਪ੍ਰਚਾਰ ਨਹੀਂ ਸੀ ਧਾਰਮਿਕ ਲੋਕ ਨਹੀਂ ਸੀ ਉਹ ਉਹ ਤਾਂ ਸਿਆਸੀ ਆਦਮੀ ਦੇ ਧਾਰਮਿਕ ਕਾਨੂੰਨ ਸੀ ਜਿਹੜੇ ਧਾਰਮਿਕ ਲੋਕ ਸੀ ਉਹ ਤਾਂ ਅੱਡ ਬੈਠੇ ਸੀ ਪਰਲੇ ਪਾਸੇ ਉਹਨਾਂ ਨੇ ਤਾਂ ਉਹ ਕਹਿੰਦੇ ਅਸੀਂ ਤਾਂ ਮਾਇਆ ਲੈਣੀ ਹੋਣੀ ਉਹ ਤਾਂ ਇਹਨੂੰ ਸੰਖਿਆ ਬੰਦ ਤੇ ਜਿਹੜੇ ਧਾਰਮਿਕ ਤੇ ਉਹਨਾਂ ਤਾਂ ਉਹਨਾਂ ਨੂੰ ਚੱਬ ਹਰਨ ਸੁਭਾਲੇ ਤੇ ਗੁਰਦਾਰੇ ਕਾਲੀ ਭੂਲਾ ਜ ਉਹਨਾਂ ਨੇ ਇਹ ਮਾਇਆ ਇਹਨੂੰ ਦੇ ਦੋ ਉਦਾਸੀ ਨੂੰ ਸਾਧਾਰਨ ਇਹ ਵਸ ਮਾਰੇ ਨਾ ਆ ਸੇ ਵਸ ਮਾਰੇ ਨਾ ਤੈਨੂੰ ਇਹਨਾਂ ਨੇ ਕਹੇ ਵੀ ਇਹ ਪੈਸੇ ਖਾਂਦੜ ਵੀ ਅਸੀਂ ਲੈ ਲੀਏ ਕਹੇ ਤੁਸੀਂ ਲੈ ਲਓ ਭਲਾ ਹਟਾਇਆ ਉਰਾਣ ਦੋ ਤੂੰ ਜੇ ਨਾ ਹਟੇ ਤਬ ਇਸ ਕਹਿਣ ਲੱਗੇ ਲੋ ਬੜੇ ਖੁਸ਼ ਹੋਏ ਇਹ ਗੁਰਦੁਆਰੇ ਲੈ ਕੇ ਬੜੇ ਸਿੱਖੀ ਨਾਲ ਦੂਏ ਉਹ ਕਹਿੰਦਾ ਨਾ ਡੰਗ ਚਲਾਵੇਗੀ ਤੱਕ ਖਾਲਸਾ ਅਸੀਸ ਤੇ ਇਹ ਸਭ ਇਹ ਨੇ ਉਹਨਾਂ ਇਹ ਗੋਦ ਨਾ ਦੋ। ਇਹਨਾਂ ਨੂੰ ਕਹਿੰਦਾ ਤੇ ਮਾਇਆ ਨਾਗਣੀ ਨਾਲ ਚਲਾਵੇਗੀ। ਤੁਹਾਡੇ ਤੇ ਗੰਭੀਰ ਰਾਜਾ ਕਿਸੇ ਤੇ ਵੀ ਚਲਾ ਸਕਦੀ ਹੈ ਉਹ ਮਾਇਆ ਨਾਗਣੀ ਦੱਸ। ਆਹ ਪੜਿਆਲੇ ਨੇ ਚਾਰ ਕਤਲ ਹੋਣੇ ਡੰਗੇ ਚੱਲੇ ਆਦੇ ਹੋ ਕੀ ਹੋਇਆ? ਮਾਇਆ ਨਾਗਣੀ ਤੇ ਡੰਗ ਚਲਾਉ ਉਹ ਤੇ ਕਤਲ ਤਾਂ ਹੋਣ ਗਈ। ਇਹਨਾਂ ਨੇ ਜੋ ਉਹ ਤੇ ਕਲਸ਼ੇਤਰ ਕਵਜਾ ਕੀਤਾ ਸੀ ਉਹ ਕਹਿੰਦਾ ਕੀਤਾ ਸੀ ਮਾਇਆ ਦਾ ਡੰਗ ਸੀਗਾ ਹੋਰ ਕੀ? ਪਹਿਲਾ ਗੱਲ ਤਾਂ ਉੱਤੇ ਕਬਜ਼ਾ ਹੋਇਆ ਜਦ ਕੀ ਸੀ ਮਾਇ ਉਹ ਡੰਗੇ ਹੈ ਮਾਇ ਦਾ ਡੰਗੇ ਹੈ ਹੋਰ ਕੁਛ ਨਹੀਂ ਹੈ ਇਹਦਾ ਨਾ ਰੌਲਾ ਜਾਬਾ ਨਾ ਭੇੜ ਹੈ ਇਹ ਵਿਦਵਾਨਾਂ ਦਾ ਕੋਈ ਗੁਰਮਤ ਦਾ ਰੌਲਾ ਇਹ ਨਾ ਨਾ ਇਹਦੇ ਪਿੱਛੇ ਤਾਂ ਗੋਲਖਦਾਈ ਹੈ ਗੁਰਮਤ ਦੀ ਕੋਈ ਗੱਲ ਨਹੀਂ ਹੈ ਕਿਸੇ ਦੀ ਗੁਰਮਤ ਦੀ ਕੋਈ ਖੋਜ ਕੀਤੀ ਹੈ ਕਿਸੇ ਨੇ ਅੱਜ ਤੱਕ ਦੱਸੇ ਦਾ ਸਹੀ ਮੈਂ ਖੋਜ ਕੀਤੀ ਹੈ ਗੁਰਮਤ ਦੀ ਗੱਲ ਉਹਦੀ ਕੋਈ ਖੋਜ ਦੀ ਗੱਲ ਦੱਸਦਾ ਉਹਦਾ ਕੋਈ ਨਾ ਕੋਈ ਸਟੈਂਡ ਖੜਾ ਕਰਕੇ ਆ ਲੈਖਸਰ ਤੇ ਦੂਜੇ ਨੂੰ ਬਦਨਾਮ ਕਰਕੇ ਵੋਟਾਂ ਲੜੀਆਂ ਨੇ ਗੋਲਕ ਦੇ ਕਬਜ਼ਾ ਕਰਨੇ ਵਾਹਨਾ ਕੋਈ ਰੱਖਣ ਲੜਾਈ ਦਾ ਵਾਹਨਾ ਤਾਂ ਕੋਈ ਵੀ ਹੋ ਜਾਂਦਾ ਹੁੰਦਾ ਕੋਈ ਬਾਹਨਾ ਤਾਂ ਚਾਹੀਦਾ ਹੀ ਜੇ ਨਮਤ ਭੇਦਾ ਦਿਨਨ ਕੋ ਹੈ ਗਣੀਮਣ ਕੋ ਘਰ ਕਹੈ ਦਿਨਨ ਕੋ ਦాతਾ ਹੈ ਜਿਹੜੇ ਦਿਨ ਦਿਨ ਤੇਰੇ ਪੂਰੇ ਹੱਬੀ ਗਕਪੇ ਖਾਰੀ ਤੇਰੇ ਤੂੰ ਵਿੱਚ ਪਤਾ ਨਹੀਂ ਦੱਸਦਾ ਜਿਹੜੇ ਮੰਨਦੇ ਨੇ ਜਿਹੜੇ ਤਾਬ ਦੱਸਦੇ ਨੇ ਜਿਦਣ ਉਹ ਤਾਂ ਉਹਨਾਂ ਨੂੰ ਤਾਂ ਮਾਇਆ ਹੀ ਦਿੰਦਾ ਜਿਹੜੇ ਦਾਤੇ ਆਪਰੇ ਨਾ ਉਹਨੂੰ ਤਾਂ ਦਿੰਦਾ ਉਹ ਤਾਂ ਨਾਗਣੀ ਨਹੀਂ ਦੇਤੀ ਵੀ ਕਿ ਨਾ ਡਾਂਗਾ ਫੇਰ ਮਾਰ ਤੂੰ ਉਹਨਾਂ ਨੂੰ ਤਾਂ ਦੇ ਦਿੰਦਾ ਮਾਇਆ ਦੇ ਉਹ ਵੀ ਵੀ ਮਾਇਆ ਹੀ ਨੇ ਜਿਹੜੇ ਦੁਆਏ ਨੇ ਦੀਨ ਉਹਨਾਂ ਦੇ ਪਰਪਾਲ ਕਰਦਾ ਦੀਨ ਨੂੰ ਕੀ ਪਰਪਾਲ ਕਰੇ ਦਿੱਤ ਉਹ ਕੌਣ ਹੈ ਭਗਤ ਉਹ ਕਹਿੰਦਾ ਸਾਡੇ ਕੋ ਨਾਮ ਨਹੀਂ ਹੈ ਨਾਮ ਤੋਂ ਬਿਨੋਂ ਸਭ ਦੀਨ ਇਹ ਦੇਖੋ ਨਾਮ ਨਹੀਂ ਸਭ ਦੀਨ ਅਸੀਂ ਕਹਿੰਨਾ ਜੀ ਦੇਖੋ ਪੈਸਾ ਦੀ ਉਹ ਦੀਨ ਸੰਸਾਰੀ ਲੋਕੇ ਕਹਿੰਦੇ ਗਰੀਬ ਉਹ ਹੈ ਜਿਹਦੇ ਕੋ ਪੈਸਾ ਹੈ ਨਹੀਂ ਪ੍ਰੋਪਰਟੀ ਹੈ ਜਿਹੜਾ ਦਾਲ ਹੈ ਦੀ ਉਹ ਕਹਿੰਦਾ ਜਿਹਦੇ ਕੋਲ ਲੋਭਤਾ ਹੈ ਦੀ ਉਹ ਗਰੀਬ ਹੈ ਦੋਵਾਂ ਦੀ ਗੱਲਾਂ ਨਹੀਂ ਮਿਲਦੀ ਆਪ ਸੁੱਚੀ ਕੀ ਵਿਦਵਾਨੇ ਗੱਲ ਬੰਦੇ ਨੇ ਵੀ ਜਿਹਦੇ ਕੋਲ ਆਪ ਨਹੀਂ ਹੋ ਗਰੀਬ ਹੈ ਦੀਦ ਦਬਲਦੇ ਹੀ ਨਹੀਂ ਇਹ ਗੱਲ ਉਹ ਡਿਕਸ਼ਨਰੀ ਗੱਲ ਲਿਖੀ ਹੋਣੀ ਹੋਈ ਉਹ ਜਾਏ ਉੱਤੋਂ ਪੜ ਕੇ ਇਦਾਂ ਕਹਿ ਦਿੰਦੇ ਨੇ ਪਰ ਅੰਦਰੋਂ ਨਹੀਂ ਮੰਦੇ ਗੱਲ ਨੂੰ ਜਦੋਂ ਉਧਰੋਂ ਬਨਾਰਣ ਗਏ ਉਧਰ ਬਾਇਦੀ ਦੌੜ ਛੱਡ ਕੇ ਇਹ ਖੋਜ ਚ ਲੱਗ ਜਾਣਗੇ ਬਾਣੀ ਦੀ ਚ ਜਿਹੜਾ ਮੰਨ ਲਓ ਇਹਦੀ ਖੋਜ ਚ ਲੱਗ ਜੂਗਾ ਇਨਾਮ ਦੀ ਖੋਜ ਚ ਲੱਗੂ ਆ ਉਹ ਜਿਹੜਾ ਨਾਮ ਦੀ ਖੋਜ ਨਹੀਂ ਲੱਗਿਆ ਨਾ ਉਹਨੇ ਮੰਨਿਆ ਨਹੀਂ ਹੈਗਾ ਮੰਨਿਆ ਨਹੀਂ ਆਇਆ ਉਹਨੇ ਬਕਵਾਸ ਕਰਦਾ ਖਾਮ ਖਾਮ ਬੂਦੇ ਬੱਚੇ ਆ ਉਹਦਾ ਕੁਛ ਬੂਦੇ ਵਿੱਚ ਹੋਰ ਹੈ ਬੁੱਦੇ ਵਿੱਚ ਹੋਰ ਹੈ ਇਹ ਗੁਰਵਾਨੀ ਦਾ ਉਹਦੇ ਬੂ ਬੂ ਦੇ ਵਿਚਿਆ ਜਿਹਨੂੰ ਮਨ ਹੋਰ ਮੁਖ ਹੋਰ ਤੇ ਕਾਢੇ ਕੱਢਿਓ ਇਹ ਨਹੀਂ ਸਾਰੇ ਇਹ ਲੋਕ ਜੀ ਨੇ ਮੰਨ ਲਈ ਇਹ ਗੱਲ ਕੋਈ ਚੇਂਜ ਆ ਜੂਗੀ ਦੌੜ ਛੱਡ ਕੇ ਦੂਜੀ ਦੌੜ ਜਾਊਗਾ ਆਪਣੇ ਨਾਮ ਦਾ ਕੋਟਾ ਪੂਰਾ ਕਰੂਗਾ ਇਹ ਕੋਟਾ ਪੂਰਾ ਕਰੂਗਾ ਨਾ ਇਹ ਤੇ ਕੀ ਲੈਣਾ ਦੂਜੀ ਮਾਇਆ ਤੇ ਦੂਜੀ ਮਾਇਆ ਤੋਂ ਜਾਣ ਵਾਲੀ ਗੱਲ ਹੈ ਉਹ ਕਿਹੜਾ ਉਹਦਾ ਘਟਾ ਕੋਈ ਨਹੀਂ ਰਹਿਦਾ ਜਦੋਂ ਅਲਵਲ ਚੱਲਦਾ ਉਹਦੇ ਮਗਰ ਫਿਰਦੀ ਏ। ਤਿਆਗ ਦੇ ਚੱਲਦੀ ਆਪਾਂ ਜਿਹੜਾ ਇਹਨੂੰ ਤਿਆਗ ਦਿੰਦਾ ਉਹ ਤਾਂ ਪਿੱਛੇ-ਪਿੱਛੇ ਤੁਰੀ ਫਿਰਦੀ ਆ ਮਾਇਆ। ਇਹ ਤੁਰੇ ਫਿਰਦਾ ਨਾ ਮਾਇਆ ਦੇ ਪਿੱਛੇ-ਪਿੱਛੇ। ਮਾਇਆ ਤੁਰੀ ਫਿਰਦੀ ਰਹਦੀ ਗੁਰੂ ਘਰ ਦੇ ਪਿੱਛੇ-ਪਿੱਛੇ। ਗੁਰੂ ਦੇ ਜਿਹੜਾ ਗੁਰੂ ਦੇ ਬਾਗ ਦੇ ਜਾਊ ਉਹਦੇ ਪਿੱਛੇ-ਪਿੱਛੇ ਰੋ ਮਾਇਆ। ਮਾਇਆ ਨੇ ਮਾਇਆ ਨੇ ਕੀ ਜਾਣਾ? ਇੰਤੀ ਰਣ ਸਰਦਾਰ ਚ। ਦਿਨਨ ਕੋ ਦਤਾ ਹੈ। ਦੀਨਨ ਕੋ ਦాతਾ ਹੈ ਗਰੀਬਨ ਕੋ ਘਰ ਕਾ ਗਰੀਬਨ ਨੂੰ ਕਮ ਘਰ ਕਰਦਾ ਹੋਇਆ ਦੇ ਕੇ ਉਹ ਘਰ ਦੇ ਕੇ ਬੁੱਧੀ ਹੀਣ ਕਰ ਦੇਣਾ ਘਰ ਹੋ ੜਮਾਈ ਦੌੜੇ ਹੋ ਗਿਆ ਬੁੱਧੀ ਹੋ ਗਿਆ ਅਗਲਾ ਜਾਨਵਰ ਆਦਮੀ ਆਪਣੀ ਬਿਲਡਿੰਗ ਜੇ ਅਗਲਾ ਜਾਨਵਰ ਆਦਮੀ ਆਪਣੀ ਬਿਲਡਿੰਗ ਘਰ ਕਾ ਇਹ ਤੋਂ ਵੱਡਾ ਨੁਕਸਾਨ ਕੀ ਹੋਊਗਾ ਇਹ ਤੋਂ ਵੱਡਾ ਨੁਕਸਾਨ ਕੀ ਹੋਊਗਾ ਅਗਲਾ ਜਦੋਂ ਆਦਮੀ ਦਾ ਵੀ ਨਾ ਬੜਿਆ ਤੇ ਇਹ ਤੋਂ ਵੱਡਾ ਨੁਕਸਾਨ ਕੀ ਹੋਊਗਾ ਸਾਧਨ ਕੋ ਰੱक्षक ਹੈ ਗੁਣਨਨ ਕੋ ਪਹਾੜ ਹੈ ਸਾਧਾ ਦਾ ਰੱक्षक ਪਹਾੜ ਗੁਣ ਕੰਨਨ ਜਿੱਦਾਂ ਪਹਾੜ ਹੈ ਪਹਾੜ ਜਿੱਦਾਂ ਕੋਲ ਤੇ ਜਿੱਦੇ ਪਹਾੜ ਹੈ ਨਾ ਓਏ ਪਹਾੜ ਤੇ ਕਿੰਨਾ ਖੁਸ਼ ਹੁੰਦਾ ਗੋਲੰਗਾ ਪਹਾੜ ਹੈ ਸਿੱਧ ਕੋ ਸਰੂਪ ਹੈ ਕਿ ਬੁੱਧੀ ਕੋ ਵਿਪੂਤ ਹੈ ਕਿ ਸਿੱਧ ਕੋ ਸਰੂਪ ਸੋਜੀ ਦਾ ਸਰੂਪ ਉਹ ਸਿੱਧੀ ਦਾ ਸਰੂਪ ਸੋਜੀ ਨੂੰ ਕਹਿੰਦੇ ਸੋਜੀ ਉਹ ਸੋਜੀ ਹੋਰ ਕੁਛ ਬੁੱਧ ਕੋ ਵਿਪੂਤ ਹੈ ਜਿਹੜੀ ਵਸਤੂ ਕੰਮ ਆਉਂਦੀ ਹੈ ਨਾ ਚਾਲਣ ਕਰਨ ਵਾਸਤੇ ਬੁੱਧੀ ਜਿਹੜੀ ਰੋਸ਼ਨੀ ਨੂੰ ਬੁੱਧ ਨੂੰ ਰੋਸ਼ਨ ਕਰਨ ਵਾਲਾ ਤੇ ਜਿਹੜੀ ਵਸਤੂ ਤਿੱ ਲੋੜ ਹੈ ਉਹ ਵਸਤੂ ਹੈ ਤੂੰ ਉਹ ਕੀ ਹੈ ਉਹ ਗਿਆਨ ਬੁੱਧ ਵਾਲਾ ਬੁੱਧੀ ਕੋ ਭੂਤ ਹੈ ਕੀ ਭੂਤ ਵਸਤੂ ਵਸਤੂ ਗਿਆਨ ਵਸਤੂ ਹੈ ਨਾ ਬੁੱਧੀ ਚੈਨ ਕਰਦਾ ਮੈਂ ਭੂਤ ਹੈ ਤੂੰ ਹੈ ਕੀ ਦਾ ਨਾਸ ਕਰ ਰਿਹਾ ਅਪੂਤ ਹੁੰਦਾ ਹੈ ਹੁੰਦਾ ਵਸਤੂ ਅਪੂਤ ਹੁੰਦਾ ਨਾਸ ਕਰ ਦਿੰਦਾ ਉਹਨੂੰ ਵਟਾਇਆ ਦੇਣਾ ਖਤਮ ਕਰ ਦੇ क्रोध तो को भूत हैगी क्रोध रो अच्छाया बनासी है क्रोध किया गुस्सा ज्ञान की खानदा अकल की खती गुस्सा गुस्सा तो खा जाती है गुस्सार गोब्लोची खा जाती है गा पी जाती है गुस्सा खा जाती है अकल गम खती है तो गुस्सा पीती है ज्ञान गम खा जाता ਕੀ ਅਛਾ ਹੈ ਅਵਨਾਸ਼ੀ ਹੈ ਅਛਾ ਹੈ ਅਵਨਾਸ਼ੀ ਅਛਾ ਹੈ ਕਰੋਧ ਨੂੰ ਕਾਇਬੀ ਜਲਣਾ ਘਟਦਾ ਕੁਛ ਨਹੀਂ ਤੇਰਾ ਕਿ ਬਰਾਕ ਤੇ ਪਾਣੀ ਵਾਦੀਏ ਨਾ ਥੋੜਾ ਜਿਹਾ ਥੋੜਾ ਜਿਹਾ ਲੋਹ ਤਾਂ ਘਟੇ ਜਾਂਦੀ ਹੈ ਨਾ ਨਾ ਜੰਨਾ ਉਹ ਘਟਦਾ ਨਹੀਂ ਹੈ ਉਹ ਵੀ ਐਂ ਜਲਦਾ ਜਿਵੇਂ ਪੈਟਰੋਲ ਸੜਦਾ ਕਰੋਧ ਵੀ ਐਂ ਜਲਦਾ ਬਦਦਮੀ ਨਹੀਂ ਕਰਦਾ ਤੇਰੀ ਉਹਨੂੰ ਪੈਟਰੋਲ ਉਹ ਜਲ ਜਾਂਦਾ ਹੋਰ ਤੁਹਾ ਮਾਰੋਸ਼ਨੀਓ ਕਰਦਾ ਬੰਦ ਅਛਾਇਆ ਬਨਾਸੀ ਕਾਮ ਕੋ ਕਨੰਦਾ ਹੈ ਕਿ ਖੂਬੀ ਕੋ ਦੇ ਹੁੰਦਾ ਹੈ ਕਾਮ ਕੋ ਕਨੰਦਾ ਹੈ ਸਾਰੇ ਅਸੀਂ ਤਾਂ ਗਲਤੀ ਹੈ ਸਾਡੀ ਕਹਿਣਾ ਮੈਂ ਕੁਛ ਕਰਤਾ ਜਦੋਂ ਲੱਗ ਮੈਂ ਕੁਛ ਕਰਤਾ ਤਬਲਾ ਘਰ ਬਚਾਉਣ ਨੂੰ ਫਿਰਦਾ ਅਸੀਂ ਤਾਂ ਗਲਤੀ ਨਾ ਕਹੀ ਯਾਰ ਜਾਣਦੇ ਆ ਨਾ ਗਲਤ ਭੈ ਵੀ ਜਾਂ ਵੀ ਅਸੀਂ ਕੁਛ ਕਰਦੇ ਹਾਂ ਅਸਲ ਤਾਂ ਤੂੰ ਕਰਦਾ ਜੋ ਕੁਛ ਕਰਦਾ ਇਸ ਕਰਕੇ ਕਾਮ ਦਾ ਖੰੰਡਾ ਤੋਹੀ ਬੰਨਦਾ ਕਰਨ ਵਾਲੇ ਨੂੰ ਕਹਿੰਦੇ ਨੇ ਕੰਡਾ ਦਰਦੂਦਾ ਲੱਗਿਆ ਕੰਮ ਕਰਦਾ ਦਾ ਤੂ ਐ ਸਾਰਾ ਉਹ ਗੱਲਾ ਲੱਗਾ ਸਾਥੇ ਕਰਵਾ ਲੈਣਾ ਬਸ਼ੀਦਾ ਬਣਾਈਆਂ ਹੋਈਆਂ ਨੇ ਆਦਮੀ ਨੇ ਤਾ ਕਿੰਨਾ ਕੰਮ ਕਰੀ ਜਾਂਦਾ ਰੇਲ ਗੱਡੀਆਂ ਬਣਾਈਆਂ ਹੋਈਆਂ ਨੇ ਆਦਮੀ ਨੇ ਕਿੰਨਾ ਕੰਮ ਲੈਂਦਾ ਆ ਤਾਂ ਮੀਂਹ ਨਾ ਬਣਾਇਆ ਜੀ ਬੰਦੇ ਤਾਂ ਵੀਂਦਾ ਦੇਦਾ ਨਹੀਂ ਹਾਲ ਚੱਲਦੀਆਂ ਤੇਰੇ ਹੁਕਮ ਚੇ ਰੇਲ ਗੱਡੀ ਆਜ ਵੀ ਤੇਰੇ ਹੁਕਮ ਚੇ ਚੱਲਦੀ ਐ ਨੇ ਜਿੱਥੇ ਦੀ ਖੂਬੀ ਕੋ ਖੂਬੀ ਕੋ ਦੇਦਾ ਹੈ ਕੀ ਹੈ ਸਾਰਿਆਂ ਨੂੰ ਖੂਬੀ ਗੁਣ ਗੋੜਾ ਦੀ ਬਖਸ਼ ਕਰਦੇ ਆਪ ਤਾਂ ਤੂੰ ਗੁਣ ਦਰਨਾ ਅਸੀਂ ਓਗੜ ਬੋਗਦੇ ਸਾਡੀ ਡਵਾ ਡੋਗੜਾਂ ਦੀ ਹੁੰਦੀ ਆ ਤੋਗੜ ਦੇ ਕੇ ਰਾਜੀ ਦੀ ਤੂੰ ਦਾ ਗੋੜੇ ਗੋੜੁੰਦੇ ਹਾ ਜੀ ਖੋਬੀ ਕੋ ਦਿੰਦਾ ਗੁਣ ਦੇ ਕੇ ਖੁਸ਼ ਆਓ ਗਰਦਾ ਅਸੀਂ ਗੁਦਦੇ ਆ ਵਾਇਆ ਉਹ ਗਦੇ ਆਗੜਾ ਨੇ ਗਨੀਮ ਕੋ ਗਰਿੰਦਾ ਹੈ ਕੀ ਗਰੀਬ ਕੋ ਗਰੀਂਦਾ ਹੈ ਤੇ ਤੇਜ ਦੇ ਪ੍ਰਕਾਸ਼ੀ ਹੈ ਗਰੀਬ ਨੇ ਗਰੀਬਲ ਘਰ ਹੈ ਜਿਹੜੇ ਦੁਸ਼ਮਣ ਹੋ ਗਏ ਇਹਨਾਂ ਨੂੰ ਵਾਰਨ ਵਾਲਾ ਨਸ਼ਟ ਕਰਨ ਵਾਲਾ ਹੈ ਤੇਜ ਕੋ ਪ੍ਰਕਾਸ਼ੀ ਹੈ ਤੇਜ ਕੋ ਗਰੀਬ ਨੂੰ ਗਾਲ ਕਿਵੇਂ ਉਹਨੂੰ ਤੇਜ ਦੇ ਕੇ ਡੀਤਾਂ ਬੇਸ਼ੜ ਦਿੰਦਾ ਜਾਂ ਗਿਆਨ ਹੋ ਜਾਂਦਾ ਹੈ ਤੇਜਾ ਪ੍ਰਕਾਸ਼ ਦੇ ਕੇ ਡੀਤਾਂ ਛੜਾ ਦਿੰਦਾ ਦੀ ਉਹਦੇ ਡੀਤਾਂ ਦਾ ਨਾਸ਼ ਕਰ ਦਿੰਦਾ ਗਿਆਨ ਦੇ ਕੇ ਕਾਲ ਹੂੰ ਕਿ ਕਾਲ ਹੈ ਕਾਲ ਹੂੰ ਕੋ ਕਾਲ ਕਾਲ ਹੈ ਨਾ ਤੂੰ ਤਾਂ ਉਹਦਾ ਵੀ ਕਾਲ ਹੈ ਕਲਪਨਾ ਕਾਲ ਹੈ ਨਾ ਸਾਡਾ ਕਲਪਨਾ ਦਾ ਕਾਲ ਹੈ ਤੇ ਨਾ ਹੋਦਾ ਗਿਆਨ ਕਬਦਾ ਹੋ ਰਹੇ ਬਸ ਤੂੰ ਗਿਆਨ ਦੰਨਾ ਕਲਪਨਾ ਕਾਲ ਹੋ ਜਾਂਦਾ ਕਲਪਨਾ ਦਾ ਕਾਲ ਹੋ ਗਿਆ ਇਹ ਹੋ ਗਿਆ ਕਲਪਨਾ ਦਾ ਕਾਲ ਜਦੋਂ ਹੋ ਗਿਆ ਨਾ ਇਹ ਅਬਨਾਸ਼ੀ ਹੋ ਗਿਆ ਜੀ ਬੋਲਦੇ ਕਾਲੂ ਕੋ ਕਾਲ ਦਾ ਮਤਲਬ ਇਹ ਹੈ ਕਲਪਨਾ ਕਾਲ ਹੈ ਸਾਡਾ ਜਿਹੜੀ ਅਸੀਂ ਕਲਪਨਾ ਕਰਦੇ ਆਂ ਇਹੀ ਕਾਲ ਕਲਪਨਾ ਨਹੀਂ ਖਾ ਸਕਦੀ ਸ਼ਤਰਣ ਕੋ ਸਾਲ ਦੇ ਵਿੱਚ ਸੁਗਾ ਜੀਏ ਕਾਲ ਕਲਪਨਾ ਸ਼ਬਦ ਦੇ ਕਾਲ ਕਲਪਨਾ ਨਹੀਂ ਖਾ ਸਕਦੀ ਕਲਪਨਾ ਉੱਠਦੀ ਨਹੀਂ ਹੁੰਦੀ ਸ਼ਤਰਣ ਕੋ ਸਾਲ ਹੈ 17 ਦੇ ਬਹੁਤ ਹੈ ਸ਼ਤਰਵਾਦੀ ਬਹੁਤ ਹਨ ਮਿੱਤਰਨ ਕੋ ਪੋਖਤ ਹੈ ਕਿ ਬਿਰਧਤਾ ਪਾਲਣਾ ਕਰਦੇ ਤੇ ਬਿਰਧਤਾ ਕੋ ਵਾਸੀ ਜਿੱਥੇ ਅਗਲੀ ਵਿਰਧੀ ਹੁੰਦੀ ਉਹਦੇ ਵਿੱਚ ਇਹਨਾਂ ਦਾ ਹੁੰਦਾ ਜਿੱਥੇ ਵੀ ਬਿਰਧਤਾ ਹੁੰਦੀ ਹੈ ਕਿਤੇ पेड ਵੱਧਾ ਚਾਹੇ ਪੌਦਾ ਵੱਧਾ ਚਾਹੇ ਸਰੀਰ ਵੱਧਾ ਉੱਥੇ ਤੇਰਾ ਨਿਵਾਸ ਹੁੰਦਾ ਤੇ ਤੇਰੇ चीज ਚੀਜ਼ ਵੱਧਦੀ ਨਹੀਂ ਕੋਈ ਵੀ ਤੇਰੀ ਗਹਿਰਾਈ ਹੀ ਘਟਦਾ ਆਵੇ ਜਾਂਦੀ ਆ ਪਾਣੀ ਚੱਕ ਕੇ ਤੂੰ ਜਾਂਦਾ ਉੱਤੇ ਨੂੰ ਥੱਲੇ ਨੂੰ ਦਬਿਆ ਜਾਂਦਾ ਜਿਹੜੇ ਸਿਰੇ ਦੇ ਪੱਤੇ ਬੈਠੇ ਨੇ ਨਾ ਉੱਤੇ ਜੜਾਂ ਪਾਣੀ ਉੱਤੇ ਕਿਵੇਂ ਪਹੁੰਚ ਗਿਆ ਪੱਤਾ ਕਿਵੇਂ ਹਰਾ ਹੋ ਗਿਆ ਪਾਣੀ ਬਹੁਤ ਦੂਰ ਹੈ ਜਲਮੜੀ ਪੱਤੇ ਪਾਣੀ ਨੂੰ ਲੱਗੀ ਨਹੀਂ ਜਮਹਤਿਆੜਾਲੇ ਸੁੱਕੇ ਸਕਦੇ ਪਰ ਪੱਤਾ ਹਰਾ ਸਾਕਾੜਾੜਾਲੇ ਹਰੇ ਦੇ ਥੱਲੇ ਗੈਲੀ ਦੇ ਹੜਦਾਂ ਦਾ ਸੁੱਕੇ ਨਹੀਂ ਪਰ ਪੱਤਾ ਹਰਾ ਕਿਉਂ ਦੂਰੋਂ ਹੈ ਪਾਣੀ ਦੀ ਉਹਨੂੰ ਛਿਲੇ ਛਿਲ ਕੇ ਦੂਰੋਂ ਦੀ ਹੈ ਪਾਣੀ ਦੀ ਛਿਲ ਦਾ ਪਾਣੀ ਮੇਰੇ ਸਰ ਜਾਊਗਾ ਪੱਤੇ ਦਾ ਨਹੀਂ ਸਰ ਵਿਰਤਾ ਉੱਤੇ ਆਦਮ ਜਿਵੇਂ ਹੈ ਵਿਰਤਾ ਹੈ ਤੇਰਾ ਜਿੱਤੇ ਜੀਵ ਹੈ ਆਤਮਾ ਜਿੱਤੇ ਆਦਮ ਉੱਥੇ ਤੂੰ ਨਾਲ ਹੁਕਮ ਨਾਲੇ ਰਹਿੰਦਾ ਰਹੋ ਜੋਗ ਹੂ ਕੋ ਜੰਤਰ ਹੈ ਕੀ ਤੇਜ ਹੂ ਕੋ ਤੰਤਰ ਹੈ ਜੋਗ ਦਾ ਜੰਤਰ ਹੈ ਤੂੰ ਜੰਤਰ ਹੁੰਦਾ ਕੋ ਮਸ਼ੀਨ ਹੁੰਦੀ ਹੈ ਜੋ ਕਰਾਉਣ ਦਾ ਜੰਤਰ ਹੈ ਤੂੰ ਜੋੜਨ ਨੂੰ ਇਹ ਨਾਲ ਜਲਉਣਾ ਜੋੜ ਲਾਉਣ ਨੂੰ ਇੱਕ ਛੜ ਜਿਹਨੇ ਕਿਤੇ ਆਇਓ ਕਾਲ ਫਾਸ ਕੇ ਵਿੱਚ ਲਾਇਓ ਤਾਂ ਜੰਤਰ ਹੋਰ ਕੀ ਹੈ ਛੜ ਦੇ ਵਿੱਚ ਜੋੜ ਲਾ ਦੇ ਨਾ ਇੱਕ ਛੜ ਜਿਹਨੇ ਕਿਤੇ ਆਇਓ ਛੜ ਜੋੜ ਲੱਗ ਜੂਗਾ ਇਕ ਚਿਤ ਹੋਣਾ ਹੀ ਯੋਗ ਹੈ ਯੋਗ ਹੋਣ ਕੋ ਜੰਤਰਾ ਹੈ ਕੀ ਤੇਜ ਹੋ ਕੋ ਤੰਤਰ ਹੈ ਕੀ ਤੇਜ ਹੋ ਕੋ ਤੰਤਰ ਹੈ ਕੀ ਤੇਜ ਪ੍ਰਤਾਪ ਦਾ ਤੰਤਰ ਹੈ ਅਕਲ ਦਾ ਤੰਤਰ ਹੈ ਗਿਆਨ ਦਾ ਤੰਤਰ ਹੈ ਜੋਤ ਦਾ ਤੰਤਰ ਹੈ ਰੋਹਣੀ ਕੋ ਮੰਤਰ ਹੈ ਕੀ ਕੋ ਮੰਤਰ ਹੈ ਕੀ ਪੂਰਨ ਪ੍ਰਕਾਸ਼ੀ ਹੈ ਪੂਰਨ ਪ੍ਰਕਾਸ਼ੀ ਹੈ ਗੋੜੀ ਮੰਤਰ ਹੈ ਕਿ ਸਾਰਿਆਂ ਨੂੰ ਆਪਣੇ ਵਾਸਚ ਰੱਖਿਆ ਹੋਇਆ ਐਸਾ ਉਤਰ ਹੈ ਕਿ ਸਾਰੇ ਜਿਵੇਂ ਤੂੰ ਚਲਾਉਣਾ ਮੈਂ ਚਲੀ ਜਾਂਦਾਂ ਅੰਤਰਾਦੋਂ ਇਹ ਆਵਾਜ਼ ਨੂੰ ਕੋਈ ਵੋੜਦਾ ਹੀ ਤੇਰੀ ਆਵਾਜ਼ ਨੂੰ ਵੋੜਦਾ ਹੀ ਕੋਈ ਰੂਪ ਕੋ ਨਿਵਾਸ ਹੈ ਕਿ ਬੁੱਧਿ ਕੋ ਪ੍ਰਕਾਸ਼ ਹੈ ਕਿ ਰੂਪ ਕੋ ਨਿਵਾਸ ਹੈ ਕਿ ਰੂਪ ਦੇ ਵਿੱਚ ਨਿਵਾਸ ਹੈ ਤੇਰਾ ਕਿ ਬੁੱਧਿ ਦੇ ਵਿੱਚ ਪ੍ਰਕਾਸ਼ ਹੈ ਤੂੰ ਬੁੱਧੀ ਦੇ ਵਿੱਚ ਪ੍ਰਕਾਸ਼ ਰੂਪ ਹੈ ਤੂੰ ਰੂਪ ਦੇ ਵਿੱਚ ਨਿਵਾਸ ਰੂਪ ਹੈ ਸਿੱਧਤਾ ਕੋ ਹੈ ਕਿ ਬੁੱਧੀ ਹੀ ਕੋ ਹੈ ਕਿ ਸਤਿ ਤਾਮੇ ਵਿੱਚ ਸਮਝ ਦੇ ਵਿੱਚ ਵਾਸ ਤੇਰਾ ਰਹਦਾ ਕਿੱਥੇ ਤੇ ਬੁੱਧੀ ਹੀ ਕੋ ਘਰ ਹੈ ਕਿ ਬੁੱਧੀ ਦਾ ਘਰ ਹੈ ਤੂੰ ਤੇਰੇ ਘਰੋਂ ਬੁੱਧੀਆਂ ਮਿਲਦੀਆਂ ਔਰ ਕੁਝ ਮਿਲਦਾ ਹੀ ਨਹੀਂ ਤਾਂ ਨਰਕੇ ਘਰ ਕੇਵਲ ਨਾਮ ਬੁੱਧੀ ਵੀ ਮਿਲਣੀ ਆ ਤੌਰ ਕੀ ਮਿਲਦਾ ਨਾਨਕ ਦੇ ਘਰ ਤਾਂ ਕੇਵਲ ਨਾਮ ਨਾਮ ਗਿਆਨ ਹੈ ਜਿਵੇਂ ਲੋਹੇ ਤੋਂ ਤਲਵਾਰ ਬਣਾ ਲਓ ਤੀਰ ਬਣਾ ਲਓ ਬਣਾ ਲਓ ਇਹ ਤਾਂ ਬੁੱਧੀ ਬਣ ਜਾਂਦੀ ਹੈ ਗਿਆਨ ਤੋਂ ਗਿਆਨ ਨਾਲ ਬੁੱਧੀ ਦੋਤਾ ਹੈ ਹੀ ਨਹੀਂ ਕਾੜਤ ਨਾ ਬੁੱਧੀ ਹੈ ਕੰਮ ਕਰਦੀ ਬੁੱਧੀ ਹੈ ਉਹ ਗਿਆਨ ਵੇ ਜਿਹੜੇ ਕੋ ਪੈਸਾ ਜੋ ਵਰਤੀ ਲੈ ਲੋ ਜਾ ਕੇ ਬਾਜ਼ਾਰ ਚੋਂ ਗਿਆਨ ਗਿਆਨ ਕੋ ਹੈ ਜਾਂ ਤਾਂ ਤਾਲ ਨਾਉਂ ਤਾਂ ਤਾਲ ਦੇਵਨ ਕੋ ਦੇਵ ਹੈ ਨਿਰੰਜਨ ਅਪੇਵ ਹੈ ਦੇਵਨ ਕੋ ਦੇਵ ਹੈ ਦੇਵਤਿਆਂ ਦਾ ਦੇਵਤਾ ਤੂੰ ਜਿਹੜੇ ਦੇਵਤੇ ਨੇ ਉਹਨਾਂ ਵਾਸਤੇ ਤੂੰ ਜਿਹੜੇ ਲੋਕਾਂ ਨੂੰ ਦੇ ਰਹੀ ਨੇ ਨਾ ਕੁਛ ਆਪ ਤੇ ਥੱਲੇ ਵਾਲਿਆਂ ਨੂੰ ਤੂੰ ਉਹਨਾਂ ਨੂੰ ਤਾਂ ਦੇ ਤਾ ਦੇਖੋ ਭਗਤਾਂ ਨੂੰ ਸੰਸਾਰ ਨੂੰ ਦੱਤਾਂ ਨੂੰ ਦੱਤਾਂ ਨੂੰ ਕਿਹਨੇ ਦਿੱਤਾ ਉਹਨੇ ਦਿੱਤਾ ਦੇਵਨ ਕੋ ਦੇਵ ਭਗਤਾਂ ਨੇ ਸੰਸਾਰ ਨੂੰ ਦਿੱਤਾਂ ਨੂੰ ਗਿਆਨ ਭਗਤਾਂ ਨੂੰ ਤਾਂ ਦਿੱਤਾ ਦੇਣ ਵਾਲਿਆਂ ਨੂੰ ਤੂੰ ਦੇ ਰਹੇ ਦੇਵਨ ਦੇਣ ਵਾਲੇ ਨੂੰ ਕਹਿੰਦੇ ਨੇ देव वाला तु? देव होता उनरो वे तू <imly> तूदले निरंजन अपेव है <imly> निरंजन अपेव है निरंजन है का माया रूप प्रिय तू माया रहते अपेव है पे कोई तेरा जे माया रूप नहीं है तू <imly> <"Aphev आपेव imly> माया नहीं है तब है कि ये भी जा सकदे और देवन को देव है की ਜਿਹੜੇ ਦੇ ਰਾਖਸ਼ੀਨਾਂ ਉਹਨਾਂ ਨੂੰ ਦਿੰਦਾ ਏਰੀਆ ਉਹਨਾਂ ਨਾਲ ਉਹਨਾਂ ਦੇ ਹੱਥ ਦੇ ਬਲੀਦ ਨੂੰ ਉਹਨੂੰ ਸ਼ੁੱਧਤਾ ਦਿੰਦੇ ਸ਼ੁੱਧ ਕਰਨਾ ਉਹਨਾਂ ਦਾ ਰਾਖਨ ਦਾ ਉਹ ਦੇਵਨ ਦਾ ਤੀਰ ਮਾਰਦਾ ਨੂੰ ਸਰ ਕਰਦਾ ਸ਼ੁੱਧੀ ਦੇ ਕੇ ਸ਼ੁੱਧ ਕਰਕੇ ਹੱਥ ਉਹਨਾਂ ਦਾ ਜਿੱਦਨ ਉਹਦਾ ਜਾਂਦਾ ਸ਼ੁੱਧ ਹੋ ਜਾਂਦਾ ਉਸ ਦਿਨ ਜਦ ਹੀ ਸਿਰ ਸਣਕ ਦਰੂਰੇ ਉਹ ਦਲੀ ਬਲੀਦਤਾ ਜਾਂ ਦੂਰ ਹੋ ਜਾਂਦੀ ਹੈ ਸਮਝ ਆ ਜਾਂਦੀ ਹੈ ਉਹੋ ਉਹ ਅਸੀਂ ਗਲਤੀ ਤੇ ਸੀ ਜਿਹੜੇ ਨਹੀਂ ਮੰਨਦੇ ਜਦ ਉਹਨਾਂ ਨੂੰ ਉਹਨਾਂ ਦੇ ਪਰਮ ਦੂਰ ਕਰਨ ਹੁੰਦਾ ਪਰਮ ਪਰਮ ਹੁੰਦਾ ਨਾ ਮੰਨ ਲਈ ਦਿੰਦਾ ਪਰਮ ਦੂਰ ਹੋ ਜਾਂਦਾ ਮੰਨ ਜਾਂਦੇ ਨੇ ਜਾਣ ਕੇ ਬਚਈਆਂ ਹੈ ਇਮਾਨ ਕੋ ਦਬਈਆਂ ਹੈ ਜਾਣ ਕੇ ਬਚਈਆਂ ਹੈ ਤੇ ਇਮਾਨ ਕੋ ਦਬਈਆਂ ਹੈ ਤੂੰ ਜਾਨ ਦਾ ਬਚਾਓ ਕਰਨ ਵਾਲਾ ਹੈ ਕਿ ਸਨਮਾਨ ਦੇਣ ਵਾਲਾ ਜਾਨ ਕੋ ਬਚਾਈਆਂ ਹੈ ਇਮਾਨ ਕੋ ਦਬਈਆਂ ਹਾਂ ਇਮਾਨ ਕੋ ਦਬਈਆਂ ਇਮਾਨ ਦੀ ਬਖਸ਼ਿਸ਼ ਕਰਨ ਵਾਲਾ ਹੈ ਇਮਾਨ ਤੇ ਕਾਇਮ ਰੱਖਣ ਵਾਲਾ ਹੈ ਜਦੋਂ ਜਾਲ ਕੋ ਕਟਈਆਂ ਹੈ ਜਦਬ ਜਾਲ ਨੂੰ ਕਟਣ ਵਾਲਾ ਤੂੰ ਕੀ ਕਾਮਨਾ ਕੋ ਕਰ ਰੂਪ ਹਾਂ ਇਹ ਕਾ ਗੁਰੇ ਬਸ ਬਚਾਓ ਕਰਨਾ ਜਾਲ ਜਾਲ ਕੱਟਣਾ ਇਹ ਤਾਂ ਕੰਮ ਹੈ ਤੇਰਾ ਇਹ ਤੇਰੀ ਇੱਛਾ ਹੈ ਜਾਨ ਕੋ ਬਚਾਈਆ ਇਮਾਨ ਕੋ ਦਬਈਆ ਸਾਰਿਆਂ ਨੂੰ ਜਮ ਜਾਲ ਕੋ ਕਟਈਆ ਜਾਲ ਕੱਟਿਆ ਜਾਵੇ ਸਾਰਿਆਂ ਦਾ ਕੀ ਕਾਮਨਾ ਕੋ ਦੁਨੀਆਂ ਫਸੇ ਰਹੇ ਥੇ ਇਹ ਤੇਰੀ ਇੱਛਾ ਲਈ ਹੈ ਇਹ ਦੁੱਖ ਭੋਗਦੇ ਰਹੇ ਸਾਰਾ ਸੰਸਾਰੇ ਤੇਰੀ ਇੱਛਾ ਲਈ ਹੈ ਸਾਰੇ ਸੁਖੀ ਹੋ ਜਾਣ ਘਰ ਚਲੇ ਜਾਣੇ ਤੇਰੀ ਇੱਛਾ ਹੈ ਇਹਦਾ ਕਰਕੇ ਸ੍ਰਿਸ਼ਟੀ ਪੈਦਾ ਕੀਤੀ ਤੇਜ ਕੋ ਖੰਡ ਕੋ ਖੰਡ ਹੈ ਤੇਜ ਕੋ ਖੰਡ ਹੈ ਤੇਜ ਕੋ ਪ੍ਰਚੰਡ ਹੈ ਹਾਂ ਤੇਜ ਕੋ ਪ੍ਰਚੰਡ ਹੈ ਅਖੰਡਨ ਜਿਹੜਾ ਤੇਜ ਪਹਿਲਾਂ ਕਿਸੇ ਜ ਗਿਆਨ ਉਹਨੂੰ ਹੋਰ ਪ੍ਰਚੰਡ ਕਰਨ ਵਾਲਾ ਵਧਾਉਣ ਵਾਲਾ ਗਿਆਨ ਨੂੰ ਪ੍ਰਚਲਨ ਉਹਦਾ ਹੋਰ ਵਧਾ ਦੇਣਾ ਅਖੰਡਨ ਕੋ ਖੰਡ ਹੈ ਜਿਹੜੇ ਅਖੰਡ ਰੋਣ ਦੇ ਆਪਣੇ ਆਪੇ ਬਨੇ ਬੈਠੇ ਗਿਆਨ ਵਾਲਾ ਆਪਣੇ ਆਪ ਵੀ ਸਾਡੇ ਜਨਾਂ ਗੱਲ ਕਿਤੇ ਹਯੋ ਨਹੀਂ ਉਹਨਾਂ ਨੂੰ ਕੰਟਰੋਲ ਕਰਨ ਰਾਜੇ ਦਾ ਮਤਲਬ ਗੁਰੂ ਹੈ ਐ ਦੋਏ ਰਾਜਾ ਨੂੰ ਨਹੀਂ ਛੇੜਦਾ ਉਹ ਇਹ ਆਪਣੀ ਲੜਾਈ ਆਪੇ ਲੜੀ ਜਾਣ ਜੇ ਸੱਤਾ ਸੱਤੇ ਕੋ ਮਾਰੇ ਤਾਂ ਮਰੋ ਰੋਣ ਹੋਈ ਇਸਤਰੀ ਹੈ ਨਾ ਇਸਤਰੀ ਹੈ ਰਾਣੀ ਦੋਇ ਮੂਰਤੀਆਂ ਘਟੀਆਂ ਗਈਆਂ ਮੂਰਤੀਆਂ ਦੋਇ ਘਟੀਆਂ ਗਈਆਂ ਆਦਮੀ ਦੀ ਵੀ ਘੱਟੇ ਗਈ ਔਰਤ ਦੀ ਵੀ ਘੱਟੀ ਨਾ ਮੂਰਤੀ ਰਹਿ ਨਾ ਦੇਵੀ ਦੀ ਰਹੀ ਨਾ ਆਦਮੀ ਦੀ ਮੂਰਤੀ ਬਚੀ ਨਾ ਔਰਤ ਦੀ ਬਚੀ ਮੂਰਤੀਆਂ ਦੋਇ ਘਟੀਆਂ ਗਈਆਂ ਉਹ ਕਹਿੰਦੇ ਨੇ ਮੂਰਤੀ ਪੂਜਾ ਦੇਵੀ ਪੂਜਾ ਹੈ ਨਾ ਦੇਵਤਾ ਹੈ ਨਾ ਨਾ ਰਹਾ ਨਾ ਨਾ ਜੇ ਨਾਲ ਨਹੀਂ ਹੈ ਤਾਂ ਉਹਦੀ ਫੋਟੋ ਉਹਨਾਂ ਨੇ ਮੂਰਤੀ ਵੀ ਰੱਖ ਲਈ ਉਹਦੀ ਪਤਾ ਹੈ ਹੋਣੀ ਉਹ ਕੰਦ ਨਾ ਆਦਮੀ ਦੀ ਮੂਰਤੀ ਰੱਖੀ ਜਾ ਸਕਦੀ ਹੈ ਤੇਰੇ ਜਗ੍ਹਾ ਨਾ ਔਰਤ ਦੀ ਮੂਰਤੀ ਰੱਖੀ ਜਾ ਸਕਦੀ ਹੈ ਬਾਦਾਂ ਵਿੱਚ ਤੂੰ ਹੈ ਪਤਾ ਵਿੱਚ ਤੂੰ ਪਰ ਨਾ ਨਾ ਰਹਾ ਨਾ ਜੋਦੇ ਲੈਵਲ ਤੇ ਮਹਾਪਿਓ ਹੈ ਜਾਦੇ ਲੈਵਲ ਤੇ ਮਹਾਪਿਓ ਨਹੀਂ ਹੈ ਗਲਤੀ ਕੀ ਹੋਈ ਐ ਅਸੀਂ ਜਾਤ ਦੇ ਸ਼ਰੀਰ ਦੇ ਲੈਵਲ ਤੇ ਵਾਹ ਪੇ ਉਹ ਉਰੂਤੀ ਬੈਠਿਆ ਜੋਤ ਦੇ ਲੈਵਲ ਵਾਲੇ ਨੂੰ ਜਾਣਦੇ ਹੀ ਨਹੀਂ ਨਾ ਸਾਡੀ ਬੋਲੀ ਜਾਏ ਉਹ ਨਾ ਸਾਹ ਉਹਦੀ ਲੋੜੇ ਐ ਦਾ ਫਰਕ ਐ ਇੱਥੇ ਪੰਡਤ ਨੇ ਬਾਟ ਪਾੜ ਲਈ ਆਖੇ ਪੰਡਤ ਪਾੜੀ ਬਾਟ ਇਹ ਵਿਦਵਾਨਾਂ ਨੇ ਬਾਟ ਪਾੜੀ ਐ ਇੱਥੇ ਵਿਦਵਾਨਾਂ ਨੇ ਬਾਟ ਪਾੜੀ ਸੀ ਨਾ ਸਾਡੇ ਵੀਰੋ ਵਿਦਵਾਨ ਇਹ ਨੇ ਇਹਨਾਂ ਵਿਦਵਾਨਾਂ ਦੀ ਬਾੜ ਪਾੜੀ ਹੋਈ ਨੂੰ ਗੁਰਮੁਖੀ ਠੀਕ ਕਰਦੇ ਹੁੰਦੇ ਨੇ ਵਿਦਵਾਨ ਕਮੇਟੀ ਕਰ ਲਣ ਹੋ ਵੀ ਅਨੇ ਹੋ ਵੀ ਅਨੇ ਤੇ ਦੋ ਇਹਨੇ ਦੇ ਉਹ ਇਹਨਾਂ ਨੇ ਬਾੜ ਪਾੜੀ ਹੋ ਵੀ ਅਲੀ ਸੀ ਇਹ ਦੇ ਵਿਦਵਾਨ ਵੀ ਨਹੀਂ ਸੀ ਦੋਨਾਂ ਇਹ ਅੰਨਾ ਹੁੰਦਾ ਹਿੰਦੂ ਹੁੰਦਾ ਹਿੰਦੂ ਜੇ ਸਾਡੇ ਵਾਲੇ ਵਿਦਵਾਨ ਹੁੰਨੇ ਨਾ ਇਹ ਬੱਦ ਸੋਚਣ ਦੀ ਸਿੱਖਾਂ ਹਰੇ ਵੀ ਹਿੰਦੂ ਹੈ ਬਹੁਤ ਹੀ ਗਲਤੀ ਕਰ ਰਹੇ ਨੇ ਆਪਣੇ ਆਪ ਨੂੰ ਸਖਮੰਦ ਕੇ ਕਿਉਂਕਿ ਆ ਲਿਖਿਆ ਹੋਇਆ ਸਾਫ ਹੈ ਅੰਧਾ ਰਿਕਸ਼ਾ ਜਾਏ ਹੋ ਗਿਆ ਨਾ ਤਾਂ ਰਿਕਸ਼ਾ ਜਾਏ ਜੋਤਬਿਨਾ ਜਗਦੀਸ਼ ਕੀ ਜਗਤੌਲੰਭੇ ਜਾਏ ਤੇ ਜੋਤਬਿਨਾ ਜਗਦੀਸ਼ ਕੀ ਜਗਤੌਲੰਭੇ ਜਾਏ ਆ ਜਦ ਤੁਸੀਂ ਕਹਿੰਦੇ ਨੰਗੇ ਨਾ ਰਹਿ ਨਾ ਆ ਕੇ ਤੁਸੀਂ ਦੇਖਿਆ ਰਿਹਾ ਵੀ ਤੇ ਕੀ ਲਿਖਿਆ ਹੈ। ਹੋਰ ਆਲਾ ਸਭ ਕੁਝ ਖੰਡਣ ਕੀਤਾ ਆਇਆ ਸਮ ਜੋ ਮੰਨਦੇ ਸੀ ਉਹਨਾਂ ਨੂੰ ਸੁਭਾਇਆ ਵੀ ਨਾ ਭਾਈ ਨਾਨ ਆਦਮੀ ਦੀ ਨਾ ਇਹ ਦੋਵੇਂ ਗਲਤ ਰਹਿਣ ਤੁਹਾਡੀਆਂ। ਗੱਲ ਕੀ ਕਹੀ ਅਰਥ ਕੀ ਲਾ ਲੈ ਤੁਸੀਂ ਭੱਜਦੇ ਨਾ ਛੱਡ ਚਲ ਉਹ ਤਾਂ ਜਾਣ ਕੇ ਵੀ ਆਉਂਦੇ ਨੇ ਆਰਐਸਐਸ ਵਾਲੇ ਇਹਨਾਂ ਨੂੰ। ਇਹ ਜੇ ਪਾਚੀ ਚਾਲ ਜਿਹਦਾ ਪ੍ਰਚਾਰ ਕਰਿਆ ਸਾਡਾ ਕੱਖ ਦੀ ਵਜੋਂ। ਇਹਨਾਂ ਨੂੰ ਬੜਾ ਪਤਾ ਜੇ ਉਹ ਕਹਿ ਦੇਣਗੇ ਨਾ ਵੀ ਇਹ ਠੀਕ ਹੈ ਤਾਂ ਇਹ ਕਹਿੰਦੇ ਗਲਤ ਹੈ ਜੇ ਉਹ ਕਹਾਂਗੇ ਇਹ ਗਲਤ ਹੈ ਤਾਂ ਇਹ ਕਹਿੰਦੇ ਠੀਕ ਹੈ ਉਹਨੂੰ ਪਤਾ ਹੈ ਲੋਦਾ ਵੀ ਇਹਨਾਂ ਨੂੰ ਪੁੱਠਾ ਕਹੋ ਕੋਤੇ ਨੂੰ ਖੁੱਸਣਾ ਹੋਵੇ ਪੁੱਠਾ ਕਰਕੇ ਨਾ ਕੁਵਾਂ ਨੂੰ ਅੱਜ ਬੈਠ ਕੇ ਨਹੀਂ ਦੀ ਕੰਨ ਫੜ ਕੇ ਖਿੱਚੀਦਾ ਵਾਹ ਲੂ ਕੋਤੇ ਨੇ ਬਿਸ਼ਰ ਵੋਲਡ ਪਾ ਪੈਰ ਰ ਭੈਣ ਉਹਨੂੰ ਗੈਰਨ ਦੀ ਲੋੜ ਨਹੀਂ ਐ ਸਿੱਧਾ ਨਹੀਂ ਦਿਖਦਾ ਹੁੰਦਾ ਖੋਤਾ ਕੁਝ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਵੀ ਖੋਤਾ ਖੂਜ ਕੇ ਬਿਗੜਦਾ ਉਹਨਾਂ ਨੇ ਖੋਤਾ ਖੂਜ ਸੜੇ ਇਹ ਨੂੰ ਖੂਜ ਸੜਨ ਲੱਗਿਆ ਸੀ ਖੋਤੇ ਖੋਤੇ ਢੇਪਣ ਜਿਹੜੇ ਖੋਤੇ ਨਹੀਂ ਹੋਣੀ ਦਿਖਦੇ ਹਨ ਖੋਤੇ ਦਬਾਈ ਢੇਗ ਕੁਝ ਉਹਦਾ ਮੋਖਰ ਕੇ ਦਾ ਸੁਕਰਾਂ ਜਿਹੜੇ ਖੋਤੇ ਤੇ ਖੂਜ ਲਿਪੇ ਜਿਹੜੇ ਖੋਤੇ ਨਹੀਂ ਸੀਗੇ ਉਹ ਬਚ ਗਏ ਹਾਂਜੀ ਵਿਸ਼ਮ ਕੋ ਪੜਨਾ ਸਾਰਾ ਬਈ ਬਤਾਉਂ ਪਰਿਆ ਅਪਦਾ ਕੋ ਹਰਨਾ ਹੈ ਕੀ ਜਿਹੜੀ ਸਾਰਿਆਂ ਦੀ ਹੈ ਉਹਦੇ ਹੰੜਵਾਲਾ ਵਿਪਤਾ ਪੈਦਾ ਤੂੰ ਵਿਪਤਾ ਹੰੜਵਾਲਾ ਸਭੋ ਵਿਪਤਾ ਨਹੀਂ ਆ ਪੈਦਾ ਕਰਦੇ ਆਪਣੀਆਂ ਗਲਤੀਆਂ ਨਾਲ ਆਪਣੀ ਸੋਚ ਨਾਲ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਆ ਦੇਖੋ ਸੁਖ ਸੁਖ ਪੈਨਾ ਕਰਦਾ ਤੂੰ ਦਾ ਸਾਰੇ ਵਾਸਤੇ ਸੁਖ ਕੋ ਕਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਤੇਜ ਕੋ ਪ੍ਰਕਾਸ਼ ਗਿਆਨਵਾਨ ਕਰਨ ਵਾਲੇ ਸਭ ਨੂੰ ਬੁੱਧ ਦੇਣ ਵਾਲੇ ਬੁੱਧਵਲ ਦੇਣ ਵਾਲੇ ਬੁੱਧਵਲ ਦੇਣ ਵਾਲੇ ਸਭ ਨੂੰ ਤੇਜ ਪ੍ਰਕਾਸ਼ ਕਰਨ ਵਾਲਾ ਤਾਂ ਕਿ ਜਿਹੜੇ ਮੈਂ ਸੁਖ ਦੇਣਾ ਉਹਨੂੰ ਪਛਾਣ ਕੇ ਸੁਖ ਲੈ ਲੈਣ ਸੋਖ ਲੈਣ ਵਾਸਤੇ ਵੀ ਅਕਲ ਚਾਹੀਦੀ ਹੈ। ਸਿਆਣਿਆਂ ਤੇ ਕਈ ਤਾਂ ਸਿਆਣੇ ਆਪਣੀ ਅਕਲ ਕਰਕੇ ਨਾਦਰੀ ਕਰਾਲਾ ਦਿੰਦੇ। ਉਹ ਕਹਿੰਦੇ ਵੀ ਇਹ ਤਾਂ ਰੋਟੀ ਨਹੀਂ ਖਾਲਦੀ। ਸਿਆਣੇ ਤੇ। ਵੀ ਯਾਰ ਹੁੰਦੇ ਤੇ ਕੋਈ ਹਮਤ ਨਹੀਂ ਤੂੰ ਬੋਲੀ ਕਿਉਂ ਜੰਨ। ਦੁਨੂ ਮਗਾੜੂ ਬਿਗੜੂ ਇਹਦਾ ਬਿਗੜ ਜੂ ਤੂੰ ਕਾ ਤੇ ਕਲਪਦਾ ਰਾ ਆਪਣਾ ਰੋਟੀ ਖਾਈ ਜਾ। ਉਹ ਹਣਦਾਰੇ ਕੁਝ ਕਰਨ ਤੇ ਹਰੂਰ ਬੁਰਾ ਲੱਗਦਾ ਕੋਈ ਢਣਾ ਬੋਲ ਪੈਂਦਾ ਫਿਰ ਕਹਿੰਦਾ ਮੇਰੀ ਉਹ ਕਰਦੇ ਨੇ ਸਿਆਣੇ ਦੀ ਮਾਨੂ ਜੀ ਜੀ ਮੇਰੀ ਮੈਨੇ ਪੂਰੇ ਬੋਰ ਪੈ ਲੈਣਾ ਹੁਜਾ ਰੋਜ ਬੋਲੀਓ ਕਦਣਾ ਕਦ ਦੇ ਦੂ ਇਹਨੂੰ ਕੋਈ ਸਾਜਦਾ ਆਏ ਸਾਰੇ ਆਦਮੀਆਂ ਇਸ ਕਰਕੇ ਸਿਆਣੇ ਜਿਹੜਾ ਹੈ ਨਾ ਸੁੱਖ ਲੈਣਾ ਵੀ ਹਰ ਇੱਕ ਦੇ ਆਪਣੀ ਅਸਲ ਨੂੰ ਵੱਡੀ ਬੰਲੀ ਹੋਇ। ਕਾ ਨਹੀਂ ਲੈ ਹੁੰਦੇ। ਭਾਈ ਇਹ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ। ਉਹਦਾ ਦੂਗਾ ਹੈ। ਆਰ ਪਾਰ ਦਾ ਪਾਰਲੀ ਪਾਸਕਦੇ ਸੀ। ਕਿੱਥੇ ਤੱਕ ਹੈ ਉਹ? ਕਦੋਂ ਪੈਦਾ ਹੋਇਆ? ਕਿਵੇਂ ਹੋਇਆ? ਉਹਦੇ ਬਾਰੇ ਕੁਝ ਅਸੀਂ ਕਹਿ ਨਹੀਂ ਸਕਦੇ। ਉਹਦੇ ਬੜਿਆਈਓ ਕਰ ਸਕਦੇ। ਕੀ ਜੇ ਤੇ ਵਿਚਾਰ ਸੁਭ ਵਿਚਾਰ ਕੋ ਨਵਾਸ ਹੈ। ਬਸ ਇਹ ਕੀਤੀ ਜਾ ਸਕਦੀ। ਵਿਚਾਰ ਦੇ ਵਿੱਚ ਉਹਦੀ ਪ੍ਰਾਪਤੀ ਹੈ ਸੋ ਵਿਚਾਰ ਕੋ ਨਿਵਾਸ ਹੈ ਉਹ ਵਿਚਾਰ ਦੇ ਵਿੱਚ ਉਹਦਾ ਨਿਵਾਸ ਹੈ ਵਿਚਾਰ ਦੇ ਆ ਜਾਂਦੀ ਹੈ ਗੁਣ ਉਹਦੇ ਵਿਚਾਰੀ ਦੱਸਦੇ ਨੇ ਉਹਦੇ ਗੁਣਾਂ ਦੀ ਵਿਚਾਰ ਕਰੀਦਾ ਕੋਣ ਵਿਚਾਰੇ ਗਿਆਨ ਨਹੀਂ ਗੁਣ ਮੈਂ ਗਿਆਨ ਪ੍ਰਾਪਤ ਹੋਏ ਉਹਦੇ ਗੁਣਾ ਚੋਂ ਉਹਦਾ ਗਿਆਨ ਪ੍ਰਾਪਤ ਹੋ ਜਾਂਦੇ ਸਮਝ ਆ ਜਾਂਦੀ ਉਹ ਕੀ ਹੈ ਹਿੰਗੁਲਾ ਹਿਮਾਲੇ گاਵਾਂ ਹਬਸੀ ਹਲੱਬੀ ਤੇ ਆਵਾਂ ਦੇਸ਼ ਦੇ ਗਾਉਂਦੇ ਨੇ ਹਲੱਬ ਦੇਸ਼ ਦੇ ਹਬਸੀ ਵੀ ਨੇ ਹਿੰਗੁਲਾ ਹਿਮਾਲਾ ਗਾਵੇਂ ਹਬਸੀ ਹਲੱਬੀ ਤੇ ਆਵਾਂ ਹਲੱਬ ਹਲੱਬ ਦੇਸ਼ ਵੀ ਐ ਤੂੰ ਹੀ ਐ ਇਹ ਪੂਰਬੀ ਨਾ ਪਾਰ ਪਾਵੇ ਆਸਾ ਹੈ ਪੂਰਬੀ ਨਾ ਪਾਰ ਪਾਵੇ ਪੂਰਬ ਵਾਲੇ ਨੇ ਪਾਰ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਪਾ ਸਕੇ आसत ए नाथ पावै आसत त्यागी होई जा उन्होंने आसत ए नाथ होयो देवन को देव महा महादेव हु के देव हैं देवन के देव महादेव हु के देव हैं देव तो देव है तू महादेव दा भी देव निरंजन अपेवनाथ अदेव अग्नश है निरंजन अपेवनाथ अपेवनाथ अदेव का बाय रूप नहीं है बाय तो रहता ਤੁਹਾ ਭੇਵਾਂ ਤੇਰਾ ਭੇਦ ਕੋਈ ਨਹੀਂ ਔਰ ਸਭ ਦਾ ਨਾਥ ਹੈ ਤੂੰ ਸਾਰੇ ਤੇਰੇ ਵਸ ਵਿੱਚ ਨੇ ਸਾਰੇ ਤੇਰੇ ਕਹਣੇ ਚੱਲਦੇ ਨੇ ਸਭ ਤੇ ਆਪ ਰਾਤ ਹੈ ਤੂੰ ਸਾਰਿਆਂ ਦਾ ਔਰ ਅਨਾਥ ਵੀ ਆਪੇ ਤੂੰ ਆਪ ਨਾਥ ਨਾਤੀ ਸਭ ਸੜੀ ਸਿਸਰੀ ਦੇ ਨੱਥ ਪਾਈ ਹੋਈ ਹੈ ਤੈਂ ਆਪ ਫੇਰ ਵੀ ਤੂੰ ਡਰਡਾ ਭੇਵਾਂ ਤੂੰ ਬੁੜਖੀ ਤੇ ਜਿਹੜੇ ਸਾਡੇ ਗਿਆਨ ਦੇ ਦਿਨਾਂ ਦੀ ਪਕੜ ਤੋਂ ਫਿਰ